ਕੋ ਚਾਰ ਕਮਨ ਸ੍ਰਿਸ਼ਟੀ ਕੋ ਪ੍ਰਸ਼ਟ ਹੈ ਕੋ ਸਕਲ ਵਿਸਥਾਰ ਕਮਨ ਰਿਸ਼ਤੇ ਕੋ ਪੁਸ਼ਟ ਹੈ ਕਮਨ ਰਿਸ਼ਤੇ ਕੋ ਪੁਸ਼ਟ ਹੈ ਕੋ ਪੁਸ਼ਟ ਰਿਸ਼ਤੇ ਕੌਣ ਹੈ ਪੁਸ਼ਟ ਕੌਣ ਹੈ ਰਿਸ਼ਤੇ ਮਤਰਾ ਰੱਜਿਆ ਮਾਇਆ ਧਾਰੀ ਨੂੰ ਉਹੋ ਹੋਇਆ ਬੋਧੀ ਮਾਇਆ ਦੇ ਕੋਲ ਕੋਈ ਘਾਟਾ ਨਹੀਂ ਤੇ ਭਗਤੀ ਦੀ ਦੁਨੀਆ ਦੇ ਵਿੱਚ ਇਹ ਤਾਂ ਉਹਦੇ ਸੰਸਾਰੀਆਂ ਦੀ ਗੱਲ ਭਗਤਾਂ ਦੀ ਦੁਨੀਆ ਵਿੱਚ ਗੁਰਮਤਿ ਦੇ ਦੀ ਸ਼ਿਗੋਣ ਤਰਜਿਆ ਹੋਇਆ ਉਹ ਹੈ ਜਿਹਨੂੰ ਮਾਇਆ ਦੀ ਭੁੱਖ ਹੈ ਜੀ ਬੋਧੀ ਮਾਇਆ ਨਾਲ ਨਹੀਂ ਰੱਜਿਆ ਹੁੰਦਾ ਬੋਧੀ ਮਾਇਆ ਦਦਰ ਬਹੁਤ ਹੀ ਭੁੱਖ ਲਦੀ ਹੈ ਜਿੰਨਾ ਵੱਡਾ ਹੋ ਜਾਂਦਾ ਬੱਚਾ ਉਹਦੀ ਉਹਦੀ ਖੁਰਾਕ ਵਜੋਂਦੀ ਛੋਟੇ ਦੀ ਖੁਰਾਕ ਥੋੜੀ ਹੁੰਦੀ ਹੈ ਵੱਡਾ ਵੱਜ ਜਾਂਦਾ ਜਿਵੇਂ ਆਦਮੀ ਵੱਜ ਜਾਂਦਾ ਉਹਦੀ ਲੋੜਾਂ ਵਜ ਜਾਂਦੀਆਂ ਮਾਇਆ ਵਿਚਾਰਾ ਚਾਹੀਦੀ ਇਹਨੂੰ ਇਸ ਕਰਕੇ ਰਹਿਦਾ ਰਿਮਾਇਆ ਨਾ ਕੋਈ ਰਜ ਜਿਵੇਂ ਹੋਈ ਦੀ ਸਕਦਾ ਕਮਨ ਰਿਸਟ ਕੋ ਪੋਸਟਰ ਇਹ ਸੇ ਕਰਕੇ ਕਿ ਸੰਸਾਰੇ ਦ੍ਰਿਸ਼ਟੀਕੋਣ ਤੋਂ ਜਵਾਬ ਹੈ ਹੋਰ ਹੁਰਗੇ ਸਵਾਲ ਤਾਂ ਕੋਈ ਵੀ ਓਖਾ ਨਹੀਂ ਪਰ ਦ੍ਰਿਸ਼ਟੀਕੋਣ ਸੰਸਾਰੀ ਹੈ ਲੋਕਾਂ ਦਾ ਤੇ ਦਰਾਕਾਰੀ ਹੈ ਦ੍ਰਿਸ਼ਟੀਕੋਣ ਤੋਂ ਆਹਦੇ ਵਿੱਚ ਫਰਕ ਦੀ ਗੱਲ ਹੈ ਗਰਮਦੀ ਦੇਸੀ ਤੋਂ ਕਰੇ ਕੌਣ ਜਿਹੜਾ ਆਨੰਦ ਹੈ ਪੱਲੇ ਤੇ ਲਾਉਣੀ ਆਏ ਪੱਲੇ ਉਹਦੇ ਮਾਇਆ ਸੰਸਾਰ ਦੀ ਜਾਨੀ ਲੌੜਾ ਉਹ ਕਣੀ ਹੈ ਤਰਸ ਜੇ ਭਾਇਆ ਦੀ ਭੁੱਖ ਨਹੀਂ ਨਾ ਹੈ ਭੁੱਖ ਤਾਂ ਹੈ ਨਹੀਂ ਲੋੜ ਵੀ ਹੈ ਨਹੀਂ ਆਇਆ ਦੀ ਭੁੱਖ ਤਾਂ ਇੱਕ ਪਾਸੇ ਨਹੀਂ ਲੋੜ ਵੀ ਹੈ ਨਹੀਂ ਲੋੜ ਵੀ ਸੰਤੋਖ ਹੈ ਲੋੜ ਲੱਗਦੀ ਹੈ ਵਰਦਾਨ ਨੂੰ ਭੁੱਖ ਲੱਗਦੀ ਹੈ ਲੋੜ ਲੱਗਦੀ ਹੈ ਲੋੜ ਹੀ ਹੁੰਦੀ ਸੀ ਭੁੱਖ ਜਿਹਨੂੰ ਆਪਾਂ ਕਹਿੰਦੇ ਨਾਰਦ ਨੂੰ ਉਬਲਣ ਲੱਗਦੀ ਉਹ ਵੀ ਬਰਦਾਸ਼ਤ ਕਰਦਾ ਕੋਈ ਲਾਇਆ ਆ ਆਗੀ ਤਾਂ ਛਕ ਲਈ ਜੀ ਲੋਸੀ ਲੋੜ ਤੇ ਵੀ ਕਾਬੂ ਹੈ ਭੁੱਖ ਤੱਕ ਪਸਰੇ ਲੋੜ ਤੇ ਵੀ ਕਾਬੂ ਹੈ ਜੇ ਲੋੜ ਤੇ ਕਾਬੂ ਹੈ ਫਿਰ ਸਸਤੋਖ ਹੈ ਜੇ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸੰਤੋਖ ਹੈ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸੰਤੋਖ ਹੋ ਸਿਰਫ ਕਿਆ ਲੋਡ ਤੇ ਵੀ ਕਾਬੂ ਹੈ ਫਿਰ ਸਤੂ ਤੋਂ ਸਤੂ ਸਤੂ ਦੇ ਵਿੱਚ ਫਰਕ ਲੋਡ ਵੀ ਹੈ ਕੋਈ ਗੱਲ ਨਹੀਂ ਦਸ ਤਨੇ ਖੜੇ ਨੇ ਲੋਡ ਹੁੰਦੀ ਹੈ ਪੱਤੇ ਮੁਰਝਾ ਜਾਂਦੇ ਨੇ ਫਸਲਾਂ ਦੇ ਕਾਬੂ ਹੈ ਖੜੇ ਨੇ ਦਊਗਾ ਆਪੇ ਦਊਗਾ ਸਖਾ ਦਾਵੇ ਜਾਏ ਵੀ ਪਾਦਵੇ ਲੋਡ ਤੇ ਵੀ ਕਾਬੂ ਹੈ ਉਮਰ ਰੇਸਟ ਕੋ ਪੋਸਟ ਹੈ ਇਹ ਕਰਕੇ ਗਿਆ ਰੱਖਾਂ ਦੀ ਜਰਾਨ ਖੜੇ ਨਾ ਰੁਕ ਸੁੱਕ ਜਾਣ ਚਾਹੇ ਓਡੋ ਓਰੀ ਜਾ ਸਕਦਾ ਕਿੱਥੇ ਜਿਹੜਾ ਸਦਸਦੋਗ ਦੇ ਡਾੜਵਨ ਐ ਵਜਾ ਹੁੰਦਾ ਜਾਂ ਮੇ ਰੁੱਖ ਵਜਾ ਹੁੰਦਾ ਜਮੀਰਦਾਨ ਮਨ ਐਦਾਂ ਵਜਾ ਹੁੰਦਾ ਜਾਂ ਮੇ ਰੁੱਖ ਜਮੀਰਦਾਨ ਵਜਾ ਹੁੰਦਾ ਹਿੱਲੇ ਨਹੀਂ ਸਰਦਾ ਗਿਆਨ ਦਾ ਕਾਮਨ ਰਿਸਟਰ ਕੋ ਪੁੱਛਤਾ ਹੈ ਸ੍ਰਿਸ਼ਟੀ ਚਾਰ ਕਹਾ ਸ੍ਰਿਸ਼ਟੀ ਕੋ ਚਾਰ ਸ੍ਰਿਸ਼ਟੀ ਦਾ ਜਿਹੜਾ ਹੈ ਸ੍ਰਿਸ਼ਟੀ ਦੇ ਵਿੱਚ ਅਚਲ ਕੀ ਹੋਣਾ ਚਾਹੀਦਾ ਸਾਡਾ ਜਿਹੜਾ ਸ੍ਰਿਸ਼ਟੀ ਵਿੱਚ ਆ ਕੇ ਕਰਨਾ ਕੀ ਹੈ ਸਾਡਾ ਸ੍ਰਿਸ਼ਟੀ ਵਿੱਚ ਕੀ ਕਰਨਾ ਹੈ ਕੀ ਹੈ ਅੱਛਾ ਕੀ ਹੋਣਾ ਚਾਹੀਦਾ ਚਾਰ ਦਾ ਉੱਤਰ ਅਚਾਰਨ ਹੁੰਦਾ ਸਭਾ ਕੀ ਕਰਨਾ ਹੈ ਅਸੀਂ ਸੇ ਸ ਜਾ ਕੇ ਕੀ ਕੰਮ ਹੈ ਸਾਡਾ ਸਿਸਤੀ ਆਉਣ ਦੇ ਕੀ ਕਾਰਨ ਸਾਡਾ ਜਿਵੇਂ ਹੈ ਨਾ ਪੁਰਾਣੀ ਤੋਂ ਆਇਓ ਲਾ ਲੈਣ ਜਿਵੇਂ ਆਵੇ ਅਸਲ ਦਾ ਬਲਾਹਲੇ ਨਹੀਂ ਲਾ ਰਿਹਾ ਲੱਗਿਆ ਕਿ ਤ ਕੋ ਪਕੜੇ ਕਫਰ ਦੇ ਝੂਠੇ ਕਮਜ ਲੱਗਿਆ ਹੈ ਕੋ ਪਕੜੇ ਹੁੰਦਾ ਝੂਠੇ ਕਮਜ ਕੋ ਕਫਰ ਹੁੰਦਾ ਚੋਰ ਕੋ ਪਕੜੇ ਫਜ਼ੂਲ ਕਮਜ ਲੱਗਿਆ ਹੁੰਦਾ ਜਿਹੜੇ ਤੇਰੇ ਕਿਸੇ ਕੰਮ ਨਹੀਂ ਝੂਠੇ ਮਾਇਆ ਪਿੱਛੇ ਲੱਗਿਆ ਸਭ ਕੁਕਦੀ ਚੱਲੀ ਰਹਿਣ ਜਦ ਤੱਕ ਚੱਲੀ ਜਾ ਰਹੀ ਹੈ ਇਹ ਦੱਸਿਆ ਸ੍ਰਿਸ਼ਟੀ ਕੀ ਕਰਨਾ ਹੈ ਇਹਦਾ ਜਵਾਬ ਹੈ ਉੱਥੇ ਇਹ ਵੀ ਸਾਰੇ ਜਵਾਬ ਹੈਗੇ ਸਾਡੇ ਕੋਲ ਪਰ ਜਿਹਨੇ ਸਮਝੀ ਹੋਈ ਹੈ ਬਾਣੀ ਉਹ ਜਵਾਬ ਦੇ ਰੂਣੀ ਹੈ ਸ੍ਰਿਸ਼ਟੀ ਦੇ ਵਿੱਚ ਪ੍ਰਸ਼ਤ ਕੌਣ ਸ੍ਰਿਸ਼ਟੀ ਨੂੰ ਪ੍ਰਸ਼ਤ ਕਰਨ ਵਾਲਾ ਜਿਹੜੇ ਬਣਾ ਸ੍ਰਿਸ਼ਟੀ ਕੋ ਪ੍ਰਸ਼ਤ ਕਰਨ ਵਾਲੇ ਕੌਣ ਨੇ ਸ੍ਰਿਸ਼ਟੀ ਪ੍ਰਸ਼ਤ ਕਿਉਂ ਹੋ ਜਾਂਦੀ ਹੈ ਕੋਹ ਸਗਲ ਵਿਸਥਾਰ ਸ੍ਰਿਸ਼ਟੀ ਪ੍ਰਸ਼ਤ ਹੋ ਜਾਂਦੀ ਹੈ ਪਰਸ਼ਟ ਰਾਜਾ ਹੋਵੇ ਤਾਂ ਪ੍ਰਜਾ ਪ੍ਰਸ਼ਤ ਹੋ ਜਾਂਦੀ ਹੈ ਜਿਥਾ ਰਾਜਾ tatha ਪ੍ਰਜਾ ਕਹੋ सगले ਬਿਸਤਾਰ ਸਾਰਾ ਵਿਸਤਾਰ ਵਾਲੇ ਗੱਲ ਦੱਸੋ ਮੈਂ ਤੁਸ ਸਮਝਾਉਂ ਦੋਰਾ ਕਹਾ ਪਰਮ ਕੋ ਕਰਮ ਹੈ ਕਹਾ ਪਰਮ ਕੋ ਨਾਸ ਕਹਾ ਪਰਮ ਕੋ ਕਰਮ ਹੈ ਕਹਾ ਪਰਮ ਕੋ ਨਾਸ ਉਹ ਕਿਹੜਾ ਕੰਮ ਹੈ ਜਿਹਦੇ ਨਾਲ ਪਰਮ ਬੰਧਾ ਐਸੇ ਕਰਮ ਕੈਸੇ ਕਿਹੜੇ ਨੇ ਜਿਨ੍ਹਾਂ ਨਾਲ ਪਰਮ ਬੰਧਾ ਕਹਾ ਪਰਮ ਕੋ ਨਾਸ ਔਰ ਪਰਮ ਦਾ ਨਾਸ ਫਿਰ ਕਿੱਥੇ ਜਾ ਕੇ ਹੁੰਦਾ ਜੇ ਹਰ ਕੰਮ ਕਰਨ ਨਾਲ ਪਰ ਦੇਖੋ ਕਰਮ ਕੋ ਪਰਮ ਹੈ ਕਾਹ ਕਰਮ ਕੋ ਪਰਮ ਹੈ ਕਰਮ ਦੇ ਨਾਲ ਪਰਮੇ ਲੱਗਿਆ ਹੋਇਆ ਕਰਮ ਪਰਮ ਤੋਂ ਹੀ ਪੈਦਾ ਹੁੰਦਾ ਹੈ ਕਰਮ ਕੀ ਹੈ ਕਰਮ ਖਿਆਲ ਹੈ ਨਾ ਖਾਲੇ ਕਰਮ ਆ ਐ ਕਰ ਲਿਆ ਆਂ ਹੋ ਜੂ ਕਹਾਂ ਪਰਮਗੋਣ ਆਸ ਔਰ ਪਰਮਦਾਨਾਸ ਕਿੱਥੇ ਆ ਕੇ ਹੁੰਦਾ ਪਰਮਦਾਨਾਸ ਕਦੋਂ ਹੁੰਦਾ ਹੈ ਪਰਮ ਕਿਵੇਂ ਪਰਮ ਪੈਦਾ ਹੁੰਦਾ ਹੈ ਕਿਵੇਂ ਪਰਮਦਾਨਾਸ ਹੁੰਦਾ ਹੈ ਮਤਲਬ ਇਹ ਕਹਾਂ ਕੀ ਚੇਸਟਾ ਕਹਾਂ ਅਚੇਤ ਪ੍ਰਕਾਸ਼ ਚਿੱਤਨ ਕੀ ਚੇਸਟਾ ਚਿੱਤਾਂ ਦੇ ਵਿੱਚ ਚੇਸਟਾ ਜਿਹੜੀ ਪੈਦਾ ਹੁੰਦੀ ਹੈ ਚਿੱਤਾਂ ਦੇ ਜਿਹੜਾ ਮਾਇਆ ਦੇ ਰਸਾ ਕੋਸਣ ਦੀ ਜਿਹੜੀ ਇੱਛਾ ਪੈਦਾ ਹੁੰਦੀ ਹੈ ਤੇ ਉਸ ਦਾ ਇੱਛਾ ਹੀ ਹੈ। ਚਿੱਤਾਂ ਦੀ ਇੱਛਾ ਕੀ ਚੀਜ਼ ਹੈ? ਕੀ ਚੀਜ਼ ਹੈ ਇੱਛਾ ਹੈ? ਕੀ ਜੈਸਾ ਕੀ ਹੈ? ਕਹਾ ਅਚੇਤ ਪ੍ਰਕਾਸ਼। ਔਰ ਕਿੱਥੇ ਜਾ ਕੇ ਅਚੇਤ ਹੋ ਜਾਂਦਾ ਪ੍ਰਕਾਸ਼ ਰਹਿ ਜਾਂਦਾ ਜਾਂ ਅਚੇਤ ਆ ਫਿਰ ਪ੍ਰਕਾਸ਼ ਰਹਿ ਜਾਂਦਾ। ਅਚੇਤ ਪ੍ਰਕਾਸ਼ ਕੀ ਸੁਤਮ ਸਮਾਨ ਹੈ। ਅਚੇਤ ਪ੍ਰਕਾਸ਼ ਸੁਧੂ ਸਮਾਦ ਅਚੇਤ ਪ੍ਰਕਾਸ਼ ਜਦੋਂ ਨਿਊਟਰਲ ਹੋ ਜਾਂਦਾ ਹੈ ਘੇਰ ਇਹਦਾ ਮਨ ਵਰਜਤ ਹੈ ਗਾਇਲੋ ਉਹ ਅਚੇਤ ਪ੍ਰਕਾਸ਼ ਚੇਤ ਦਾ ਕੁਝ ਨਹੀਂ ਫਿਰ ਚੇਤ ਦਾ ਨਹੀਂ ਕੁਝ ਵੀ ਸਟਿਲ ਲ ਖੜਾ ਹੈ ਫਿਰ ਪਹੁੰਚ ਗਿਆ ਖੜਾ ਹੋ ਕੇ ਜਿੱਥੇ ਜਾ ਕੇ ਸਮੁੰਦਰ ਚ ਪਾਣੀ ਮਿਲ ਜਾਂਦਾ ਨਾ ਦਰਿਆ ਉੱਥੇ ਦਰਿਆ ਫਿਰ ਚੱਲਦਾ ਨਹੀਂ ਜੁੱਤ ਚੱਲਦਾ ਉੱਥੇ ਤੱਕ ਜਿੱਥੇ ਤੱਕ ਉਹ ਮਤਲਬ ਉਹਦੇ ਚ ਕਬੀ ਹੈ ਉਹ ਉੱਚਾ ਤੇ ਦੂਜੇ ਪਾਣੀ ਦੀ ਬਖ ਜਿਨਾਂ ਹੰਕਾਰ ਵਾਕੀ ਬਚਿਆ ਹੋਇਆ ਉਹ ਨਾਲ ਚੱਲਦਾ ਮਨ ਉਹ ਜਿਹੜਾ ਹੰਕਾਰ ਨਹੀਂ ਰਹਿੰਦਾ ਨਾ ਬਰਾਬਰ ਹੋ ਜਾਂਦਾ ਫਿਰ ਨਹੀਂ ਚੱਲਦਾ ਸਮੁੰਦਰ ਦੀਵਾ ਹੁੰਦਾ ਦਰਿਆ ਤਾਂ ਚੱਲਦਾ ਪਾਣੀ ਤਾਂ ਵਗਦਾ ਆਪਣੇ ਮੂਲ ਨਾ ਮਨ ਉੱਚਾ ਹੁੰਦਾ ਤਾਂ ਚੱਲਦਾ ਜਦ ਮੂਲ ਦੇ ਬਰਾਬਰ ਆ ਜਾਂਦਾ ਨਾ ਸਭ ਆ ਜਾਂਦਾ ਸਭ ਨੂੰ ਬਰਾਬਰ ਨੂੰ ਕਹਿੰਦੇ ਸਭ ਨੂੰ ਸਮਝ ਗਿਆ ਹੁੰਦੀ ਜਾਂਦਾ ਬਰਾਬਰ ਹੁੰਦਾ ਜਦ ਦੋਵੇਂ ਲੈਵਲ ਬਰਾਬਰ ਹੋ ਕੇ ਪਾਣੀ ਦੇ ਫੇ ਪਾਣੀ ਰੁਕ ਜਾਂਦਾ ਜਿੰਨਾ ਜਰਮਾਨਾ ਉੱਚਾ ਦਿਮਾਗ 'ਚ ਹੈ ਉਹ ਨਾ ਰੁਕ ਨਹੀਂ ਸਕਦਾ ਉੱਚਾ ਨਾ ਹਾਰਡ ਥਲੇ ਨੀਵੇ ਮੈਂ ਜਾ ਕੇ ਹਾਰਡ ਤੇ ਰੁਕ ਜਾਂਦਾ ਜਾਂ ਸਮਾ ਜਾਂਦਾ ਫਿਰ ਨੀਂਦਾ ਜਾਂਦੀ ਹੋਵੇ ਸਮਝ ਆਉਂਦੇ ਆਪਾਂ ਉਹਦਾ ਅਚੇਤ ਅਵਸਥਾ ਅਚੇਤ ਅਚੇਤ ਪ੍ਰਕਾਸ਼ ਹਾਂ ਅਚੇਤ ਪ੍ਰਕਾਸ਼ ਉਹਦਾ ਜੇ ਸਮਝ ਆਉਂਦੇ ਆ ਪਰ ਹੁਣ ਜਿਹੜਾ ਅਚੇਤ ਪ੍ਰਕਾਸ਼ ਆ ਹੁਣ ਉਹਦਾ ਸਾਨੂੰ ਗਿਆਨ ਨਹੀਂ ਜਾਂ ਜਾਗ ਪੈਣਾ ਫਿਰ ਉਹ ਅਚੇਤ ਪ੍ਰਕਾਸ਼ ਦਾ ਗਿਆਨ ਹੁੰਦਾ ਅਚੇਤ ਪ੍ਰਗਟਾਜ ਤਾਂ ਹਰ ਵੀ ਹੁੰਦਾ ਹੈ। ਥੋੜਾ ਅਗਿਆਨਤਾ ਜਿਹਦਾ ਸਾਨੂੰ ਦੀਦਾ ਨਹੀਂ ਮਹਿਸੂਸ ਨਹੀਂ ਹੁੰਦੀ। ਫਿਰ ਦੀਦਾ ਹੁੰਦਾ। ਕਿਉਂ? ਕਿਉਂ? ਕਹਾ ਨੇਮ ਸੰਜਮ ਕਹਾ ਕਹਾ ਗਿਆਨ ਅਗਿਆਨ। ਨੇਮ ਕਿਹਨੂੰ ਕਹਿੰਦੇ ਨੇ? ਸੰਜਮ ਕੀ ਹੁੰਦਾ ਹੈ? ਕਹਾ ਨੇਮ ਸੰਜਮ ਕੀ ਚੀਜ਼ ਹੈ? ਸੰਜਮ ਨੇਮ ਸੁਣਿਆ ਹੋਇਆ ਲੇ। ਕੀ ਹੁੰਦਾ ਇਹ ਸਵਾਲ ਇਹ। ਜੇ ਇਹਨਾਂ ਕੀ ਹੈ ਫਿਰ ਅਰਥ ਕੀ ਹੋਏ ਉਸੇ ਹੀ ਨਾਮ ਸਿਰਫ ਲਫਜ਼ ਉਹਦੇ ਉਹ ਜੇ ਰੱਖ ਕੇ ਟੀਕੇ ਕਰਕੇ ਪਹਿਣੇ ਵਾਲੇ ਦੇ ਪੱਲੇ ਫਿਰ ਕੀ ਪਹਿਣਾ ਦੇਮ ਦਾ ਹੀ ਨਹੀਂ ਪਤਾ ਨੇ ਹੁੰਦਾ ਕੀ ਹੈ ਧਰਮ ਦਾ ਹੀ ਨਹੀਂ ਪਤਾ ਧਰਮ ਹੁੰਦਾ ਕੀ ਹੈ ਨਾਮ ਦਾ ਹੀ ਨਹੀਂ ਪਤਾ ਨਾਮ ਹੁੰਦਾ ਕੀ ਹੈ ਤਪ ਦਾ ਹੀ ਨਹੀਂ ਪਤਾ ਤਪ ਹੁੰਦਾ ਕੀ ਹੈ ਜਪਦਾ ਹੀ ਨਹੀਂ ਪਤਾ ਜਪ ਹੁੰਦਾ ਕੀ ਹੈ ਤੇ ਵੇ ਸਮਝ ਕੇ ਆਉ ਕੁਛ ਨਹੀਂ ਇਹ ਤਾਂ ਨੇ ਸਵਾਲ ਕਹਾਂ ਗਿਆਨ ਅਗਿਆਨ ਕਹਾਂ ਗਿਆਨ ਅਗਿਆਨ ਗਿਆਨ اور ਅਗਿਆਨ ਦਾ ਨਹੀਂ ਪਤਾ ਕੀ ਹੁੰਦਾ ਕਿੱਥੇ ਗਿਆਨ ਹੈ ਕਿੱਥੇ ਗਿਆਨ ਇਹਨਾਂ ਸਾਰੇ ਸਵਾਲਾਂ ਦਾ ਜਿੰਨਾ ਜਲ ਕਲੀਅਰ ਜਵਾਬ ਦੀ ਨਾ ਹੈ ਕਿਸੇ ਕੋਲ ਉਹਨਾਂ ਵਿੱਚ ਸਿੱਖੀ ਦਾ ਮਾਰਗ ਇਹਨੂੰ ਪਤਾ ਕੀ ਹੈ ਸਿੱਖੀ ਦੇ ਮਾਰਗ ਦਾ ਗਿਆਨ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਸਿੱਖੀ ਦਾ ਮਾਰਗ ਮਾਰਗ ਦੀ ਡਿਮਾਰਕੇਸ਼ਨ ਹੋ ਗਈ ਫਿਰ ਚੱਲਣਾ ਅਯੋਦਾ ਮਾਰਗ ਦੀ ਡਿਮਾਰਕੇਸ਼ਨ ਨਹੀਂ ਹੈ ਕਿਸੇ ਕੋਲ ਰਾਹਾਂ ਪਾਈ ਜਾਂਦੇ ਨੇ ਸਿੱਖੀ ਆ ਜਿੰਨੂਆਂ ਸਾਰੇ ਸਵਾਲਾਂ ਦਾ ਜਵਾਬ ਹੁੰਦਾ ਸਿਰਫ ਤੁਰਨ ਦੇ ਕਾਬਿਲ ਐ ਸਿੱਖੀ ਦੇ ਉਹ ਲਾਈਨ ਨਹੀਂ ਕਟੂਗਾ ਲਾਈਨ ਦੇ ਵਿੱਚ ਰਹੂ ਰਾਹ ਨਹੀਂ ਬੁੱਲੂ ਸਿਰਫ ਰਾਹ ਨਹੀਂ ਬੁੱਲੂ ਹੋਰ ਕੁਝ ਨਹੀਂ ਰਾਹ ਨਹੀਂ ਬੁੱਲ ਸਕਦਾ ਹੋ ਸਿੱਧਾ ਰਸਤੇ ਤੁਰੂਗਾ ਰਸਤੇ ਦਾ ਨੂੰ ਪਤਾ ਲੱਗਿਆ ਬੈਹ ਰਸਤੇ ਦਾ ਹੀ ਪਤਾ ਲੱਗਿਆ ਉਹ ਨੂੰ ਗਾਨਿਆਂ ਜਾਂ ਗਿਆਨੀ ਹੈ ਜੋ ਹੋ ਸਾਰਾ ਪਤਾ ਲੱਗਣ ਦੇ ਬਾਵਜੂਦ ਉਹ ਭੁੱਖ ਗਿਆ ਡੀਓ ਗਰਮੂਜੇ ਮੁਖ ਗਿਆਨੀ ਧਨਵੰਤ ਗਿਆਨਵਾਨ ਵੀ ਗਿਆਨਵਾਨ ਸਰਬੋਤਮ ਹੁੰਦਾ ਪਰ ਬਰਤਕ ਇਹ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਹੁਣ ਪ੍ਰੀਤ ਭਗਵੰਤ ਦਾ ਮਤਲਬ ਹੈ ਜੇ ਉੱਥੇ ਪਹੁੰਚਣਾ ਨਹੀਂ ਜਿੱਥੇ ਭਗਵੰਤ ਦਾ ਮਾਰ ਦਾ ਪਤਾ ਲੱਗਿਆ ਪ੍ਰੀਤ ਨਹੀਂ ਹੈ ਫਿਰ ਉਹਦਾ ਫਾਇਦਾ ਕੀ ਹੈ ਜੇ ਇਰਾਦਤ ਜੇ ਪ੍ਰੀਤ ਭਗਵੰਤ ਨਾਲ ਭਗਵੰਤ ਨਾਲੇ ਰਾਹ ਤੇ ਚੱਲੂਗਾ ਬਿਲਾ ਬਾਤ ਜੇ ਪ੍ਰੀਤ ਹੈ ਨਹੀਂ ਛੱਡ ਦੂ ਮੈਂ ਭਗਵਾਨ ਤੇ ਕੀ ਲਾਣਾ ਮੇਰੇ ਕੋ ਗਿਆਨ ਹੈਗਾ ਰੋਟੀਆਂ ਵਧੂਣ ਮਾਇਆ ਵਧੂਗਾ ਇੱਜ਼ਤ ਵਧੂਗਾ ਫਿਰ ਵਰਤਕ ਹੈ ਉਹ ਹਨ ਉਹ ਵਰਤਕ ਹੈ ਵਰਤਕ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਸੰਸਾਰ ਆ ਜਾਊਗਾ ਫਿਰ ਉਹ ਵਰਤਕ ਦੇ ਦਾਈ ਮਾਲਕ ਹੈ ਵਰਤਕ ਦੇ ਵਾਸਤੇ ਸਰੀਰ ਵਾਸਤੇ ਹੀ ਉਹ ਕਮਾਈ ਕਰੂਗਾ ਹੁਣ ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ ਹਾਨ ਕੋ ਰੋਗੀ ਸੋਗੀ ਕਵਨ ਸੋਗੀ ਕਵਲ ਰੋਗੀ ਕੌਣ ਸੋਗੀ ਕੌਣ ਸੋ ਕੀ ਦੇ ਅੰਦਰ ਜਿਹਦੇ ਅੰਦਰ ਰੋਗ ਆ ਉਹਦੇ ਅੰਦਰ ਸੋਗ ਵੀ ਹੈ ਰੋਗ ਹੋਵੇ ਤੇ ਸੋਗ ਹੋਵੇ ਨਾ ਜਦੋਂ ਪਤਾ ਲੱਗ ਜਾ ਡਾਕਟਰ ਦੱਸ ਦਵੇ ਨਾ ਇਹਨੂੰ ਤਾਂ ਫਲਾਣਾ ਰੋਗ ਹੈ ਸੋਗ ਤਾਂ ਪੈ ਜਾਂਦਾ ਸੋਗ ਤਾਂ ਆਪੇ ਪੈ ਜਾਣਾ ਜਦ ਪਤਾ ਲੱਗਿਆ ਵੀ ਰੋਗ ਹੈ ਤੈਨੂੰ ਸੋਗ ਤਾਂ ਹੋ ਜਾਂਦਾ ਰੋਗੀ ਸੋਗੀ ਕਵਣ ਕਾਹ ਧਰਮ ਕੀ ਹਾਨ ਕਾਹ ਧਰਮ ਕੀ ਹਾਨ ਧਰਮ ਦੀ ਹਾਨ ਕਿਥੇ ਜਾ ਕੇ ਹੋ ਜਾਂਦੀ ਧਰਮ ਨਸ਼ਟਾ ਤਾਂ ਹੋ ਜਾਂਦਾ ਧਾਰਮਕ ਆਦਮੀ ਦਾ ਧਰਮ ਨਸ਼ਟਾ ਹੋ ਜਾਂਦਾ ਧਰਮ ਕੀ ਹਾਨ ਕਦ ਹੋ ਜਾਂਦੀ ਹੈ ਧਰਮ 'ਚ ਨੁਕਸਾਨ ਕਰਾ ਹੋ ਜਾਂਦਾ ਧਰਮ ਕੀ ਹਾਨ ਵੀ ਹੋ ਜਾਂਦੀ ਆ ਧਰਮ ਕੀ ਹਾਨ ਕਰਕੇ ਉਹ ਕਰਦੇ ਨੇ ਰੂਪ ਕਰਨ ਨਾਲ ਗੱਲਬਾਤ ਜਿਹੜੀ ਹੋ ਰਹੀ ਹੈ ਉਹ ਧਰਮ ਕੀ ਹਾਨ ਆ ਉੱਥੇ ਆਖਰੀ ਲਿਆ ਹੋਇਆ ਇੱਥੇ ਵੀ ਉਹ ਸਵਾਲ ਆਖਰੀ ਇਹ 10ਵੇਂ ਨੰਬਰ ਤੇ ਆਇਆ ਹੈ ਉੱਥੇ ਵੀ ਆਖਰੀ ਰੱਖਿਆ ਹੋਇਆ ਤ੍ਰਿਆਜਤਰ ਆਖਰੀ ਰੱਖਿਆ ਹੋਇਆ ਆ ਤੇਰੀ ਅਜੇ ਤਰਾਂ ਦੀ ਗੱਲ ਐ ਧਰਮ ਕੋ ਹਨ ਉਹ ਹਿਕਾਰਾ ਨਾ ਵੀ ਧਰਮ ਨਾਲ ਸੋਝੂ ਮੇਰਾ ਧਰਮ ਕੋ ਹਨ ਜੂਗਾ ਧਰਮ ਤੇ ਹਨ ਆਏ ਗੱਲ ਹੋ ਤੇਰੀ ਅਜੇ ਤਰਾਂ ਦੀ ਨਾ ਬੈਠ ਇਹ ਵਿੱਚ ਆਉਗੀ ਇਹ ਬਾਹਰ ਜਾਇ ਨਹੀਂ ਸਕੂ ਇਹਨੂੰ ਬਾਹਰ ਕੌਣ ਕੱਢੂਗਾ ਧਰਮ ਤੋਂ ਆ ਜੇ ਨਾ ਧਰਮ ਦਾ ਗਿਆਨ ਨਹੀਂ ਹੈ ਜਾਂ ਧਰਮ ਕਾਤਮੀ ਨਹੀਂ ਉਹ ਜੋ ਵਰਜੀ ਬੋਲੀ ਜਾਣ ਉਹਨਾਂ ਦਾ ਕੀ ਹੈ ਉਹਨਾਂ ਨੂੰ ਕੀ ਬਦਾ ਧਰਮ ਕੀ ਹੁੰਦਾ ਨਾਲੇ ਉਹਨਾਂ ਨੇ ਧਰਮ ਤੇ ਲੈਣਾ ਕੀ ਹੈ ਉਹਨਾਂ ਦਾ ਰੋਕੀ ਕੀ ਬਾਤ ਨਾ ਉਹਦਾ ਬਦਵਾਨ ਜਵੜੀਆਂ ਮਾਰਦੇ ਨੇ ਜਵੜੀਆਂ ਮਾਰਦੇ ਹੁੰਦੇ ਨੇ ਬਦਵਾਨ ਹੋਰ ਕੀ ਕਰਦੇ ਹੁੰਦੇ ਸਸਤੀ ਜੀ ਸ਼ੋਰਤ ਲੈਦੇ ਹੁੰਦੇ ਨੇ ਉਹ ਗੱਲਾਂ ਕਰਕੇ ਕਰਦੇ ਆਪ ਕੁਝ ਨਹੀਂ ਹੁੰਦੇ ਤਾਂ ਧਰਮ ਬੰਦੇ ਹੁੰਦੇ ਨੇ ਨਾ ਧਰਮ ਦਾ ਰੋਣੂ ਕੀ ਆਉਂਦਾ ਉਹ ਦੁਨੀਆਬੀ ਲੈਵਲ ਤੇ ਤਰਫ ਨੂੰ ਤੋਲਦੇ ਹੁੰਦੇ ਨੇ ਦੁਨੀਆਬੀ ਬੁੱਧੀ ਨਾਲ ਤਰਫ ਨੂੰ ਤੋਲਦੇ ਹੁੰਦੇ ਨੇ ਦੁਨੀਆਬੀ ਤਕੜੀ ਨਾਲ ਜਿੰਨੇ ਧਰਮ ਬਗਾੜੇ ਹੋਏ ਨੇ ਇਹ ਵਿਦਵਾਨਾਂ ਦੇ ਬਗਾੜੇ ਹਨ ਇੱਕ ਧਰਮ ਆ ਇੱਕ ਮਤ ਹੈ ਸਿਰਫ ਜਿਹਦੇ ਵਿੱਚ ਵਿਦਵਾਨਾਂ ਦੀ ਐਂਟਰੀ ਨੋ ਐਂਟਰੀ ਆਣ ਵਾਸਤੇ ਬਾਕੀ ਸਾਰੇ ਹੀ ਵਿਦਵਾਨਾਂ ਦੀਆਂ ਮਤਾਂ ਨੇ ਦੁਨੀਆ ਦੀਆਂ ਸਾਰੀਆਂ ਵੱੱਤਾਂ 'ਚ ਵਿਦਵਾਨ ਇਨਵੋਲਵ ਹੋ ਸਕਦੇ ਨੇ ਕਿਉਂਕਿ ਮਤ ਸੱਚੀ ਹੈ ਨਹੀਂ ਕੋਈ ਵਿਦਵਾਨ ਵੀ ਝੂਠੇ ਮਤਾਂ ਵੀ ਝੂਠੀਆਂ ਉਹ ਬਾਕੀ ਦੁਨੀਆ ਦੀਆਂ ਸਾਰੀਆਂ ਵੱੱਤਾਂ ਵਿਦਵਾਨਾਂ ਦੇ ਨੇ ਗੁਰਮਤਿ ਵਿਦਵਾਨਾਂ ਦੇ ਲੈਵਲ ਤੇ ਪਰੇ ਗੁਰਮਤਿ ਹੀ ਇਕਮਤ ਐਸੀ ਹੈ ਜੋ ਸੱਚੀ ਮਤ ਹੈ ਵਿਦਵਾਨਾਂ ਦਾ ਜਾਂ ਕਿਸੇ ਚੀਜ਼ ਨਾਲ ਪੱਲਾ ਪੈ ਜਾਂਦਾ ਨਾ ਪਾਲਾ ਪੈ ਜਾਂਦਾ ਹੈ ਬਸ ਉਹ ਸੱਚੇ ਦਾ ਰੰਗ ਬਗਾੜਦੇ ਨੇ ਵਿਦਵਾਨ ਆਪ ਝੁੱਠੇ ਹੁੰਦੇ ਨੇ ਨਾ ਆਪਣਾ ਰੰਗ ਬੱਤੇ ਚੜ੍ਹਦੇ ਨੇ ਉਹ ਬਾਕੀ ਸਾਰੀਆਂ ਹੀ ਵਿਦਵਾਨਾਂ ਦਾ ਰੰਗ ਚੜਾਇਆ ਹੋਇਆ ਇਸੇ ਬੱਤ ਨੂੰ ਤਾਂ ਵਿਗੜੀ ਗਈ ਹੋਰ ਦੇ ਸਰੂਪ ਨੇ ਇਸ ਬੱਤ ਵਿੱਚ ਗੁਰਬੱਤ ਵਿੱਚ ਵਿਦਵਾਨ ਵਾਸਤੇ ਨੋ ਇਟਰੀ ਮੂਰਖ ਪੰਡਤ ਇੱਕ ਬਤ ਹਜਤ ਸੱਚੇ ਧਰੇ ਪਿਆਰ ਪੰਡਤ ਨੂੰ ਵਿਦਵਾਨ ਨੂੰ ਮੂਰਖ ਕਿਹਾ ਹੈ ਪੜਿਆ ਬੋਰਖ ਆਖੀਆ ਜਿਤ ਲਬ ਲੋਭ ਧੁਕਾਰ ਇਹ ਤੇ ਵਿਦਵਾਨ ਪੜਿਆ ਇਹਨੂੰ ਕਹਿਆ ਨਾ ਪਹਿਲਾ ਲਬ ਲੋਭ ਰਕਾਰ ਆ ਉਥੇ ਤੱਕ ਵਿਦਵਾਨ ਹੈ ਜੇ ਲਬ ਲੋਭ ਕਾਰ ਨਹੀਂ ਰਿਹਾ ਫਿਰ ਵਿਦਵਾਨ ਹੋ ਨਹੀਂ ਰਿਹਾ ਵਿਦਿਆ ਵੇਚਣ ਵਾਲੀ ਚੀਜ਼ ਹੈ ਵਿਦਿਆ ਬਖਾਉ ਮਾਲ ਹੁੰਦਾ ਸਾਡੇ ਕੋਲ ਕਣੀ ਵਿਦਿਆ ਗੁਰਮੁਖੋ ਕਣੀ ਵਿਦਿਆ ਹੁੰਦੀ ਹੈ ਉਹ ਵਿਦਿਆ ਸੋਦੀ ਹੋਈ ਹੁੰਦੀ ਆ ਉਹ ਵਿਦਿਆ ਨਹੀਂ ਹੁੰਦੀ ਸੋਦੀ ਹੋਈ ਵਿਦਿਆ ਨਹੀਂ ਵਿਖਦੀ ਬਿਨਾ ਸੋਦੀ ਹੋਈ ਵਿਦਿਆ ਵਿਖਦੀ ਹੈ ਸ਼ਾਸਤਰਾਂ ਦੀ ਵਿਦਿਆ ਬਿਨਾ ਸੋਦੀ ਹੋਈ ਹੈ ਇਤਿਹਾਸ ਦੀ ਵਿਦਿਆ ਬਿਨਾ ਸੋਦੀ ਹੋਈ ਹੈ ਵਿੱਚੋ ਜਿੰਨੀ ਮਰਜ਼ੀ ਰੱਜ ਕੇ ਅਗਰ ਉਹ ਇਤਿਹਾਸੀ ਜਿੰਨੇ ਬਣਾਏ ਨੇ ਉੱਥੇ ਹੀ ਵਜਣਾ ਚੱਲਦਾ ਇਤਿਹਾਸੀ ਜਿੰਨੀ ਅਵਸਥਾ ਨੇ ਹੀ ਵਜਣਾ ਚੱਲਦਾ ਉਹਨਾਂ ਤੇ ਮਾਇਆ ਇਕੱਠੀ ਕਰਨ ਨੂੰ ਅੱਜ ਜਾਗਾ ਹੈ ਜੀ ਫਲਾਣੀ ਬੀੜਾ ਹੈ ਜੀ ਸ਼ਸਤਰ ਨੇ ਸਭ ਮਾਇਆ ਹੈ ਮਾਇਆ ਨਾ ਮਾਇਆ ਇਕੱਠੀ ਹੋਣੀ ਇਹ ਮੈਨੂੰ ਸਾੜੀਆਂ ਚੀਜ਼ਾਂ ਦੇ ਗੁਰਮਤਿ ਵਿੱਚ ਇਹਨਾਂ ਚੀਜ਼ ਨਹੀਂ ਗੁਰਮਤਿ ਤਾਂ ਬੱਕਰੀ ਕੀ ਈ ਹੈ ਇਹਨਾਂ ਚੀਜ਼ਾਂ ਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ ਹੈ ਕਿਸੇ ਮਾਇਆ ਦੀ ਚੀਜ਼ ਮਾਇਆ ਦੀ ਚੀਜ਼ ਤਾਂ ਮਾਇਆ ਦੀ ਚੀਜ਼ ਬੋਲਣ ਵਾਲੇ ਦੇ ਸਰੀਰ ਦਾ ਸੰਬੰਧ ਨਹੀਂ ਹੈ ਗੁਰਮਤਿ ਨਾਲ ਫਗ ਤਾਂ ਦੇ ਸਰੀਰ ਦਾ ਵੀ ਸੰਬੰਧ ਨਹੀਂ ਹੈ ਗੁਰਮਤਿ ਨਾਲ ਗੁਰਮਤਿ ਨਾਲ ਤਾਂ ਆਤਮਾ ਤੇ ਸਭਾ ਕਿਸੇ ਜੀਵ ਦਾ ਸੰਬੰਧ ਹੈ ਉਹ ਨਹੀਂ ਵਿਦਵਾਨ ਆਤਮਕ ਲੈਵਲ ਤੇ ਜੀਉਦੇ ਨਹੀਂ ਇਹ ਉਹਨਾਂ ਦੀ ਗੱਤ ਹੈ ਜਿਹੜੇ ਸਿਰਫ ਆਤਮਾ ਦੇ ਲੈਵਲ ਤੇ ਜਾਂਦੇ ਨੇ ਆਤਮਾ ਦੀ ਖੁਰਾਕ ਨੂੰ ਖੁਰਾਕ ਮੰਨਦੇ ਨੇ ਆਤਮਾ ਦਾ ਖਾਣਾ ਨੂੰ ਖਾਣਾ ਮੰਨਦੇ ਨੇ ਆਤਮਾ ਦੇ ਪਹਿਨਣ ਨੂੰ ਪਰਣਾ ਮੰਨਦੇ ਨੇ ਆਤਮਾ ਨੇ ਕਮੋੜਾ ਤਾਂ ਉਹਨਾਂ ਦਾ ਧਨ ਹੈ ਉਹਨਾਂ ਦਾ ਸਭ ਕੁਝ ਵੱਖਰਾ ਵਿਦਵਾਨਾਂ ਨਾਲੋਂ ਇਸ ਕਰਕੇ ਵਿਦਵਾਨ ਤਾਂ ਮੂਰਖ ਨੇ ਜਿਹੜੇ ਧਰਮ ਵਿੱਚ ਦਖਲ ਦੁੱਦੇ ਨੇ ਵਿਦਵਾਨਾਂ ਦਾ ਦਾ ਬਗਾੜਿਆ ਹੋਇਆ ਧਰਮ ਸਾਰੇ ਝਗੜੇ ਵੀ ਵਿਦਵਾਨਾਂ ਦੇ ਪਾਏ ਹੋਏ ਨੇ ਜਿੱਦਣ ਵਿਦਵਾਨਾਂ ਨੂੰ ਘੂਰਤਾ ਪਰੇ ਕਰਤਾ ਉਹਦਲ ਚੁੱਪ ਕਰ ਜਾਣਗੇ ਧਰਮਾਪੇ ਆਪਣੀ ਲੈਣ ਤੇ ਆਜੂ ਇਹਨਾਂ ਦੀ ਗੱਲ ਸੁਣਨੀ ਵਿਦਵਾਨਾਂ ਦੀ ਵੱਡੀ ਮੂਰਖਤਾ ਹੈ ਵੱਡੀ ਮੂਰਖਤਾ ਗੁਰਬਾਣੀ ਦੇ ਘੂਰ ਕਰਖਣ ਵਿਦਵਾਨ ਪਿਛੇ ਰੱਖਣ ਬੀ ਤੂੰ ਉਹ ਪਰੇ ਭੇਜੋ ਸੁਣ ਲਿਓ ਨੀ ਇਹਨਾਂ ਦੀ ਗੱਲ ਇਹਨਾਂ ਦੀ ਗੱਲ ਸੁਣ ਲਈ ਬੂਰਖਤਾ ਹੀ ਐ ਅਕਾਲੀ ਸੁਣਦੇ ਰਹੇ ਨੇ ਆਪ ਵੀ ਵਿਦਵਾਨ ਸੀ ਉਹ ਵੀ ਵਿਦਵਾਨ ਸੀ ਫਸਾ ਕੇ ਰੱਖਦੇ ਅਜੂਰ ਸਾਹਿਬ ਵਾਲੇ ਕੋਈ ਫਸੇ ਉਹ ਵਿਦਵਾਨ ਬੋਲੇ ਡਾਂਗ ਚੱਕ ਲੈਂਦੇ ਨੇ ਕਦੇ ਆ ਜਾ ਫਿਰ ਤੈਨੂੰ ਦੱਸੀਏ ਉੱਥੇ ਕਹਦੇ ਨਹੀਂ ਕੋਈ ਰੌਲਾ ਇੱਥੇ ਰੌਲੇ ਕਿਉਂ ਨੇ ਇਹ ਵਿਦਵਾਨਾਂ ਨੇ ਟਹੇ ਜੜੇ ਹੋਏ ਨੇ ਤਾਂ ਰੌਲੇ ਨੇ ਇੱਥੇ ਉੱਥੇ ਜੇ ਕੋਈ ਬੋਲੇ ਜਾਂਦੇ ਘੁੱਟ ਦਾਲਦੇ ਨੇ ਉਹ ਉਹ ਬੋਲੇ ਨਹੀਂ ਜਦ ਤੈਨੂੰ بولਣ ਦੇ ਇਹ ਛੱਤਰ ਤੇ ਯਾਰ ਹੁੰਦੇ ਨੇ ਵਿਦਵਾਨ بس ਸਰਕਾਰ ਕੋਲ ਵੀ ਛੱਤਰ ਹੈ ਨਾ ਕੰਮ ਕਰੋ ਨਹੀਂ ਤੇ ਛੱਤਰ ਕੰਮ ਕਰੋ ਤਨਖਾਹ ਲਓ ਨਾ ਕਰੋਗੇ ਛੱਤਰ ਬਈ ਇਹਨਾਂ ਜੋ ਗਈ ਹੁੰਦ ਨੇ ਬਕਾਊ ਮਾਲ ਹਨ ਬਕਾਊ ਮਾਲ ਹਨ ਨੌਕਰ ਤਾਂ ਇਕਰਾਈ ਦੇ ਛੱਤਰ ਨਾ ਕੰਮ ਹੋਰ ਕੀ ਕਰਾਈ ਦੇ ਜੋ ਖਰੀਦੇ ਜਾ ਸਕਦਾ ਉਹਦੀ ਇੱਜ਼ਤ ਨਹੀਂ ਹੁੰਦੀ ਖਰੀਦੇ ਹੋਏ ਆਦਮੀ ਦੀ ਇੱਜ਼ਤ ਹੋਵੇ ਅਰਦੇ ਵੀ ਇੱਜ਼ਤ ਨਹੀਂ ਹੈ ਗੁਰੂ ਘਰ ਚ ਜਾ ਕੇ ਗੁਰੂ ਕੋਲ ਕੋ ਖਰੀਦਿਆ ਆ ਉਥੇ ਨੂੰ ਪਿਆ ਹੈ ਉਥੇ ਤਾਂ ਲਾਲਾ ਬੋਲਾ ਹੋ ਸੰਸਾਰ ਵਿੱਚ ਇੱਜ਼ਤ ਕਰੇ ਨਾ ਕਰੇ ਸੰਸਾਰ ਦੀ ਉਹਨਾਂ ਇੱਜ਼ਤ ਬੇਇਜ਼ਤੀ ਛੱਡ ਗਈ ਹੋਈ ਹੈ ਸੰਸਾਰ ਦੀ ਇੱਜ਼ਤ ਬੇਇਜ਼ਤੀ ਛੱਡ ਗਈ ਹੋਈ ਹੈ ਉਧਰ ਉਹ ਲਾਲਾ ਬੋਲਾ ਬਣ ਕੇ ਗਿਆ ਇੱਜ਼ਤ ਤਪੁ ਕਹ ਜੇ ਤੂੰ ਮੇਰਾ ਹੋਇਰਾ ਸਭ ਜਗ ਸਭ ਜਗ ਤੇਰਾ ਹੋਏ ਇਹ ਵੀ ਅਲਾਂ ਤੋਂ ਕਹਾ ਤਰਮ ਕੀ ਹਾਨ ਕਹਾ ਤਰਮ ਕੀ ਹਾਨ ਧਰਮ ਦੀ ਹਾਨੀ ਕਿੱਥੇ ਹੁੰਦੀ ਏ ਦੋਹਰਾ ਕੋ ਸੂਰਾ ਸੁੰਦਰ ਕਵਣ ਕਹਾਂ ਯੋਗ ਕੋ ਕੋ ਸੂਰਾ ਸੁੰਦਰ ਕਵਣ ਸੂਰਾ ਕੌਣ ਹੈ ਸੂਰਮਾ ਕੌਣ ਹੁਣ ਧਰਮ ਦੀ ਹਾਨ ਜੇ ਬਚ ਗਿਆ ਤਾਂ ਸੂਰਮਾ ਤਾਰੂ ਦੇ ਹਾਂ ਤਾਂ ਨਹੀਂ ਛੱਡ ਸਕਦੇ ਗੱਲ ਨੂੰ ਤਾਰੂ ਦੇ ਹਾਂ ਤੋਂ ਭਜਿਆ ਹੈ ਸੂਰਮਾ ਜਾਂ ਉੱਤੇ ਰਹਿ ਗਿਆ ਫਿਰ ਸੂਰਮਾ ਜ਼ਾਹਰ ਹੈਗਾ ਬਾਸੋ ਆਖਰੀ ਖੱਟ ਸੀ ਜਿੱਥੋਂ ਨਿਕਲੇ ਰਹਿ ਆਖਰੀ ਆਖਰੀ ਜਿਹੜੀ ਪੌੜੀ ਸੀ ਆਖਰੀ ਖਤਰਾ ਸੀ ਉਹ ਤਰੀਆ ਚਰਤਰ ਦਾ ਹੀ ਖਤਰਾ ਆਖਰੀ ਧਰਮ ਕੋ ਹਨ ਹੁਣ ਦਾ ਜੇ ਤੋ ਬਚ ਗਿਆ ਫਿਰ ਸੂਰਤ ਫਿਰ ਮਨ ਜਤਿਆ ਗਿਆ ਫਿਰ ਮੰਡੇ ਗਿਆ ਜੀ ਜਮ ਡੇ ਗਿਆ ਹਾਰ ਗਿਆ ਜੇਵਨ ਡੇਗਣ ਤੇ ਬਚ ਗਿਆ ਫਿਰ ਜਿੱਤ ਗਿਆ ਤਰ ਵੀ ਹਾਂ ਤੋਂ ਮਨ ਬਚ ਗਿਆ ਫਿਰ ਬਜੀ ਜਿੱਤ ਗਿਆ ਸੂਰਾ ਹੋਈਆ ਜਿਹੜਾ ਉਥੋਂ ਬਚ ਗਿਆ ਉਹ ਬਚ ਗਿਆ ਸੁੰਦਰ ਕਬਨ ਸੁੰਦਰ ਕੌਣ ਸੁੰਦਰ ਕਬਨ ਕੌਣ ਸੁੰਦਰ ਸੂਰਾ ਕੌਲੀ ਸੂਰਾ ਹੀ ਸੁੰਦਰ ਹੈ ਕਹਾ ਜੋਗ ਕੋ ਸਾਰ ਜੋਗ ਕੋ ਸਾਰ ਕੀ ਹੈ ਸਾਰ ਗਿਆਨ ਜੋਗ ਦਾ ਕੀ ਹੈ ਜੋਗ ਦਾ ਤਾਤਪर्य ਕੀ ਹੈ ਜੋ ਕੀ ਕਹਿੰਦੇ ਕਿ ਕੀ ਜਿਹੜਾ ਜਿਹਨੂੰ ਜੋਗ ਕਹਿੰਦੇ ਨੇ ਉਹ ਵਿਧੀ ਕੀ ਹੈ ਜਿਹਦੇ ਨਾਲ ਜੋਗ ਹੋਊਗਾ ਹੀ ਹੋਊਗਾ ਰੁਕ ਸਕਦਾ ਹੀ ਨਹੀਂ ਜਿਹੜਾ ਜੋਗ ਨਹੀਂ ਫਿਰਦੇ ਨੇ ਜੋਗੀ ਉਹ ਜੋ ਕਾਮਯਾਬ ਨਹੀਂ ਹੈ ਜੋ ਕੋ ਸਾਰ ਕੀ ਹੈ ਫਿਰ ਕੋ ਦਾਤਾ ਗਿਆਨੀ ਕਵਣ ਜੋ ਵਿਚਾਰ ਸਾਰ ਜਿਹੜਾ ਲਫਜ਼ ਹੈ ਸਾਰ ਦਾ ਲਫਜ਼ ਹੁੰਦਾ ਜੋਗ ਦਾ ਜੋਗ ਦਾ ਥਾ ਉਕਤੀ ਦਾ ਥਾ ਹੁੰਦਾ ਉਕਤੀ ਦੀ ਸਮਝ ਜੋਗ ਦੀ ਸਮਝ ਕੀ ਹੈ ਸਾਰ ਕੀ ਸਮਝ ਕੀ ਹੈ ਜੇ ਤੁਹਾਨੂੰ ਸਮਝ ਆ ਗਈ ਕੰਮ ਉਹ ਹੀ ਸਰੇ ਚੜਾਊਗਾ ਜਿਹੜੇ ਕੰਮ ਦੀ ਸਾਨੂੰ ਸਮਝ ਨਹੀਂ ਕੰਮ ਸਰੇਡ ਨਹੀਂ ਕਰ ਸਕਦਾ ਸਾਡਾ ਜੋ ਬਹਿ ਗਿਆ ਜੋਗ ਦੀ ਸਮਝ ਹੈ ਨਹੀਂ ਕਿਹੜੇ ਕਿਹੜੇ ਨਾਲ ਜੁੜਨਾ ਕਰ ਕੀ ਰਿਹਾ ਕੁਝ ਵੀ ਨਹੀਂ ਕਰ ਰਿਹਾ ਕੁਝ ਵੀ ਨਹੀਂ ਕਰ ਰਿਹਾ ਫਿਰ ਉਹ ਦਾਤਾ ਗਿਆਨੀ ਕਵਣ ਉਹ ਦਾਤਾ ਗਿਆਨੀ ਕਵਣ ਕਹੋ ਵਿਚਾਰ ਅਵਿਚਾਰ ਕਹੋ ਵਿਚਾਰ ਅਵਿਚਾਰ ਦਾਤਾ ਕਹੋ ਗਾਲੀ ਘੋਲ ਇਹਦਾ ਵਿਚਾਰ ਫੁੱਟ ਜਿੱਦ ਕੇ ਅ ਵਿਚਾਰ ਵਿਚਾਰ ਵੀ ਹੁੰਦੀ ਹੈ ਦੋਏ ਪਾਸੇ ਰੜਕਉਂਦੀ ਹੈ ਚੀਜ਼ ਵਿਚਾਰ ਜਾਂਦ ਹੁੰਦੀ ਹੈ ਜਾਂ ਰੜਕਦੇ ਆ ਉਧਰੋਂ ਵੀ ਰਸੀਖਦੇ ਆ ਫਿਰ ਉਧਰ ਆ ਜਿੰਦੇ ਫਿਰ ਦੋਏ ਪਾਸੇ ਇਹ ਵਿਚਾਰ ਆ ਵਿਚਾਰ ਇਹਨੂੰ ਸਾਰੇ ਨੂੰ ਰੜਕ ਕੇ ਗੱਲ ਦੂਰ ਬੰਧਨ ਕਰਕੇ ਸਮਝਾਓ ਦੋਏ ਪਾਸੇ ਰੁੱਕ ਕੇ ਜੇ ਐ ਹੋਊ ਤਾਂ ਐਂ ਜ ਆਹ ਹੋ ਜ ਬਤਾ ਇਹ ਵਿਚਾਰ ਵਿਚਾਰ ਹੈ ਤਾਉ ਪ੍ਰਸਾਦ ਦੀਰਘ ਤ੍ਰਭੰਗੀ ਛੰਦ ਦੁਰਜਣ ਦਲ ਦੰਡਣ ਅਸੁਰ ਬਹਿੰਡਣ ਦੁਸ਼ਟ ਨਕੰਦਨ ਆਦ ਵਰਤੇ ਹੋਜੀ ਇਹ ਭਗੋਤੀ ਦੀ ਉਸਤਤੀ ਚੱਲ ਪਈ ਹੁਣ ਅਕਾਲ ਉਸਤਤ ਦੇ ਵਿੱਚ ਭਗੋਤੀ ਦੀ ਉਸਤਤੀ ਚੱਲ ਪਈ ਹੁਣ ਜੀ ਬਚਾਉਣੀ ਸੀ ਨਾ ਮਤ ਆਪਣੀ ਪੰਡਿਤ ਨੇ ਉਹਨੇ ਕਹਾ ਇਹ ਤਾਂ ਬਹੁਤ ਮਾੜੀ ਗੱਲ ਹੋਗੀ ਉਹਨਾਂ ਨੇ ਕਸਾਂਖੀ ਘੜੀਏ ਅਰਥ ਵਿੱਚ ਜੇ ਨਾ ਘਟਦੇ ਉਹਨਾਂ ਦੀ ਭੁਰਤੀ ਪੂਜਾ ਜਾਂਦੀ ਹੈ ਅਸਰ ਜਿ ਉਹਨਾਂ ਸਾਖੀਆਂ ਨੇ ਜਿਹੜਾ ਪਰਪੈਣਾ ਕੀਤਾ ਸਿੱਖਾਂ ਨੂੰ ਸਮਝ ਨਹੀਂ ਆਈ ਉਹਨੂੰ ਸੱਚ ਮੰਨੀ ਬੈਠੇ ਨੇ ਐਦਾ ਨਹੀਂ ਦੇਖਿਆ ਵੀ ਉਹ ਤਾਂ ਆਪਣੀ ਮੱਤ ਬਚਾਉਂਦੇ ਨੇ ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗਨ ਸੁਹੀ ਰਾਗ ਉਥੇ ਇਸਤਰੀ ਪ੍ਰਧਾਨ ਆ ساری ਗੱਲ ਕੁਚਤ ਜੀ ਸਚ ਜੀ ਹੈ ਤਾਂ ਗੁਰਮੁਖਵਾਸ ਤੇ ਲਫਜ਼ ਆ ਸਿੱਖ ਵਾਸਤੇ ਆਇਆ ਪਰ ਉਥੇ ਬੁੱਧੀ ਪ੍ਰਧਾਨ ਕਰਕੇ ਬੋਲੀਏ ساری ਗੱਲ ਮਨ ਨੂੰ ਨਹੀਂ ਸਿਖਾ ਦਿੰਦੀ ਉਥੇ ਬੁੱਧੀ ਨੂੰ ਸਿਖਾ ਦਿੰਦੀ ਹੈ ਮਰ ਬੁੱਧੀ ਗੱਲ ਕੋਈ ਹੈ ਬਾਕੀ ਬਾਣੀ ਦੇ ਵਿੱਚ ਮੰਨੂ ਆ ਰੇਵਨ ਐਸੋ ਕਰਸ ਨੇ ਐਸਾ ਇਹਦੇ ਵਿੱਚ ਵੀ ਆ ਇਹਦੇ ਵਿੱਚ ਅਕਾਲ ਉਸਤਤ ਦੇ ਵਿੱਚ ਤੀਰਕ ਤਰਫ ਕੀ ਛੰਦ ਦੇਤਾ ਸਾਰੀ ਗੱਲ ਉਹੀ ਹੈ ਜਿਹੜੀ ਚੱਲਦੀ ਜਿਹੜੇ ਤਰ ਚੰਡੇ ਦੇ ਦੇ ਵਿੱਚ ਐ ਦੋਵੇਂ ਚੰਡੀ ਜਿਹਰ ਤਰ ਸਾਰੇ ਵੈਸੇ ਤਾਂ ਹਰ ਜਗ੍ਹਾ ਇਹੀ ਚੱਲੂਗੀ ਦਸਮ ਦੇ ਵਿੱਚ ਇਸ ਕਰਕੇ ਦਿੱਤਾ ਤਾਂ ਕਿ ਪਿਤਾ ਮਾਤਾ ਇਕੱਠੇ ਨੇ ਉਨੇ ਸਾਖੀ ਕਢ ਲਈ ਬਈ ਜੀ ਇੱਕ ਜਿਸ ਦਾ ਦਵਗਾਲ ਉਸ ਤਰ੍ਹਾਂ ਜਾਇਆ ਸੀ ਬਾਣੀ ਇੱਕ ਕਾਵਲ ਦੀ ਸੁਕਤਾਈ ਕਾਵਲ ਦੀ ਸੰਗਤ ਲੈ ਆਈ ਸੀ ਕਾਵਲ ਤੋਂ ਬੇਬੇ ਕੋਈ ਪੱਡਤੀ ਜਾ ਰਿਹਾ ਅਨੰਤਪਰ ਸਾਹਿਬ ਸੁਣਿਆ ਵੀ ਗੁਰੂ ਸਾਹਿਬ ਜਿਹੜੀ ਹੈ ਨਾ ਸਾਡਾ ਜਿਹੜਾ ਸ਼ਾਸਤਰ ਦੇ ਇਹਨਾਂ ਨੂੰ ਨਵੇਂ ਮਤਲਬ ਹੈ ਇਹਨਾਂ ਨੂੰ ਅਰਥ ਰਹੇ ਨੇ ਪੰਜਾਬੀ ਭਾਸ਼ਾ ਵਿੱਚ ਕਹਦੇ ਤਾਂ ਥੈਰੀ ਜਾਸਨ ਤੇ ਐਡਾ ਤਾਂ ਕੋਈ ਹੋ ਨਹੀਂ ਸਕਦਾ ਜਿਹੜਾ ਇਹ ਕੁਛ ਕਰ ਦੇਵੇ ਤਾਂ ਰਿਸ਼ੀ ਪੁਰਿਆਂ ਨੇ ਕੀਤਾ ਸੀ ਸੁਣਿਆ ਸੀ ਉਹਨੇ ਉਥੋਂ ਕਹਿੰਦੇ ਉਹਨੇ ਕਹਿੰਦਾ ਮੈਂ ਦਰਸ਼ਮਤਰ ਕਿਹਾ ਬੰਨ ਵਾਲੇ ਦੇਖਿਆ ਵਾਕਈ ਕਰ ਰਹੇ ਨੇ ਲੋਕਾਂ ਗੱਲਾਂ ਕਰਦੇ ਨੇ ਉਹ ਚੱਲ ਆ ਗਿਆ ਰਾਹ ਦੇ ਵਿੱਚ ਕਹਿੰਦਾ ਉਹ ਤੇ ਥੋੜੇ ਦੂਰ ਰਹਿ ਗਿਆ 2 ਕਿਲੋਮੀਟਰ ਪਰ ਬਈ ਮਾ ਗੁਰੂ ਨੂੰ ਤਾਂ ਗੁਰੂ ਨੂੰ ਜਾਣੀ ਜਾਣ ਇਹ ਤਾਂ ਕੋਈ ਜਾਣੀ ਜਾਣਾ ਅਬ ਵੀ ਗਾਉ ਤੋ ਜਾਣੇ ਜਾਣਨੇ ਸਭ ਉਹਨਾਂ ਨੂੰ ਤੈਨ ਲੋਕ ਦਾ ਗਿਆਨ ਹੈ ਜਿਵੇਂ ਲੋਕ ਕਹਿੰਦੇ ਉਧਰ ਉਹ ਤਾਂ ਜੀ ਤੈਨ ਲੋਕ ਦੇ ਜਾਣੂ ਨੇ ਆ ਉਹ ਐ ਉਧਰਲੀ ਲੈਂਦੇ ਨੇ ਉਹ ਕਹਿੰਦਾ ਮੈਂ ਤਾਂ ਮਨੂਗਾ ਵੀ ਜੇ ਮੇਰੇ ਜਾਂਦੇ ਨੂੰ ਕਾਬਲ ਦੇ ਤਾਂ ਬੇਵੇਂ ਮੈਨੂੰ ਦੇਣ ਬਿਨਾ ਮੁੱਕੇ ਤੇ ਅਰ ਜਿਹੜਾ ਮੇਰੇ ਆਦਾ ਦੁਰਗਾ ਸੋਤਰ ਉਸੇ ਦੀ ਵਿਆਖਿਆ ਕਰਨ ਮੇਰੇ ਬਿਰੋ ਕਹੇ ਤੇ ਆ ਸਾਖੀ ਘੜੀ ਹੈ ਗੁਰ ਜਾਣ ਕੇ ਤਾਂ ਕਿ ਇਹ ਸਾਬਤ ਨਾ ਹੋਵੇ ਵੀ ਉਹਨਾਂ ਨੇ ਇਹ ਜਾਣ ਕੇ ਲਿਖੀ ਹੈ ਕਹਿੰਦੇ ਵੀ ਲਿਖੀ ਗਈ ਉਹ ਤਾਂ ਬਸ ਉਹਦਾ ਫਰਨਾ ਸੀ ਉਹਦੇ ਬਤਾਬ ਕਰਨ ਨੂੰ ਬੋਲਣੀ ਪਈ ਤਾਂ ਵਿੱਚ ਆ ਗਈ ਇਹ ਛਾਤਰ ਦਿਮਾਗ ਨਾਲ ਸਾਖੀ ਘੜ ਕੇ ਲੀਹੋ ਲਾਉਣ ਦੀ ਗੱਲ ਕੀਤੀ ਗੁਰਬਾਤ ਉਹ ਜਿਵੇਂ ਜ ਪੱਟਾਂ ਦੇ ਸਬਈਏ ਲਿਖੇ ਨੇ ਜਿਵੇਂ ਉੱਥੇ ਸਾਖੀ ਲਿਖੀ ਹੈ ਬੇਕ੍ਰਮਾ ਉਹ ਦੇਵਤਿਆਂ ਦੇ ਸਵਾਰ ਜਿ ਬੈਠੇ ਸੀ ਕਥਾਕਾਰ ਰਹੀ ਸੀ ਬ੍ਰਹਮਾ ਚਾਰੇ ਵੇਦ ਨਾਲ ਲੈ ਕੇ ਉਥੇ ਵਿਸ਼ਨੂੰ ਆ ਗਿਆ ਉਹ ਸਾਡੇ ਸੰਗਤ ਉੱਠ ਖੜੀ ਉੱਠਿਆ ਲਈ ਉਹਨਾਂ ਨੇ ਸਰਾਫ ਦਿੱਤਾ ਠੀਕ ਉਸੇ ਤਰੀਕੇ ਨਾਲ ਸਾਖੀ ਤੇ ਖੜੀ ਹੋਈ ਇਹ ਬੜੇ ਛਾਤਲ ਦਿਮਾਗ ਸੀਗੇ ਸਿੱਖਾ ਨੂੰ ਕਦੇ ਸਮਝ ਨਾ ਗੱਲਾਂ ਦੀ ਇਹਨੂੰ ਤਾਂ ਧਰਮ ਦਾ ਗਿਆਨ ਹੈ ਨਹੀਂ ਇਹ ਸਾਖੀ ਹੈ ਇਹਦੇ ਬਾਰੇ ਗੱਲ की ਹੈ ਗਾਲੋ ਬਵੇਖ ਬੁੱਧੀ ਦੀ ਚਲਦੀ ਹੈ ਸਾਰੀ ਬਵੇਖ ਬੁੱਧੀ ਦੀ ਚਲਦੀ ਪਿੱਛੇ ਵੀ ਬਵੇਖ ਬੁੱਧੀ ਦੀ ਗੱਲ ਚੱਲੀਏ ਚਾਹੇ ਗਾਲਾ ਗਾਲ ਉਸਤੇ ਹੈ ਪਰ ਚਲਦੀ ਤਾਂ ਬਵੇਖ ਬੁੱਧੀ ਦੀ ਗੱਲ ਹੈ ਉਹਨਾਂ ਨੂੰ ਗਿਆਨ ਤਾਂ ਨਹੀਂ ਹੈ ਗੁਰਮੁਖ ਸ਼ਬਦ ਨਹੀਂ ਹੈ ਗੁਰਮੁਖੀ ਸ਼ਬਦ ਇਸ ਤਰੀਕੇ ਦਾ ਸ਼ਬਦ ਹੈ ਗੁਰਮੁਖੀ ਹੀ ਬਗੋਤੀ ਹੈ ਗੁਰਮੁਖ ਸ਼ਬਦ ਨਹੀਂ ਹੈ ਇੱਥੋਂ ਵੀ ਇਹਨਾਂ ਨੂੰ ਸਮਝ ਨਹੀਂ ਆਈ ਸਖੋਂ ਜਦੋਂ ਅਲਪ ਸੁਖ ਛੱਡ ਕੇ ਨਾ ਸੰਸਾਰੀ ਸੁਖ ਸੰਸਾਰੀ ਸੁਖ ਸਾਰੇ ਅਲਪ ਸੁਖ ਨੇ ਅਲਪ ਸੁਖ ਦਾ ਤਿਆਗ ਕਰ ਦਿੰਦੇ ਨੇ ਜਦੋਂ ਪਰਤ ਯਾ ਜਗਿਆਸੂ ਇਹ ਗੁਰਮਖ ਇਹ ਗੁਰਸਿੱਖ ਅਲਪ ਸੁਖ ਸੰਸਾਰੀ ਸੁਖਾਂ ਦਾ ਤਿਆਗ ਕਰ ਦਿੰਦੇ ਔਰ ਪਰਮ ਸੁਖ ਦਾ ਟਾਰਗੇਟ ਬਣਾ ਲੈਂਦਾ ਪਰਮ ਸੁਖ ਚਾਹੀਦਾ ਮੈਨੂੰ ਪਰਮ ਸੁਖ ਉਹਦਾ ਆਤਮਿਕ ਸੁਖ ਸਦਾ ਸੁਖ ਅਲਪ ਸੁਖ ਛਾੜ ਪਰਮ ਸੁਖ ਪਾਵਾ ਇਹ ਤਰੀਆ ਉਹ ਕੰਤ ਕਹੋ ਫਿਰ ਇਹ ਆਪ ਨੂੰ ਆਪ ਨੂੰ ਤਰੀਆ ਕਹਿੰਦਾ ਆਦਮੀ ਨਹੀਂ ਕਹਿੰਦਾ ਉਦੋਂ ਕਰਨ ਲੱਗਦਾ ਤੇਰੀ ਆਪਣੇ ਫਿਰ ਗੁਰਮਖੀ ਲਫ਼ਜ਼ ਬਣ ਜਾਂਦਾ ਗੁਰਮਖੀ ਰਹਿੰਦਾ। ਔਰ ਜਿਹੜਾ ਸ਼ਬਦ ਹੈ ਉਹ ਗੰਤ ਹੋ ਜਾਂਦਾ। ਇਹ ਕੀ ਹੈ ਸੁਰਤ ਹੈ? ਇਹ ਸੁਰਤ ਹੈ ਉਹ ਸ਼ਬਦ। ਦੋਹਾਂ ਦਾ ਮੇਲ ਹੁੰਦਾ। ਇਸੇ ਕਰਕੇ ਕਬੀਰ ਕਹਿੰਦਾ ਕਹੇ ਕਬੀਰ ਮੋਝ ਬਿਆਹ ਚਲੇ ਹੈ ਪੁਰਖੇ ਇੱਕ ਇਹ ਜਾਲੂ ਜਮੇ ਸਭ ਦੇ ਸਿੱਖਾ ਵਿਦਵਾਨਾਂ ਨੂੰ ਬਿਲਕੁਲ ਨਹੀਂ ਹੈ ਵੀ ਗੱਲ ਕੀ ਹੈ ਤੇ ਆਰਥ ਫਿਰ ਕਿੱਥੋਂ ਆਉਣੇ ਸੀ ਇਹ ਗੱਲ ਦੀ ਉਹ ਸਮਝ ਹੈ ਨਹੀਂ ਇਹ ਤਾਂ ਅਮੇ ਡੋਬੇ ਜਿੱਟਾ ਮਾਰੀ ਜਾਂਦੇ ਨੇ ਡੋਬੇ ਜਿੱਟਾ ਮਾਰੇ ਤੇ ਮੱਛੀਆਂ ਦਾ ਸ਼ਿਕਾਰ ਨਹੀਂ ਹੁੰਦਾ ਹੁੰਦਾ ਜੇ ਤਲਾਸ਼ ਮੱਛੀ ਹੋਣਾ ਇੱਟਾ ਮਾਰ ਕੇ ਮੱਛੀਆਂ ਨੂੰ ਲੈ ਕੇ ਤੁਸੀਂ ਇਹ ਗਰੰਟੀ ਦਿਆ ਬੇਟਾ ਮਾਰ ਕੇ ਤੁਸੀਂ ਮੱਛੀ ਵਾਰ ਲੋਗੇ ਇਹ ਤਾਂ ਇੱਟਾ ਮਾਰ ਕੇ ਬੱਛੀਆਂ ਮਾਰ ਕੇ ਕਨਾ ਤੇਰਕਾਰੀ ਬਣਾਉਣਾ ਚਾਹੁੰਦੇ ਨੇ ਇੱਟਾ ਨਾਲ ਨਹੀਂ ਬੱਛੀਆਂ ਵਰਦੀ ਦਿੰਦੀ ਤੋਬੇ ਜੱਟਾ ਮਾਰੀ ਤੇ ਤੇ ਜੱਪਣ ਇੱਟਾ ਮਾਰ ਰਹੇ ਨੇ ਬੱਛੀਆਂ ਬਾਹਰ ਦਾ ਜਾਲ ਲਸਦੇ ਨੇ ਇੱਟਾ ਨਹੀਂ ਮਾਰਦੇ ਹੁੰਦੇ ਇਹਨਾਂ ਦੀਆਂ ਖੂਬ ਇੱਟਾ ਨੇ ਬਸ ਉਹੀ ਬਸ ਤੁੱਕੇ ਲਾਉਂਦੇ ਨੇ ਤੁੱਕੇ ਅਰਥ ਦੇ ਸਾਹੂ ਜਣੇ ਤੁੱਕੇ ਮਾਰੇ ਹੋਏ ਨੇ ਵਿਦਵਾਨ ਵੀ ਤੁੱਕਿਆਂ ਦਾ ਅਰਥ ਕਰਦੇ ਨੇ ਕਹਿੰਦੇ ਲੱਗਾ تیر ਨਹੀਂ ਕੋਈ ਕੋਈ ਗੱਲ ਆ ਜਾਂਦੀਆਂ ਇਹਨਾਂ ਦੀ ਮੋਟੀ ਫਿੱਟ ਨੇ ਸਭ ਆਪਾਂ ਵਿਰੋਧੀ ਗੱਲਾਂ ਨੇ ਸਾਰੀਆਂ ਜੀ ਦੀਰਘ ਛੰਦ ਹਾਂ ਹੁਣ ਇਹ ਛੰਦ ਦੇ ਵਿੱਚ ਕੀ ਹੈ ਇਹ ਜਿਹੜਾ ਵੀ ਪਿੱਛੇ ਸਾਰਾ ਪ੍ਰਕਰਣ ਆਏ ਨੇ ਜਲਦੀ 73 ਦੇ ਵਿੱਚ ਜਿਹੜੇ ਨਾਮ ਆਏ ਨੇ ਉਸਲ ਦੇ ਵਿੱਚ ਨਾ ਕੀ ਨੇ ਅਕਾਲ ਉਸਤ ਦੇ ਵਿੱਚ ਤਾਂ ਦੇ ਦਿੱਤੇ ਚੱਕੇ ਇਹ ਬਾਣੀ ਪਿੱਤਾ ਪਿੱਛੋਂ ਆਪਾਂ ਦੇਖਿਆ ਸਾਰੇ ਬਰੁਗਿਆ ਨੇ ਜਿਨ੍ਹਾਂ ਨੇ ਇਹ ਮੰਨ ਲਿਆ ਉਹ ਤ੍ਰਿਆ ਚਰਤਰ ਤੋਂ ਭੱਜੇ ਨਹੀਂ ਸਕਦੇ ਤ੍ਰਿਆ ਚਰਤਰ ਵਿੱਚ ਵੀ ਇਹੀ ਨੇ ਗਾਹ ਮੂਰੇ ਪਹਿਲਾ ਜਿਹੜਾ ਪਹਿਲਾ ਚਰਤਰ ਹੈ ਉਹ ਅਰੇ ਜਿਹੜਾ ਸਾਰਿਆਂ ਨੂੰ ਪਿਛਲਾ ਉਹ ਵੀ ਇਹੀ ਹੈ ਵਿਚਾਲੇ ਆ ਵਿਚਾਲੇ ਵੀ ਤਿੰਨ ਚਾਰ ਚਰਤਰ ਹੀ ਨੇ ਆਹ ਤਰੀਕੇ ਨਾਲ ਮੜ ਕੇ ਫਰੋਏ ਨੇ ਤੁਸੀਂ ਫੋਲ ਬਿਚਾਲੇ ਨਹੀਂ ਕਰ ਸਕਦੇ ਕੋਈ ਬਿਚਾਲੇ ਤਾਂ ਮੈਂ ਕਰ ਲਵਾਂ ਫੋਨ ਇਹਨਾਂ ਨੂੰ ਕੀ ਬੋਲੇ ਵਿਧੂਆਂ ਨੂੰ ਵੀ ਗੱਲ ਕੀ ਹੈ ਇਹਦਾ ਸਦਾਈ ਨਹੀਂ ਸਾਰੇ ਹੀ ਜਦ ਇਹਨਾਂ ਨੂੰ ਸਾਰੀ ਗੱਲ ਜਿੰਦੂ ਖੁੱਲਣੀ ਇਹਨਾਂ ਨੇ ਆਵੇ ਚੁੱਪ ਕਰ ਜਾਣਾ ਜਦ ਸਾਰੀ ਖੁੱਲਣੀ ਆ ਨਾ ਕੋਈ ਗੱਲ ਕੀ ਹੈ ਇਹਨਾਂ ਨੇ ਆਵੇ ਚੁੱਪ ਕਰ ਜਾਣਾ ਵੀ ਸਾਨੂੰ ਕੀ ਪਤਾ ਸੀ ਵੀ ਆਹ ਗੱਲ ਸਾਨੂੰ ਕੀ ਪਤਾ ਸੀ ਧਰਮ ਕੀ ਹੁੰਦਾ ਬੜਾ ਹੈ ਗੱਲਾਂ ਨੇ ਇਹ ਜਿੰਨੇ ਵੀ ਨੌ ਆਏ ਨੇ ਤਰੀਆ ਪਹਿਲਾਂ ਦਾ ਚੱਲਦੀ ਚਿਰ ਦਿੱਤਰ ਕੋ ਕੀ ਕਹਾਣੀ ਦਾ ਕਈ ਵਾਰ ਆ ਚੁੱਕੀ ਨਾ ਪਿੱਛੇ ਆਏ ਦੇ ਵਿੱਚ ਵੀ ਆ ਗਿਆ ਧਰਮ ਕੋ ਆ ਗਿਆ ਨਾ ਧਰਮ ਉੱਥੇ ਵੀ ਧਰਮ ਕੇ ਦੀ ਗੱਲ ਹੈ ਕਿਹੜੀ ਗੱਲ ਕਿੱਥੋਂ ਚੱਕ ਕੇ ਕਿੱਥੇ ਫਟਕੀਤੀ ਹੋਈ ਇਹਨਾਂ ਨੂੰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿੱਥੇ ਜਾ ਲੈਂਤ ਜਾ ਕੇ ਕਿੱਥੇ ਨਿਕਲਣ ਨੂੰ ਕੋਈ ਪਤਾ ਨਹੀਂ ਐਵੇਂ ਆਦ ਗੁਰੂ ਰਾਨ ਸਾਹਿਬ ਵਿੱਚ ਲਿੰਕ ਕਰੇ ਜੇ ਮੈਂ ਕਲੰਦਰ ਕੇਸ ਕਰ ਅਬ ਦਾਲੀ ਭੇਸ ਬਬ ਦਾਲੀ ਲਫ਼ਜ਼ ਲੱਗਿਆ ਹੈ ਗੁਰਨਾਰ ਕਰਨੇ ਅੱਬੋਂ ਆਉਣ ਲੱਗੇ ਅਬ ਧਾਲ ਅਬ ਕਿਉਂ ਕਬੈ ਧਾਲ ਅਬ ਨਾਲ ਲੱਗਿਆ ਉਹ ਤੇ ਦਾਲੀ ਜਿਹਦੇ ਧਾਲ ਅਬ ਕਿਉਂ ਕਬੈ ਧਾਲ ਅਬ ਔਰ ਧਾਲ ਦੋ ਇਕੱਠੇ ਨੇ ਲੈ ਚੱਕ ਕੇ ਉੱਥੋਂ ਲੈ ਦੋਇ ਛੋਦੋ ਜੇ ਮਨ ਲੱਭ ਲੈਣਾ ਬੁੱਧੀ ਨੇ ਤਾਂ ਮਾਨੂੰ ਕਹਿ ਰਹੀ ਆਓ ਕਲੰਦਰ ਕੇਸਵਾ ਕਲੰਦਰ ਹੁੰਦਾ ਜਿਹੜਾ ਪੇਸ ਬਦਲੇ ਮਨ ਪੇ ਰੋਦਲਦਾ ਨੂੰ ਸਰੀਰ ਤੇ ਜਦ ਤਨ ਵਿੱਚੋਂ ਮਨ ਖੋਜੇ ਬੁੱਧੀ ਨੇ ਉਹਨੂੰ ਸੰਬੋਧਨਾ ਕਰਕੇ ਕਹਿ ਰਹੀ ਆਓ ਕਲੰਦਰ ਕੇਸਵਾ ਤੂੰ ਤਾਂ ਕੇਸਵਾ ਸੀਗਾ ਕਲੰਦਰ ਕਦੋਂ ਬਣ ਗਿਆ ਕੇਸਵਾ ਤਾਂ ਕਲੰਦਰ ਬਣਿਆ ਹੈ ਤੂੰ ਤਾਂ ਕੇਸੋ ਸੀ ਪਰ ਅੱਧਾ ਇਹਨਾਂ ਆ ਕੇਸਵਾ ਨੂੰ ਟੁੱਟ ਕੇ ਜੋ ਆ ਗਿਆ ਕੇਸਵਾ ਨਾਲ ਤਾਂ ਟੁੱਟ ਕੇ ਆ ਗਿਆ ਨਾ ਤਾਂ ਤੂੰ ਤਾਂ ਕਲੰਦਰ ਕੇਸਵਾ ਸੀ ਤੂੰ ਜੋਤ ਸਰੂਪ ਸੀ ਤੂੰ ਮਾਇਆ ਤਰੀਕੇ ਵਿੱਚ ਹੋ ਗਿਆ ਤੇ ਸਰੀਰ ਕੇ ਆਹ ਤੇ ਕਪੜੇ ਕਹੇ ਜੇ ਪਾ ਲੇ। ਸਰੀਰ ਤੇ ਸ਼ਕਲ ਕਹੇ ਜੀ ਬਣਾ ਲਈ। ਕਰ ਅਬ ਦਾਲੀ ਭੇਸ ਬਾ। ਆ ਦਾਲੀ ਧਾੜਾ ਵਾਲਾ ਭੇਸ ਕਮ ਕਰ ਲਿਆ ਤੇਰਾ। ਓਹੋ ਧਾੜਾ ਵਾਲਾ ਭੇਸ ਕਰਕੇ ਤੈਨੂੰ ਕਪੜੇ ਪਾ ਕੇ ਇੱਕ ਬਣਨਾ ਪਿਆ। ਅੱਧੀ ਮਾਇਆ ਅੱਧਾ ਤੂੰ ਤਾਂ ਐ ਕੋਇਆ। ਗੁਰਦਾਰ ਕਹਿੰਦਾ ਅਬ ਕਿਉਂ 겁ਾ? ਧਾੜ ਅਬ ਧਾੜ ਅਬ ਦਾਲੀ। ਕਿਦਸ ਆਪ ਵਿੱਚ ਸੰਬੰਧ ਸਾਰੇ ਸ਼ਬਦਾਂ ਦਾ ਇਹ ਵੇਸਬੁੱਧ ਦੁੱਧ ਜਿਹਨੇ ਖੋਜ ਕਰਨੀ ਉਹਨੂੰ ਪਤਾ ਹੈ ਕਿ ਕਿੱਥੇ ਕਿੱਥੇ ਕੀ ਕੀ ਕਿਵੇਂ ਹੈ ਐਵੇਂ ਹੀ ਦਸਮ ਦੇ ਵਿੱਚ ਹੈ ਇਹ ਵਿਦਵਾਨਾਂ ਨੂੰ ਕੀ ਪਤਾ ਇਹ ਤਾਂ ਸੁੱਤੇ ਪਏ ਨੇ ਸੁੱਤੇ ਪਏ ਨੇ ਨਾਲੇ ਨਾਲੇ ਖੋਜ ਤੇ ਲੈਣਾ ਕੀ ਸੀ ਇਹ ਨਾਲ ਤਾਂ ਸੌਖੀ ਜੀ ਅੱਧੀ ਵਾਰ ਪੜ ਕੇ ਨਾ ਇਹ ਤਾਂ ਵਾ ਗੱਦਣ ਵੰਗੂ ਨਾ ਵੱਟ ਵੱਟ ਨਰਮੇ ਦੇ ਨਾਮ ਘਰ ਜਾਈ ਭਰਾ ਲਿਆਉਂਦੇ ਨੇ ਵੱਟ ਵੱਟ ਨਾਂ ਦੇ ਨਰਮੇ ਦੇ ਖੇਤ ਦੀ ਕਹਿੰਦੇ ਰਿਾਈ ਭਰਾ ਲਿਆਂਦੀ ਅਸੀਂ ਇਹ ਤਾਂ ਉਹ ਨਬਦਵਾਨ ਵੀ ਅਸੀਂ ਸਭ ਪੜ ਲਿਆ ਜੀ ਪੜਿਆ ਹੋਇਆ ਸਾਡਾ 10 ਗ੍ਰੰਥ ਸਾਨੂੰ ਸਭ ਹੈ ਇਹ ਤਾਂ ਨਰਮੇ ਦੀ ਵੱਟ ਵੱਟ ਤੋਂ ਰਹਿਣ ਇਹ ਜੋ ਕੋਈ ਵੱਟ ਦੇ ਡੇੜੇ ਵੀ ਨਹੀਂ ਗਿਆ ਉਹੀ ਸੁਣੀ ਸੁਣਾਈ ਉੱਥੇ ਜਾਂਦੇ ਨੇ ਇਹ ਰਿਾਈ ਦੇ ਲੈ ਭਰਾ ਹੀ ਫਿਰਦੇ ਨੇ ਚੀਕਾ ਸਾਰੇ ਗਿੱਦਲ ਮਾਰ ਦਿੰਦੇ ਜਿਆ ਪਾਣਾ ਲੱਗਦਾ ਮਾਰਦਾ ਨਾ ਚੀਕਾ ਉਹਨੂੰ ਪੁੱਛੇ ਚੀਕਾ ਤਾਂ ਮਾਰਦੇ ਹੋ ਤੁਸੀਂ ਪਾਣਾ ਲੱਗਦਾ ਨਾ ਪਰ ਜਾਇਗਦਲੇ ਕਾਢੋ ਜਿਹੜੇ ਹੈਗੇ ਹੋਏ ਨਹੀਂ ਗੁਰਵਾਨੀ ਦੇ ਕੋਈ ਸਮਝ ਨਹੀਂ ਹੈ ਜਾਂ ਕੋਈ ਸਵਾਲ ਆ ਜਾਂਦਾ ਕਰ ਦਿੰਦਾ ਫੇਸਬੁਕ ਨਾਲ ਕਹਿੰਦਾ ਵੀ ਇਹਦਾ ਕੋਈ ਜਵਾਬ ਦੋ ਚੀਕਾ ਹੀ ਨੇ ਹੋਰ ਕੀ ਹੈ ਫਰੀਖ ਸਵਾਲ ਦਾ ਜਵਾਬ ਤੁਹਾਡੇ ਕੋਲ ਕਿਉਂ ਨਹੀਂ ਹੈ ਜੇ ਤੁਸੀਂ ਪੜ ਲਿਆ ਸਮਝ ਲਿਆ ਤੁਹਾਡੇ ਕੋਲ ਜਵਾਬ ਕਿਉਂ ਨਹੀਂ ਹੈ ਦੁਆਰ ਦੁਆਰ ਤੇ ਪੁੱਤੋ ਕਹ ਲੈ ਤੁਹਾਡੇ ਕੋ ਪਰਾਇ ਹੋ ਨੇ। ਪਰਬਣੀ ਤੁਸੀਂ ਸਮਝੀ ਬੈਠੇ ਸਾਰੀ। ਇਹ ਬਲੈਕਮੇਲਰ ਨੇ ਸਾਰੇ। ਇਹ ਤਾਂ ਬਲੈਕਮੇਲਰ ਹੀ ਬਲੈਕਮੇਲ ਕਰਦੇ ਨੇ ਲੋਕਰ। ਇਹ ਜਾਣਬੁੱਝ ਕੇ ਕਰ ਰਹੇ ਨੇ ਬਲੈਕਮੇਲ। ਇਹਦੀ ਵੀ ਨਾ ਪਤਾ ਨਹੀਂ ਹੈ ਸਭ ਪਤਾ ਉਹਨੂੰ ਆਪਾਂ ਨੂੰ ਤਾਂ ਜਾਣਦਾ ਹੀ ਐ ਸੋਕਸਪਾਨ। ਆਪਾਂ ਉਹਨੂੰ ਜਾਣਦੇ ਮੈਨੂੰ ਕੱਖ ਵੀ ਪਤਾ। ਬਲੈਕਮੇਲ ਕਰਦੇ। ਬਲੈਕਬੈਲ ਦਾ ਬਰਾਦ ਹੈ ਬਹੁਤ بڑا ਬਲੈਕਬੈਲ ਦੀ ਬਹੁਤ ਤਗੜੀ ਸਜ਼ਾ ਮਿਲਦੀ ਹੁੰਦੀ ਹੈ ਇੱਥੇ ਵੀ ਦਰਗਾਹੀ ਮਿਲੂਗੀ ਪਹਿਲਾਂ ਹੀ ਮਿਲੀ ਹੋਈ ਹੈ ਉਹਨੂੰ ਸਜ਼ਾ 75 ਪਹਿਲਾਂ ਹੀ ਸਜ਼ਾ ਤਾਂ ਪਹਿਲਾਂ ਹੀ ਮਿਲੀ ਹੋਈ ਹੈ ਜੇ ਸੋਚੇ ਤਾਂ ਪਹਿਲੇ ਵੀ ਥੜੀ ਸਜ਼ਾ ਮਿਲੀ ਹੋਈ ਹੈ ਪਰ ਆਦਮੀ ਵਿਚਾਰੇ ਤਾਂ ਹੈ ਨਾ ਸਜ਼ਾ ਗਾਹ ਨੂੰ ਕੀ ਬਣੂਗਾ ਤੇ ਤੈਨੂੰ ਦੱਸਾਂਗੇ ਨਾ ਅਸੀਂ ਕਾਹਨੂੰ ਕਹਿਣਾ ਕੀ ਬਣੂਗਾ ਘਰ ਨੂੰ ਤਾਂ ਉਹੀ ਬਣੂ ਜੋ ਗੁਰੂ ਕਰੂਗਾ ਨਾ ਘਰ ਬਹੁਤ ਕੁਝ ਛੋੜ ਵਾਲਾ ਹੈ ਹੇ ਨੀਰਗਤਰਭੰਗੀ ਛੰਦ ਦੁਰਜਨ ਦਲ ਦਰ ਦੁਰਜਨ ਦਲ ਦੰਡਲ ਜਿਹੜੇ ਦੁਰਜਨ ਹੈ ਨਾ ਇਹ ਸਾਰੇ ਦੁਰਜਨ ਨੇ ਜਿਨ੍ਹਾਂ ਦੀ ਗੱਲ ਕਰਦੇ ਆਪਾਂ ਦੁਰਜਨ ਕੌਣ ਹੁੰਦੇ ਨੇ ਗੁਰਮਤ ਤੋਂ ਵਖਰਾ ਰਾ ਕੱਟ ਕੇ ਦੂਰ ਲਜਾਣ ਵਾਲੇ ਸੱਚ ਤੋਂ ਦੂਰ ਲਿਜਾਣ ਵਾਲੇ ਲੋਕ ਸਾਰੇ ਦਰਜ ਨੇ ਜਿਹੜੇ ਪਬਲਿਕ ਨੂੰ ਸੱਚ ਤੋਂ ਦੂਰ ਲਾ ਕੇ ਜਾਂਦਾ ਨੇ ਦਰਜ ਨੇ ਇਹਨਾਂ ਦੇ ਦਲਾਂ ਨੂੰ ਦੰਡਣਾ ਹਕੂਮਤ ਦੇ ਨਾਲ ਇਹਨਾਂ ਨੂੰ ਢਾਲੂ ਮਿਲਣਾ ਸਜ਼ਾ ਇਹਨਾਂ ਨੂੰ ਮਿਲਣੀ ਹੈ ਇਹ ਹਕੂਮਤ ਹੈ ਭਗਉ ਤਿੱਕੀ ਹੈ ਭਗਉ ਤੀ ਹਕੂਮਤ ਉਹ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹ ਵੀ ਬਗੋਤੀ ਹੋਇਆ ਉਹ ਹੁਕਮ ਦੀ ਉਹ ਗੱਲ ਕਰਦਾ ਆਪਣੀ ਦਾ ਕਰਦਾ ਹੀ ਨਹੀਂ ਉਹ ਗੱਲ ਹੁਕਮ ਨਾਲੋਂ ਬਗੋਤੀ ਆ ਜਿਹੜਾ ਹੁਕਮ ਦੇ ਵਿੱਚ ਸੁਖਾਇਆ ਸਮਾਇਆ ਹੋਇਆ ਨਾ ਸ਼ਬਦ ਵਿੱਚ ਸਮਾਇਆ ਹੋਇਆ ਉਹ ਵੀ ਬਗੋਤੀ ਆ بس ਇੰਨਾ ਹੀ ਫਰਕ ਆ ਬਗੋਤੀ ਜੋ ਸੋ ਜੋ ਬਗੋਤੇ ਜਾਣੇ ਜਿਹਨੇ ਹੁਕਮ ਨੂੰ ਜਾਣ ਲਿਆ ਉਹ ਪੁੱਝ ਲਿਆ ਉਹ ਬਗੋਤੀ ਆ ਇਹ ਉਹਦਾ ਹੁਕਮ ਬਗੋਤੀ ਆ ਗੁਰ ਸ਼ਬਦ ਸਮਾਵ ਹੈ ਅਵਲ ਨੇ ਜਾਣਾ ਕੋਈ ਜਿਉ ਜਿਹੜਾ ਗੁਰ ਸ਼ਬਦ ਵਿੱਚ ਸਮਾਇਆ ਹੋਇਆ ਹੈ ਉਹ ਭਗਉਤੀ ਹੈ ਜਿਉਂ ਦਾਇ ਸ਼ਬਦ ਵਿੱਚ ਜਿਹੜਾ ਜਿਉਂਦਾ ਹੀ ਸ਼ਬਦ ਵਿੱਚ ਸਮਾਇਆ ਹੋਇਆ ਹੈ ਨਾ ਸੁਰਤ ਸ਼ਬਦ ਵਿੱਚ ਸਮਾਈ ਰਹਿੰਦੀ ਹੈ ਜਿਹਦੀ ਉਹ ਜਿਉਂਦਾ ਹੀ ਭਗਉਤੀ ਹੈ ਸਰੀਰ ਤੇ ਨਹੀਂ ਸਮਾਇਆ ਹੁੰਦਾ ਉਹ ਭਨ ਭਾਇਆ ਦੇ ਵਿੱਚੋਂ ਨਿਕਲ ਕੇ ਸ਼ਬਦ ਦੇ ਵਿੱਚ ਸਮਾ ਜਾਂਦਾ ਉਹਨੂੰ ਭਗਉਤੀ ਕਹਿੰਦੇ ਨੇ ਉਹ ਇਹਨਾਂ ਨੇ ਤਾਂ ਗੱਲ ਮੰਨਣੀ ਨਹੀਂ ਵੀ ਹੋਈ ਨਹੀਂ ਸਕਦਾ ਤੇ ਸਰੀਰ ਨਹੀਂ ਜਿਉਂਦਾ ਰਹਿ ਸਕਦਾ ਜੇ ਇਹ ਨਹੀਂ ਮੰਨਣੀ ਫਿਰ ਇਹ ਸਿੱਖੀ ਨੂੰ ਛੱਡ ਸਤੀਵਾ ਦੇ ਦੇਣ ਛੱਡ ਦੇਣ ਸਿੱਖੀ ਇਹਨਾਂ ਦੀ ਸਮਝ ਨਹੀਂ ਆਉਣੀ ਜੇ ਇਹ ਗੱਲੇ ਮੰਨ ਨਹੀਂ ਸਕਦੇ ਨਾ ਇਹਨਾਂ ਦੀ ਸਮਝ ਤੋਂ ਪਰੇ ਆ ਫਿਰ ਇਹ ਸਿੱਖੀ ਨਹੀਂ ਇਹਨਾਂ ਦੀ ਸਮਝ ਆਉਣੀ ਇਹ ਸਬਜੈਕਟ ਛੱਡ ਦੇਣ ਸਾਰੇ ਸਬਜੈਕਟ ਸਾਰੇ ਨਹੀਂ ਪੜਦੇ ਹੁੰਦੇ ਲੋਕ ਮੈਥ ਔਰ ਸਾਇੰਸ ਕਿਉਂ ਨਹੀਂ ਲੈਂਦੇ ਕਹਿੰਦੇ ਵੀ ਮੇਰੇ ਬਾਪ ਦੀ ਗੱਲ ਹੀ ਪੜਨੀ ਇਹ ਸਬਜੈਕਟ ਛੱਡ ਦੇਣ ਹੋਰ ਲੈਣਾਂ ਕੋਈ ਪੂਰਤੀ ਪੂਜਾ ਲੈ ਲੈਣਾਂ ਕੋਈ ਹੋਰ ਲੈ ਲੈਣਾਂ ਹੋਰ ਬਥੇਰੇ ਧਰਬ ਨੇ ਹੋਰ ਧਰ ਬਹੁਤ ਨੇ ਸਬਜੈਕਟ ਉਹਨਾਂ ਦੇ ਹੋਰ ਨੇ ਸਾਡਾ ਸਬਜੈਕਟ ਬਹੁਤ ਔਖਾ ਹੈ ਜਿਹੜਾ ਘੜੀ ਸਬਜੈਕਟਾ ਗੁਰਮਤ ਦਾ ਜਿਹਨੂੰ ਇਹ ਔਖਾ ਲੱਗਦਾ ਛੱਡ ਕੇ ਕੋਈ ਹੋਰ ਸੌਖਾ ਸਬਜੈਕਟ ਲੈ ਲਵੇ ਤੁਸੀਂ ਜ ਸਕੂਲ ਕਾਲਜ ਬਹੁਤ ਨੇ ਧਰ ਬਥੇਰੇ ਨੇ ਠੇਕਾ ਨਹੀਂ ਲਿਆ ਹੈ ਤੁਸੀਂ ਸਿੱਖੇ ਰਹਿਣ ਸਿੱਖ ਰਹਿਣੇ ਤਾਂ ਲੈ ਨਹੀਂ ਹੋਊਗੀ ਇਹ ਨਹੀਂ ਸਮਝਉਂਦਾ ਕੋਈ ਸੌਖਾ ਧਰ ਬਪੜਾ ਲੋ ਕੋਈ ਜ਼ਰੂਰੀ ਹੈ ਤੁਸੀ ਖਵਾਣਾ ਡਾਕਟਰ ਨੇ ਦੱਸਿਆ ਤੇ ਨਹੀਂ ਚੁੱਪ ਕਰਕੇ ਬਹਿ ਜਾ ਹਥਿਆਰ ਛੱਡ ਕੇ ਬਹਿ ਜਾ ਵੇ ਪਾਈ ਸਾਡੇ ਨਹੀਂ ਸਮਝ ਆਉਂਦਾ ਉਹ ਜਿਹੜੇ ਉਹ ਹੈ ਜਾਂ ਉਹਨਾਂ ਦੇ ਪਿੱਛੇ ਬਹਿ ਜਾਂਦੇ ਹੁੰਦੇ ਬੁੱਢੇ ਜਿਹਨਾਂ ਨੂੰ ਸਮਝ ਨਹੀਂ ਆਉਂਦੀ ਕਲਾਸ 'ਚ ਵੀ ਪਿੱਛੇ ਬਿਠਾ ਲ ਨੇ ਉਹਨਾਂ ਨੂੰ ਨਾ ਉਹਨਾਂ ਦਾ ਸਵਾਲ ਪੁੱਛਣਾ ਨਾ ਉਹਨਾਂ ਦੀ ਸਮਝ ਆਉਣਾ ਉਹ ਆਪਣੇ ਰੋਟੀ ਖਾਂਦੇ ਨੇ ਕਾਲਜ ਆਉਂਦੇ ਨੇ ਚਲੇ ਜਾਂਦੇ ਨੇ ਫੇਲੇ ਰਹਿੰਦੇ ਨੇ ਪਾਸ ਤੋਂ ਨੂੰ ਨਹੀਂ ਹੁੜੇ ਨਹੀਂ ਹੁੰਦਾ ਘਰ ਦੇ ਜ਼ਬਰਦਸਤੀ ਭੇਜੀ ਜਾਂਦੇ ਨੇ ਇਹ ਲੀਡਰ ਬਣਦੇ ਕਾਬਲ ਨਹੀਂ ਨੇ ਸਿੱਖਦੇ ਲੀਡਰ ਉਹ ਬਣਨਗੇ ਜਿਹੜੇ ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨੇ ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨਾ ਕੋਈ ਲੀਡਰ ਨਹੀਂ ਹੁੰਦਾ ਇੱਥੇ ਉਹ ਵੀ ਦਾਸ ਹੈ ਹੁੰਦੇ ਨੇ ਲੀਡਰ ਨਹੀਂ ਇੱਥੇ ਮਿਲਦੀ ਹੈਗੀ ਕਿਸੇ ਨੂੰ ਲੀਡਰ ਤਾਂ ਬਾੜੇ ਪਾਜਣ ਦੀ ਜੁੱਤੀਆਂ ਜਾਣਦੀਆਂ ਹੀ ਨੇ ਲੈਣੀਆਂ ਲੈ ਲਵੇ ਲੇ ਗਏ ਨਾ ਲੀਡਰ ਲੈਣੀਆਂ ਜੁੱਤੀਆਂ ਜਿਹੜਾ ਦੇਰ ਬਾੜੇ ਪਾਜਣ ਦੀਆਂ ਲੈ ਲਵੇ ਕੋੜਿਆਂ ਦੀ ਲੱਤ ਚੱਕਣ ਦੀ ਉਹ ਲੈ ਲਵੇ ਆਹ ਲੀਡਰ ਇਹ ਤਾਂ ਕਿਹਨਾਂ ਲੈਣੀਆਂ ਆ ਜਵੇ ਲੈ ਲਵੇ ਦੋ ਹੀ ਲੀਡਰਿਸ ਹੱਕ ਤਾਂ ਆ ਉਹ ਨਹੀਂ ਹੋਰ ਲੀਡਰ ਹੀ ਕਹਾਂ ਨੂੰ ਕਹਾਂ ਨੂੰ ਖਤਮ ਆ ਹੋ ਕੈਲਲੀ ਤੁਹਾਡੀ 1300 ਸਾਲ ਤੋਂ ਦੇ ਦਿੱਤੇ ਲੋਕਾਂ ਦੇ ਭਰਮ ਚਲੇ ਟੁੱਟ ਗਏ ਨਾ ਦੇਖ ਲੈ ਸਾਰੇ ਸਵਾਦ ਦੇਖ ਲੈ ਸੰਤ ਵੀ ਦੇਖ ਲੈ ਲੀਡਰ ਵੀ ਦੇਖ ਲੈ ਕੀਰਤਨੀਏ ਵੀ ਦੇਖ ਲੈ ਨਾ ਤੇ ਕਥਾਵਾਚਕ ਵੀ ਦੇਖ ਲੈ ਜਿਹੜਾ ਰਹਿੰਦਾ ਹੋਰ ਆ ਜਾਵੇ ਬਾਹਰ ਜਿਹੜਾ ਰਹਿ ਗਿਆ ਉਹ ਅਸੀਂ ਤਾਂ ਸਾਰਾ ਟਾਈਮ ਦੇ ਦਿੱਤਾ 300 ਸਾਲ ਨਹੀਂ ਬੋਲੇ ਤੇ ਸਾਰਾ ਟਾਈਮ ਦੇ ਦਿਓ ਭਾਈ ਜਿਹੜਾ ਆਦਮੀ ਹੁੰਦਾ ਲੀਡਰ ਪਿੱਛੋਂ ਬੋਲਦਾ ਹੁੰਦਾ ਲੀਡਰ ਦਾ ਮਤਲਬ ਇਹ ਨਹੀਂ ਹੈਗਾ ਕੋਗੋਤ ਕਰਨ ਵਾਲਾ ਸਾਡੇ ਕੋਲ ਲੀਡਰ ਦਾ ਮਤਲਬ ਇਹ ਰਾਹ ਦੱਸਣ ਵਾਲਾ ਸੇਵਕ ਸਾਧੂ 라ਗੂ ਜਾਣੀ ਹੈ ਆਂਗੂ ਆਂਗੂ ਹੈ ਜਿਹੜਾ ਉਹ ਪਿੱਛੋਂ ਬੋਲਦਾ ਹੁੰਦਾ ਅ ਰਾਗੂ ਜਿਹੜਾ ਕਰਦਾ ਹੁੰਦਾ ਉਹ ਵੇ ਦੇ ਕੱਪੜੇ ਹੋਈ ਧੋਦਾ ਨਿਆਣੇ ਦੇ ਜੇ ਲੜ ਪੈਣ ਵੀ ਅਸੀਂ ਆ ਕੰਮ ਨਹੀਂ ਕਰਨਾ ਕਹਿੰਦਾ ਮੈਂ ਕਰ ਲੈਣਾ ਤੁਸੀਂ ਪਹਿਲ ਲੜੋ ਜਿਹੜਾ ਕੰਮ ਕੋਈ ਨਹੀਂ ਨਾ ਕਰਦਾ ਘਟੀਆਂ ਤੋਂ ਘਟੀਆਂ ਫਿਰ ਉਹ ਕਰਦਾ ਜੇ ਖਾਣ ਨੂੰ ਕਿਸੇ ਨੂੰ ਨਾ ਬਚੇ ਉਹ ਕਹਿੰਦਾ ਮੈਨੂੰ ਨਾ ਦੋ ਤੋ ਇਹਦੋਂ ਤੁਸੀਂ ਪੀ ਲੋ ਪਰ ਲੜੋ ਨਾ ਇਹ ਆਗੂ ਬਣਾਉਂਦਾ ਹੋਰ ਆਗੂ ਬਣੇ ਤਾਂ ਕੀ ਹੁੰਦਾ ਇਹੀ ਆਗੂ ਬਣਾ ਅਸਲੀ ਹੈ ਜਿਹੜਾ ਸੇਵਾ ਥੋੜੀ ਮੰਗਣ ਬਹੁਤ ਹੈ ਨਾ ਸੇਵਾ ਥੋੜੀ ਮੰਗਣ ਬਹੁਤ ਹੈ ਉਹ ਤਾਂ ਕੱਢਣ ਕੀਤਾ ਹੋਇਆ ਗੁਰਬਾਣੀ ਚ ਇੱਥੇ ਸੇਵਾ ਥੋੜੀ ਮੰਗਣ ਬਹੁਤਾ ਇਹ ਮਨਮੁਖ ਹੈ ਸੇਵਾ ਥੋੜੀ ਮੰਗਣ ਬਹੁਤਾ ਇੱਥੇ ਸੇਵਾ ਹੀ ਸੇਵਾ ਮੰਗਣ ਹੈ ਗੁਰਮੁਖ ਦਾ ਸੇਵਾ ਦਾ ਸੇਵਾ ਹੀ ਸਾਰਾ ਦਿਨ ਸੇਵਾ ਹੀ ਸੇਵਾ ਮੰਗਣਾ ਕੁਸ਼ਭਰੀ ਜਿਆਦਾ ਮੰਗਦਾ ਹੀ ਨਹੀਂ ਫੇਰ ਉਹ ਕਹਿੰਦਾ ਸਮਝ ਗ ਤੇਰਾ ਹੋਏ ਜਿਆਦਾ ਮੰਗਦਾ ਨਹੀਂ ਇਹ ਜਿਹੜਾ ਮਰਜੀ ਚੱਕ ਲਵੇ ਜੋ ਮਰਜੀ ਖਾਲਵੇ ਜੋ ਮਰਜੀ ਪੀ ਲਵੇ ਭਾਈ ਇਹਦੇ ਦਾ ਕੋਈ ਪੰਦਰੀ ਨੂੰ ਪੁੱਛਣ ਦੀ ਲੋੜ ਨਹੀਂ ਇਹਦਾ ਖਾਦਾ ਹੀ ਨਹੀਂ ਜੇ ਕੋ ਨੌਕਰ ਹੈ ਜਾ ਉਹ ਵੇ ਆਪਣਾ ਖਾਵੇ ਹੀ ਨਾ ਆਪਣਾ ਇੰਸਾ ਦੇ ਦੀ ਉਹ ਵੀ ਰੱਖ ਕੇ ਭੁੱਲ ਜਵੇ ਉਹ ਨੂੰ ਵੀ ਦੇਈਏ ਬਦੂਆ ਭਾਈ ਦੁੱਧ ਪੀ ਲਈ ਭੁੱਲ ਜਵੇ ਕੰਮ ਕਰਦਾ ਅਪਕੀ ਕਹਾਂ ਤੇ ਵੱਧ ਬੀਜ ਵਿੱਚ ਮੈ ਕਿਸੇ ਦਿਨ ਇਹ ਢੋਲੀ ਹੋਤੇ ਕਦੇ ਆਪਾਂ ਨਹੀਂ ਕਰਦੇ ਕੋਈ ਵੀ ਨਹੀਂ ਕਹਿ ਸਕਦਾ ਇਹ ਜੈ ਸਭ ਆਇਆ ਪਰਮੇਸ਼ਰ ਦਾ ਅਸੁਰ ਬਿਹੰਡਨ ਦੁਸ਼ਟ ਨਕੰਦਨ ਆਦ ਅਸੁਰ ਬਿਹੰਡਨ ਅਸੁਰ ਜਿਹੜੇ ਨੇ ਅਸੁਰ ਕੀ ਹੁੰਦਾ ਵਿਰੋਧੀ ਸੁਣ ਨੂੰ ਅਸੁਰ ਕਹਿੰਦੇ ਗੱਲ ਹੁਣ ਸਮਝਣੀ ਹੈ ਲਫ਼ਜ਼ ਦਾ ਇਕੱਲੇ ਇਕੱਲੇ ਦਾ ਮਤਲਬ ਦੋ ਸੁਰਾਂ ਨੇ ਸਾਡੇ ਅੰਦਰ ਬੋਲਦੀਆਂ ਬਾਜੇ ਦੀਆਂ ਇੱਕ ਤਾਂ ਮੰਦਾ ਬੋਲਦਾ ਹੁਕਮ ਕੀ ਹੈ ਵਨ ਭਾਵਦੇ ਇਹ ਅਸੁਰ ਹੈ ਜਿਹੜਾ ਹੁਕਮ ਹੈ ਨਾ ਗੁਰਗਾ ਪਾਣਾ ਉਹ ਤਾਂ ਵਿਰੋਧੀ ਜਿਹੜੀ ਸੁਰਾ ਨਿਕਲਦੀ ਉਹ ਅਸੁਰ ਕਹਿੰਦੇ ਸੁਰ ਬਾਜੇ ਦੀ ਨਹੀਂ ਨਿਕਲਦੀ ਇਹਦੇ ਅੰਦਰੋਂ ਦੋ ਸੁਰਾਂ ਨਿਕਲਦੀਆਂ ਨੇ ਸਾਡੇ ਅੰਦਰੋਂ ਤੁਸੀਂ ਚਿੱਤੀ ਜਨਾਹ ਜਨਾਹ ਦੋ ਸੁਰਾਂ ਨਿਕਲਦੀਆਂ ਨੇ ਜਿਹੜੀਆਂ ਮੰਨਦੀਆਂ ਇੱਛਾਵਾਂ ਨੇ ਪਰ ਮੈਂ ਛੱਡੀ ਰਹਾ ਤਾ ਖਲਾਫ ਨੇ ਉਹ ਬਹੁਤ ਸਾਰੀਆਂ ਕਿਹੜੀ ਸੁਰੇ ਦੀ ਖਲਾਫ ਰਹਿਣੀ ਹੈ ਕਿਹੜੀ ਅੱਗੇ ਜੜੀ ਸਾਨੂੰ ਕੋਈ ਪਤਾ ਨਹੀਂ ਇਸ ਕਰਕੇ ਸੁਰ ਮੰਨਦੇ ਵਿੱਚੋਂ ਜੋ ਨਿਕਲਦਾ ਨਾ ਇੱਛਾ ਇਹ ਅਸੁਰ ਹੈ ਜੋ ਗੁਰਕਾ ਪੜਨਾ ਉਹ ਸੁਰ ਹੈ ਗੁਰਕੇ ਪੜਨੇ ਤੇ ਰਹਿਣਾ ਤਾਂ ਇੱਕ ਸੁਰ ਰਹਿਣਾ ਫਿਰ ਤਾਂ ਸੁਰ ਹੈ ਜੇ ਤਾਂ ਗੁਰਕੇ ਪੜਨੇ ਚ ਰਹੇ ਫਿਰ ਤਾਂ ਸੁਰ ਹੈ ਫਿਰ ਤਾਂ ਦੇਵਤਾ ਜੇ ਆਪਣਾ ਪਾਣਾ ਨਾਲ ਹੋਏ ਨਾ ਪੇਰੀ ਛਡੋ ਰੱਡ ਜਿਬੜੀ ਤੂਤੀ ਨਾਲ ਵਜਾਈ ਜਾਵੇ ਪੇਰੀ ਛਡੋ ਰੱਡ ਉਹ ਕੁਛ ਵਜਾਉਂਦਾ ਕੁਛ ਵਜਾਉਂਦਾ ਫੇਰ ਅਸੁਰ ਹੈ ਦੀ ਦੀ ਆਵਾਜ਼ ਅਸੁਰ ਹੈ ਉਹ ਬਿਹੰਡਨ ਅਸੁਰ ਬਿਹੰਡਨ ਬਿਹੰਡਨ ਕੀ ਹੈ ਉਹਦਾ ਬੰਦ ਕਰ ਦੇਣਾ ਉਈ ਸੁਰੂ ਬੰਦ ਕਰ ਦੇਣ। ਬੋਲਤੀ ਬੰਦ ਕਰਨਾ ਇਹਦੀ। ਬਾਣਾ ਜੇ ਬਣੀਏ ਬੋਲਤੀ ਬੰਦ ਹੋ ਜਾਂਦੀ ਹੈ। ਹੁਕਮ ਬੋਲਤੀ ਬੰਦ ਕਰ ਦੇਣ ਵਾਲੀ ਚੀਜ਼ ਹੈ। ਜੇ ਹੁਕਮ ਦੀ ਸਮਝ ਆ ਜਾ ਬੋਲਤੀ ਆਪੇ ਹੀ ਬੰਦ ਹੋ ਜਾਂਦੀ ਹੈ। ਜਿਹਨੂੰ ਹੁਕਮ ਦੀ ਸਮਝ ਆ ਗਈ ਬੋਲਤੀ ਆਪੇ ਹੀ ਬੰਦ ਹੋ ਜਾਂਦੀ ਹੈ ਉਹ ਤੂੰ ਤੇਰੇ ਜਬਰਥਾ ਹੈ ਤੇਰਾ ਗਿਆਨ ਮੰਨੂ ਲੋਕ ਦਿੰਦਾ ਮੰਨੂ ਮੰਨ ਦਿੰਦਾ ਠਾਕੁਰ ਤਾਹੀ ਕੇ ਹੈ ਨਾ ਨੂੰ ਠਾਕੁਰ ਬਨੂਆ ਰੱਖੋ ਠਾਏ ਇਹ ਨੂੰ ਰੋਕ ਕੇ ਰੱਖ ਬਨੂ ਤੋ ਰੋਕ ਦੇ ਪੱਥਰ ਦਾ ਬਨ ਲਾ ਦੇ ਜਿਹੜੀ ਜਾਂਦੀ ਆ ਨਾ ਵਹਿੰਦੀ ਜਾਂਦੀ ਹੈ ਕੀ ਕਲਪਨਾ ਦੀ ਰਦੀ ਇਹ ਰੋਕਣ ਦੀ ਸਮਰੱਥਾ ਰੱਖਦਾ ਤੂੰ ਆਸਰੀ ਨਦੀ ਕਹਿੰਦੇ ਇਹਨੂੰ ਆਸਰੀ ਨਦੀ ਜਿਹੜੀਆਂ ਸਾਡੀਆਂ ਇੱਛਾਵਾਂ ਦੀ ਨਦੀ ਹੈ ਨਾ ਕਲਪਨਾ ਦੀ ਨਦੀ ਇਹਨੂੰ ਕਾਲੀ ਧਾਰ ਕਹਿੰਦਾ ਅਕਬੀਰ ਬੁੱਢੇ ਕਾਲੀ ਧਾਰ ਇਹ ਕਾਲੀ ਧਾਰ ਹੈ ਪਤਾ ਨਹੀਂ ਕੀ ਹੋਣਾ ਕਰੇ ਹੋਣਾ ਪਰ ਸੋਚੀ ਜਾਂਦੇ ਸਿਰੇ ਚੜਨਾ ਕੀ ਨਹੀਂ ਚੜਨਾ ਹੋ ਦੇ ਵਿੱਚ ਸੋਚਣਾ ਕਾਲੀ ਧਾਰ ਬੁੱਢੇ ਕਾਲੀ ਧਾਰ ਹੁਣ ਕੌਣ ਸਮਝੇ ਇਹਨਾਂ ਦੇ ਲਫ਼ਜ਼ੀ ਮਤਲਬ ਕੌਣ ਸਮਝੇ ਇਹ ਲਫ਼ਜ਼ੀ ਮਤਲਬ ਸੁਝਾਉਂਦੇ ਫਿਰ ਦਵਾਨ ਕੀ ਗੱਲ ਐ ਇਹ ਫਿਰ ਜਾਨੂੰ ਕੋਈ ਰਾਏ ਦਿੰਦੇ ਫਿਰ ਅਸੀਂ ਇਹਨਾਂ ਦੀ ਸੁਣਦੇ ਹਰ ਮੰਨਦੇ ਕੋਣ ਪੱਲੇ ਕੀ ਕੁਛ ਨਹੀਂ ਤੁਹਾਡੇ ਜਿਹੜੇ ਕਹਿਣ ਆ ਉਹਦਾ ਅਸੀਂ ਸਬੂਤ ਨਾਲ ਦੀ ਰਲ ਦੇਈ ਜਦਿਆਂ ਵੀ ਤੁਹਾਡੇ ਪੱਲੇ ਦਿਖਾਓ ਹੈ ਕੀ ਕੋਈ ਜਿੱਦ ਨਾਲ ਨਹੀਂ ਕਹਿ ਰਹੇ ਕੋਈ ਤੋਬਤ ਨਹੀਂ ਲਾ ਰਹੇ ਪ੍ਰਗਟ ਕਰਨਾ ਪਬਲਿਕ ਨੂੰ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੈ ਜੋ ਅਸੀਂ ਕਿਹਾ ਸੱਚ ਕਿਹਾ ਕੋਈ ਗਲ ਲਾ ਕੇ ਨਹੀਂ ਕਹੀ ਕੋਈ ਗੁੱਸੇ ਨਾਲ ਨਹੀਂ ਕਹੀ ਸੱਚ ਕਹਿਣਾ ਤਾਂ ਠੀਕ ਹੈ ਬਦਵਾਨਾਂ ਦੇ ਵੱਲੇ ਕੱਖ ਨਾਲ ਜਦੀ ਥਾ ਨਾ ਹੈ ਡਰੂਗਾ। ਦੱਲੇ ਕਾਲਾਂ ਵਿੱਚ ਵਿਦਵਾਨ ਖਾਲੀ ਦੇ ਖਾਲੀ ਰਹਿਣਗੇ। ਇਹਨਾਂ ਨੂੰ ਕਿਹਾ ਸੀ ਜਿਹੜਾ ਥੁੜਾ ਸ਼ਕਟ ਪਰ ਕਾਇ ਕਬੀਰ ਛੂਛਾ ਘਟ ਬੋਲ ਜਿਹੜਾ ਬੋਲਦਾ ਹੁੰਦਾ ਨਾ ਜਿਵੇਂ ਬੋਲਦਣ ਬੈੜ ਬੈੜ ਛੂਛੇ ਨਾ ਤਰੋ ਖਾਲੀ ਇਹ ਗੁਰਬਾਣੀਆਂ ਕਹਿ ਦੀਏ। ਕਈ ਕਬੀਰ ਝੁਕਚਾ ਘਟ ਬੋਲਾ ਭਰਿਆ ਹੋਏ ਨਾ ਕਬੂਰ ਡੋਲ ਜਿਹੜੇ ਭਰਿਆ ਤੇ ਡੋਲੇ ਹੀ ਨਹੀਂ ਬੋਲਦੇ ਰਹਿਣ ਦੇ ਜਦੋਂ ਅਸੀਂ ਟੱਕੜ ਚੱਕਣਾ ਨਾ ਭਰਿਆ ਹੋਏ ਦਾ ਦੇਖਣਾ ਲੋਕਾਂ ਨੇ ਆਪੇ हट ਜਾਣੇ ਉਹ ਭਰਿਆ ਹੋਏ ਦਾ ਟੱਕਣਾ ਵੱਧ ਸੀ ਜਿਹਨਾਂ ਜਰ ਬੋਲਦਾ ਨਹੀਂ ਪਰਿਆ ਆ ਘਰ ਨੂੰ ਡੋਲੂਗਾ ਪਰ ਇਹ ਕੋਈ ਖਤਰਾ ਨਹੀਂ ਬੇ ਸਾਰੀ ਤੋਂ ਨਹੀਂ ਰੁਕਣ ਲਾ ਲੂਗਾ ਫਾਨੂ ਕਦੇ ਨਹੀਂ ਘੜਨਾਰੇ ਐ ਨੂੰ ਕੈਸਾ ਲੋਗੇ ਬੋਲਦੇ ਨੂੰ ਵੀ ਮਗਰ ਲਾ ਲੂਗਾ ਕੈਸਾ ਲੋਗੇ ਜਦ ਦਾ ਕੜਾ ਹੋਆ ਨਾ ਰੋੜਾ ਬਦੂ ਨਾ ਸੀ ਕਾ ਬੈਠੇ ਰਹੇ ਨੇ ਆਪੇ ਨੂੰ ਉਹ ਇਹ ਕੜਦੀ ਦੀ ਗੱਠੀ ਬਾਰ ਬਾਰ ਦਿਖਾਈ ਜਾਂਦੇ ਨੇ ਦੋ ਦਿਨ ਲੈਣਾ ਨੇ ਜਿਹੜੀਆਂ ਉਹਦੇ ਸਵਾ ਕੀ ਦੱਸਿਆ ਇਹਨਾਂ ਨੇ ਉਹ ਦੋ ਤਿੰਨ ਲੈਣਾ ਤੇ ਸਵਾ ਦੱਸਿਆ ਕੀ ਹੈ ਆਹ ਦਸਮ ਇਹਦੇ ਵਿੱਚ ਆ ਜਾਊਗਾ ਹੁਣ ਆਕਾਲ ਉਸ ਦੇ ਵਿੱਚ ਦੇਖੋ ਕਹਾ ਕੀ ਹੈ ਉਸਦਾ ਇਹਨੂੰ ਕਿੱਥੇ ਕੱਢਣ ਗਏ ਇਸ ਤਰੀਕੇ ਨਾਲ ਜਗਾ ਜਗਾ ਟਿਕਾ ਕੇ ਰੱਖਿਆ ਹੋਇਆ ਕੁਝ ਇਹਨਾਂ ਨੂੰ ਪਤਾ ਹੀ ਨਹੀਂ ਕਹਾ ਹੈ ਅਸਲ ਤੇ ਇਹਨਾਂ ਨੇ ਪੜਿਆ ਹੀ ਹੈ ਨਹੀਂ ਪੜਿਆ ਨਹੀਂ ਇਹਨਾਂ ਨੇ ਦਾ ਸੁਖਨ ਤੇ ਪੜ ਲੈਂਦੇ ਸਮਝ ਲੈਂਦੇ ਇਹ ਬੋਲਦੇ ਨੇ ਇਹ ਤਾਂ ਬਰੋਧ ਵਾਸਤੇ ਇਹ ਤਾਂ ਹੋਰ ਹੀ ਗੱਲ ਹੈ ਬੋਲਣ ਦੇ ਪਿੱਛੋ तार तार ਤਾਰ ਕਰ ਲੈ ਚਾਹੁੰਦੇ ਨੇ ਤਾਂ ਪੰਥਰੂ ना ਅ हिसाब ਨਾਲ ਜਿਵੇਂ ਹੈ ਨਾ ਬੈਸਟ ਸਿਸਟਮ ਤਾਨੂੰ ਸਾਡੀ ਇੱਥੇ ਲਾਗੂ ਕਰਨਾ ਚਾਹੁੰਦੇ ਨੇ ਅੰਗਰੇਜ਼ਾਂ ਨੇ ਤੇ ਲੈਨੇ ਪੈਂਟਾ ਬਾਈ ਫਿਰਦੇ ਨੇ ਅਸੀਂ ਅੰਗਰੇਜ਼ਾਂ ਨੂੰ ਚੋਲੇ ਪਾਤੇ ਇਹ ਅੰਗਰੇਜ਼ਾਂ ਦੇ ਕੇਲੇ ਪੈਂਟਾ ਬਾਈ ਫਿਰਦੇ ਨੇ ਉਹ ਅਦੀ ਉਹਨਾਂ ਦੇ ਚੋਲੇ ਬਾਤ ਤੇ ਕੁਰਬਾਨਾ ਪਉਤੀ ਅਰਪਵਾ ਦੇੜੀਆਂ ਨੇ ਹੋਰ ਵੀ ਤੁਸੀਂ ਬਾਗ ਦੇਖੋ ਤੁਸੀਂ ਆਪਣੇ ਇਲਾਕੇ ਦੇਖੋ ਪਹਿਲਾਂ ਅਸੀਂ ਲਾ ਕੇ ਛੱਡੀਆਂ ਹੋਈਆਂ ਨੇ ਐ ਨਹੀਂ ਵੀ ਅਸੀਂ ਜੱਬਦਾਂ ਨੇ ਪਾਈ ਹੋਈ ਨਹੀਂ ਕਦੇ ਅਸੀਂ ਵਿਲਾਹ ਕੇ ਜਦ ਲਾਹੀ ਵੀ ਹੈ ਨਾ ਪਤਾ ਲੱਗਦਾ ਉਸਨ ਕਾ ਕੇ ਚੋਲਾ ਪਾਣਾ ਹੁੰਦਾ ਪਤਾ ਲੱਗਦਾ ਦੂਆ ਜਰ ਬੋਲਦਾ ਅਜੇ ਤੁਸੀਂ ਪਾਓਗੇ ਨਾ ਲਾ ਕੇ ਦੇਖ ਲਓ ਕਿੰਨਾ ਜ਼ੋਰ ਪਊਗਾ ਬੰਦੇ ਉੱਤੇ ਇਹ ਕਰਕੇ ਦੇਖ ਲੋ ਕਿਤੇ ਮਜ਼ਾਕ ਹੈ ਇਹ ਹਾਂਜੀ ਦੁਸ਼ਟਨ ਨਿਕੰਦਣ ਆਦਬਰਤੇ ਦੁਸ਼ਟਨ ਨਿਕੰਦਣ ਕੰਧ ਹੁੰਦਾ ਝਾੜੂ ਕਹਿੰਦੇ ਨਿਕੰਦਣ ਕੰਧ ਹੁੰਦੀ ਹੈ ਜੜ ਦੁਸ਼ਟਾਂ ਦੀ ਜੜ ਪੱਟਣ ਵਾਲੀ ਹੈ ਆਦਬਰਤੇ ਆਦਬਰਤੇ ਆਜ ਵਰਤੀ ਹੈ ਜੜੀ ਔਰ ਇਹਦੀ ਤੁਰਤੋਂ ਇਹਦਾ ਸਵਾ ਹੈ। ਬੁੱਢ ਤਾਂ ਹੀ ਸਵਾ ਹੈ ਕਿ ਹੈ। ਇਹ ਜਿਹੜੇ ਦੂਰ ਕਰਨ ਵਾਲੇ ਰਿਪਬਲਿਕ ਨੂੰ ਸੱਚ ਤੋਂ ਦੂਰ ਲਿਜਾਣ ਵਾਲੇ ਨੇ। ਉਹਨਾਂ ਦਾ ਬੜੀਆਂ ਮੈਂਡ ਕਰਨ ਵਾਲੀ ਹੈ। ਔਰ ਦੋਸਤ ਲੋਕਾਂ ਦੀ ਜੜ ਪੁੱਟਣ ਵਾਲੀ ਹੈ, ਜੜੇ ਪੁੱਟ ਦੇਣ ਵਾਲੀ ਹੈ। ਇਹ ਦੋਏ ਗੱਲਾਂ ਦਾ ਦਹਿਸ਼ਤ ਐਨੀ ਹੈ। ਇਹ ਦੋਏ ਗੱਲਾਂ ਨੇ ਤੇ ਲਾਗੂ ਰੇ ਇਹ ਆ ਲਿਖੀਆਂ ਹੋਈਆਂ ਨੇ ਜਿਹੜੀ ਬਾਣੀ ਨੂੰ ਇਹ ਬੰਦਦੇ ਨੇ ਬਾਗਲੀ ਜੀ ਨੂੰ ਦਸੋਂ ਭਾਸ਼ਾ ਦੀ ਅਕਾਲ ਉਸਤਤ ਅਕਾਲ ਉਸਤਤ ਇਹ ਉਹਦੇ ਵਿੱਚ ਦਰਜ ਨੇ ਇਹ ਇਹਨਾਂ ਤੇ ਇਹਨਾਂ ਤੇ ਲਾਗੂ ਰੂਲ ਬੋਲਦੇ ਨੇ ਜਿਹੜੇ ਬੋਲਦੇ ਨੇ ਇਹਨਾਂ ਤੇ ਲਾਗੂ ਨੇ ਦੋਏ ਲਈ ਨਾ ਜੇ ਨਹੀਂ ਆਣਾ ਤਾਂ ਜਵਾਬ ਦੇ ਦੋ ਸਾਨੂੰ ਵੀ ਸਾਡੇ ਤੇ ਲਾਗੂ ਨਹੀਂ ਆ ਅਰ ਧਰਮ ਗ੍ਰੰਥ ਦੇ ਵਿੱਚੋਂ ਜਵਾਬ ਦੇਣ ਵੀ ਅਸੀਂ ਸਹੀ ਹਾਂ ਅਸੀਂ ਦੁਸ਼ਟ ਨਹੀਂ ਹਾਂ ਅਸੀਂ ਉਲਟੇ ਰਸਤੇ ਨਹੀਂ ਪਾ ਰਹੇ ਆ ਗਰਾਊਂਡ ਹੈ ਸਾਡੇ ਕੋਲ ਆਦ ਗੁਰੂ ਗ੍ਰੰਥ ਸਾਹਿਬ ਜੋ ਹੈ ਦੱਸੋ ਆਪਣੀ ਗਰਾਊਂਡ ਦੇ ਕੇ ਸਾਬਤ ਕਰਨ ਵੀ ਅਸੀਂ ਠੀਕ ਹਾਂ ਸੇ ਗਰਾਊਂਡ ਹੈ ਨਹੀਂ ਫਿਰ ਦੁਸ਼ਟ ਵੀ ਹੈ ਅਸੁਰਵੀਰ ਅਸੁਰਵੀਰ ਫਿਰ ਦੋਇਰੇ ਦੁਰਜਨ ਵੀ ਨਹੀਂ ਔਰ ਦੁਸ਼ਟ ਇਹ ਇਹਦੇ ਅਰਥ ਕਰਨੇ ਦੁਰਜਨ ਕੀ ਹੁੰਦਾ ਦੁਸ਼ਤ ਕੀ ਹੁੰਦਾ ਦੁਸ਼ਤ ਉਹ ਹੁੰਦਾ ਦੁਸ਼ਤ ਕੀ ਹੁੰਦਾ ਹਿਰਨਾ ਬਾਜਾਂ ਤੇ ਸਿੱਖਦਾਰਾਂ ਇੰਨਾ ਪੜਿਆ ਨਾ ਇਹ ਥੋੜਾ ਜਿਹਾ ਗਿਆਨ ਹਾਸਲ ਕਰ ਲੈਂਦੇ ਹੁੰਦੇ ਨੇ ਹਿਰਨ ਬਾਜ ਔਰ ਸਾਕਤ ਇਸ ਸਾਕਤ ਨੇ ਥੋੜੀ ਜੀ ਇਰਾਨੇ ਬਣੀ ਬੜੀ ਗੱਦੜ ਨੇ ਖੇਤ ਦੇ ਅਲਲੇ ਗੇੜਾ ਮਾਰ ਲਿਆ ਦੇਖ ਲੈ ਅਮੀ ਗਵਾਹ ਜੀ ਹੁੰਦੀ ਐ ਟੰਡੋਰਾ ਪੜਦਾ ਵੇ ਰਿਜਾਇ ਵਿਛਾਉਣਾ ਭਰੀ ਫਿਰਦਾ ਮੈਂ ਕਿ ਸਿਆਲ ਨੂੰ ਦੇਖ ਲਾਂਗੇ ਜਿਹੜਾ ਆਊਗਾ ਹੁਣ ਦੇਖ ਰੂ ਮੈਂ ਜਿਹੜਾ ਮੇਰੇ ਮੂਰੇ ਆਊਗਾ ਮੇਰੇ ਮੂਰੇ ਨਹੀਂ ਕੋਈ ਬੋਲ ਸਕਦਾ ਹੁਣ ਆਏ ਨਾ ਕੋਲ ਆ ਇਨਾ ਪੜਿਆ ਨਾ ਫਾਇ ਲੱਗੀ ਜਾਤ ਫਾਇ ਲੱਗੇ ਰਹੀ ਥੋ ਇਹ ਸੰਗਤ ਦਾ ਧੂਆ ਧੜਾ ਬਣਾ ਕੇ ਆਪਣੀ ਫਾਇਜ ਬਸਾਉਣਾ ਚਾਹੁੰਦੇ ਨੇ। ਫਾਈ ਲੱਗੀ ਜਾਤ ਫਾਇ ਨ ਤਾਂ ਲੱਗੀ ਹੋਈ ਐ ਨੋ ਜੰਬਦੀ। ਜੰਬਦੇ ਜਾਲ ਜਪਸਾਰੇ ਨੇ ਲੋਕਾਂ ਨੂੰ ਉਲਟੀ ਬਤ ਦੇ ਕੇ। ਜੋ ਸੰਤ ਕਰ ਰਹੇ ਨੇ ਆ ਦੂਏ ਲੋਕ ਕਰ ਰਹੇ ਨੇ। ਉਹੀ ਇੱਕ ਮਤ ਉਹ ਜੀ ਇਹ ਚਲਾਉਣੀ ਚਾਹੁੰਦੇ ਨੇ ਆਪਣੀ ਬਰਬਤ। ਜਿਹੜੀ ਇਹਨਾਂ ਨੂੰ ਫਿੱਟ ਆ ਮਤ ਉਹ ਜੋ ਉਹ ਕਹਿੰਦੇ ਨੇ ਸਾਡੀ ਉਹ ਬਤ ਐ। ਇੱਕ ਮੰਤ ਖਾਲਸੇ ਦੀ ਤੂੰ ਇੱਕ ਵੰਤ ਕਰਕੇ ਦਿਖਾ ਸਾਰਿਆਂ ਨੂੰ ਇਹ ਇੱਕ ਮੰਤ ਅਨੰਤ ਵਰ ਸਾਹਿਬ ਨਹੀਂ ਹੋਏ ਸਾਰੇ ਕਿਲਾ ਛੱਡ ਕੇ ਚਲੇ ਗਏ ਤੂੰ ਇੱਕ ਵੰਤ ਕਰ ਦਿੰਦਾ ਸਾਰਿਆਂ ਨੂੰ ਇੱਕ ਵੰਤ ਜਣੀ ਮਜ਼ਾਕ ਹੈ ਖਾਲਸਾ ਇੱਕ ਮੰਤ ਹੋ ਕੇ ਫੈਸਲੇ ਕਰਦਾ ਸੀ ਕਾਂ ਲੱਗੂ ਇੱਕ ਵੰਤ ਕਦ ਹੋਇਆ ਖਾਲਸਾ ਇੱਕ ਵੰਤ ਹੋਇਆ ਕਦ ਉਹ ਵੋਟਾਂ ਦਾ ਰਜਿੰਦਰ ਤੋਂ ਕੋਈ ਜ਼ਿਆਦਾ ਨਹੀਂ ਰਾਜਾਤਾ ਹੋ ਸੀ अकाली फूला जोकी पावर थी जठे थगले लमल ले ओने केडी पावर सी ओ देखो अकाली भूला जको धर्म सी सच ओ धर्म सच ना जड़े आया सी ओदे पावर सी अकाली भूला जोको धर्म दरगाह ही पावर सी ओ देखो को दरगाह पावर सी ओदे गुरु वाली शक्ति थी ओ वाणी ਬਾਣਾ ਨਾਲ ਜੁੜਿਆ ਹੋਇਆ ਸੀ ਉਹ ਮਾਇਆ ਨਾਲ ਧਾਰੀ ਹੋ ਗਿਆ ਸੀ ਰਜੀਸ ਬਾਕੀ ਫੌਜਾਂ ਹੋਦੀਆਂ ਸੀ ਵੋਟਾਂ ਜ਼ਿਆਦਾ ਉਹਦੇ ਨਾਲ ਸੀ ਜੇ ਵੋਟਾਂ ਕੋਲੇ ਤੇ ਫੈਸਲਾ ਕਰਾ ਲੈਂਦੇ ਸੰਗਤ ਤੇ ਮਿਰ ਰਜੀਸ ਨੂੰ ਕੀ ਕਰਨਾ ਚਾਹੀਦਾ ਸਾਰੇ ਉਹਦੇ ਹੱਕ ਜੋ ਜਾਂਦੇ ਰਜੀਸ ਨੂੰ ਵਰਤਿਆ ਹੌਣ ਲੈ ਕੇ ਆਇਆ ਸੀ ਰਜੀਸ ਨੂੰ ਲੈ ਕੇ ਆਇਆ ਸੀ ਕਿਸੇ ਨੇ ਕਿਹਾ ਨਾ ਗਿਆ ਉਹ ਨੂੰ ਕੀ ਕਰਨਾ ਰਾਜਾ ਨੂੰ ਕੋਈ ਕਹਿਦਾ ਹੁੰਦਾ ਵੋਟਾਂ ਨਾਲ ਨਹੀਂ ਫੈਸਲੇ ਹੁੰਦੇ ਦਰਬਾਰ ਦੇ ਵੋਟਾਂ ਨੂੰ ਕਹਾਂਦੇ ਸ੍ਰੀ ਚੰਦਰੂ ਗਰ ਜਾਂਦਾ ਗੱਦੀ ਜੇ ਗੁਰੂ ਨਾਨਕ ਕਹਿੰਦਾ ਵੀ ਸੰਗਤ ਨੂੰ ਕਹਿੰਦਾ ਪਾਈ ਤੁਸੀਂ ਦੱਸੋ ਕਿਹਨੂੰ ਮੈਂ ਕਰਾਈ ਦਵ ਸੰਗਤ ਦਾ ਸ੍ਰੀ ਚੰਦਰੂ ਕਹਿੰਦੀ ਸਾਰੀਓ ਇਹਨੂੰ ਦੇ ਸੰਗਤ ਨੂੰ ਕੀ ਪਤਾ ਉਹਨਾਂ ਨੇ ਕਹਿੰਦਾ ਨਹੀਂ ਲੈਣਾ ਹੀ ਰਹੂਗਾ ਮੈਂ ਤੇ ਪਿਛੋਂ ਜਿਹੜਾ ਮੇਰਾ ਸਿੱਖਾ ਲੈਣ ਨੂੰ ਮੰਨੂਗਾ ਬਾਕੀ ਮੇਰਾ ਕੋਈ ਰਿਸ਼ਤਾ ਨਹੀਂ ਹੁੰਦਾ ਇੱਥੇ ਨਹੀਂ ਚੱਲਦੀਆਂ ਵੋਟਾਂ ਇੱਥੇ ਆਰਡਰ ਚੱਲਦਾ ਇੱਥੇ ਕਿਵੇਂ ਚੱਲ ਜਾਣੀਆਂ ਵੋਟਾਂ ਇਹ ਕੋਈ ਸੰਸਾਰੀ ਗੱਲ ਹੈ ਸੰਸਾਰੀ ਆਦਮੀਆਂ ਦਾ ਧਰਮ ਨਾਲ ਕੋਈ ਵਾਸਤਾਰੀ ਹੁੰਦਾ ਗੁਰੂਆਂ ਨੇ ਵੋਟਾਂ ਲਗੀਆਂ ਨਹੀਂ ਇੱਥੇ ਵੋਟਾਂ ਨਾਲ ਧਰਮ ਨਹੀਂ ਹੈ ਆ ਪਬਲਿਕ ਨੂੰ ਬੋਟ ਦੇਣ ਦਾ ਕੋਈ ਹਕਤਿਆਰ ਨਹੀਂ ਧਰਮਕ ਆਦਮੀ ਹੁੰਦੇ ਇੱਕ ਮਤ ਨੇ ਸਾਰੇ ਇੱਕ ਮਤ ਹੁੰਦੇ ਨੇ ਉਹਨਾਂ ਦੀ ਵੱਤ ਦੂਈ ਹੁੰਦੀ ਹੋਰੀ ਉਹ ਤੇ ਵੋਟਾਂ ਨਹੀਂ ਲੋੜਦਾ ਹੀ ਉਹੀ ਦੀ ਹੁੰਦੀ ਉਹਦੇ ਹੀ ਇਕਮਤਨ ਉਹ ਸੱਚ ਦੇ ਪਹਿਰਾ ਦੇਣ ਵਾਲੇ ਸੱਚ ਦੇ ਖਾਤਰ ਵਿਕੇ ਹੋਏ ਹੁੰਦੇ ਨੇ ਗੱਲ ਇਹ ਤਾਂ ਪ੍ਰਬੰਧ ਵਾਸਤੇ ਵੋਟਾਂ ਨਹੀਂ ਅਸੀਂ ਛੁੱਟ ਦਿੱਤੀ ਹੋਈ ਹੈ ਗੁਰਦਾਰੇ ਪ੍ਰਬੰਧ ਹੈ ਧਰਮ ਦੇ ਵਿੱਚ ਥੋੜੀ ਜਿਹੀ ਗੜਬੜ ਕਰਦੇ ਨੇ ਧਰਮ ਕੀਆ ਵੱਖਰੀ ਗੱਲ ਹੈ ਧਰਮ ਦਾ ਪ੍ਰਬੰਧ ਜਿਹੜਾ ਕਰਨਾ ਰਾਗੀ ਰੱਖਣੇ ਕੀਰਤਨ ਇਹ ਗੁਰਦਾਰ ਪ੍ਰਬੰਧ ਦਾ ਸਵਾਗਤ ਹੈ ਸੰਗਤ ਨੇ ਫੈਸਲਾ ਜਿਹੜਾ ਕਰਨਾ ਵੋਟਾਂ ਨਾਲ ਕਰਦੀ ਰਹੇ ਆਪਣਾ ਤਾਂ ਮਾਇਆ ਦਾ ਕਸੂਰ ਹੈ ਖਰਚ ਕਿੱਦਾਂ ਕਰਨਾ ਕਿੱਥੇ ਕਰਨਾ ਤਾਂ ਮਾਇਆ ਦਾ ਕਸੂਰ ਹੈ ਜਿੱਤੇ ਤੱਕ ਵਿਚਾਰਦਾਰ ਜਿਹੜੀ ਇਹ ਗੱਲ ਕਰਦੇ ਨੇ ਆ ਪਕੜਦੇ ਉਹ ਕੜਦੇ ਇਹ ਕੌਣ ਹੁੰਦੇ ਨੇ ਦਖਲ ਦੇਣ ਵਾਲੇ ਵਿਚਾਰਦਾਰ ਦੇ ਕੋਈ ਨਹੀਂ ਦਖਲ ਦੇ ਸਕਦਾ ਪ੍ਰਬੰਧ ਦੇ ਦਖਲ ਦੇ ਸਕਦੇ ਨੇ ਤੁਸੀਂ ਪਰ ਮੰਦਵਿਚ ਦਾਖਲ ਦੇ ਸਕਦੇ ਹੋ ਵਿਚਾਰਧਾਰਾ ਚ ਕੋਈ ਨਹੀਂ ਦਖਲ ਦੇ ਸਕਦਾ ਪਰਚਾਰਧਾਰਾ ਚ ਦਖਲ ਉਹ ਜਿਹਨੇ ਸਿਰ ਦਿੱਤਾ ਹੋਇਆ ਪਹਿਲਾਂ ਬੰਨ ਬੈਠੇ ਸਤਗੁਰੂ ਕੇ ਸਤਗੁਰੂ ਕੇ ਪਾਸ ਵਿਚਾਰਧਾਰਾ ਚ ਮੈਂ ਥੋੜਾ ਕੀ ਮਤਲਬ ਵਿਚਾਰਧਾਰਾ ਵਿਚਾਰਧਾਰਾ ਚ ਕਿਸੇ ਦਾ ਕੋਈ ਦਖਲ ਨਹੀਂ ਹੈ ਵਿਚਾਰਧਾਰਾ ਚ ਉਹਨਾਂ ਦਾ ਦਖਲ ਹੈ ਜਿਹੜੇ ਉਹ ਆਸਾਦ ਨੇ ਕਾਜਾ ਦਿੰਦਾ ਡੇਰਿਆਂ ਦੇ ਫੈਸਲੇ ਕਰਦੇ ਸਾਰਿਆਂ ਦੀ ਵੋਟ ਪੈਂਦੀ ਸਾਰੀ ਸੰਗਤ ਦੀ ਵੋਟ ਕਿਵੇਂ ਪੈਜੂ ਹਿੰਦੂਵਾਲੀ ਵੋਟ ਸਾਰਿਆਂ ਦੀ ਕਿਵੇਂ ਪੈਜੂਗੀ ਕੋਈ ਨਹੀਂ ਦਖਲ ਦੇ ਸਕਦਾ ਇਹ ਤਾਂ ਵਰਕਾ ਵਰਕਾ ਕਰ ਦਿੰਦੇ ਗੁਰੂ ਗ੍ਰੰਥ ਸਾਹਿਬ ਦਾ ਜੇ ਬੁੱਢਾ ਦਲ ਨਾਲ ਹੁੰਦਾ ਕੰਟਰੋਲ ਬੁੱਢਾ ਦਲ ਕਰਦਾ ਰਿਹਾ ਇਹ ਤਾਂ ਇਹਨਾਂ ਨੇ ਕੀਤੀ ਹੈ ਸ਼ਰਾਰਤ ਅਖਾਲੀਆਂ ਨੇ ਵੀ ਬੁੱਢੇ ਦਲ ਨਾਲ ਦੇ ਚੱਕ ਦੀਏ ਆ ਲੋੜ ਜਾ ਕੇ ਲੈ ਲੋ ਸਵਾਲ ਵੀ ਇਹਨਾਂ ਦਾ ਨਿਆਤੋਂ ਚੱਕ ਲਾ ਲੋ ਸਾਧੂ ਜੀ ਦਿਲ ਚੱਕ ਕੇ ਕੋਈ ਜਹੇਦਾਰ ਬੁੱਢੇ ਬੁੱਢੇ ਨਾਲ ਤੇ ਬਰਾਦੀ ਸੀ ਬਣਦਾ ਬੁੱਢੇ ਨਾਲ ਜਹੇਦਾਰ ਬਣਾਉਂਦਾ ਸੀ ਜਹੇਦਾਰ ਸਾਰੇ ਤਖਤਾਂ ਦੇ ਇਹ ਕਹਿੰਦੇ ਅਸੀਂ ਆਪ ਬਣਾਉਣੇ ਨੇ ਅਸੀਂ ਆਪ ਬਣਾ ਲਓ ਸਾਨੂੰ ਕੀ ਪਰੇ ਦੇਖ ਲੈ ਤਾੜੀਆਂ ਇੱਕ ਦੂਏ ਦੇ ਘਰ ਪਈਆਂ ਹੋਣਗੀਆਂ ਤੁਹਾਡੀਆਂ 10 10 ਬਾੜ 20 20 ਬਾੜ ਦਿਖਾਉਂਗੇ ਫਲਾਣੇ ਦੇ ਬਾੜ ਸਾਡੇ ਘਰ ਪਈ ਲੋ ਕਰਨਗੇ ਫਲਾਣੇ ਦੀ ਪੰਗ ਸਾਡੇ ਘਰ ਪਈ ਹੈ ਜਹੇਦਾਰ ਨੇ ਜਹਦੀ ਚੇਸ ਨੂੰ ਮੇਰੇ ਸਾਹਮਣੇ ਸਾਨੂੰ ਕਿਹਾ ਸੀ ਵੀਰ ਦਾ ਇਹ ਹਾਲ ਹੋਊਗਾ ਪਾਗੋ ਦੀ ਵਜੂ ਜਣ ਦੋਏ ਹੱਥ ਰੱਖੂਗਾ ਪੱਗ ਨੂੰ ਪਾ ਕੇ ਐਵੇਂ ਨਹੀਂ ਸੀ ਮੈਂ ਛੜਦਾ ਵੱਡਾ ਦਲ ਪਾਗ ਕ بچਾਉਣ ਵਾਸਤੇ ਛੱਡਿਆ ਸੀ ਉਹਦਾ ਪਗ ਲਾਉਣੇ ਵਾਲੇ ਸਾਰੇ ਇੱਕ ਦੂਏ ਦੀ ਵੱਡੇ ਦਲ ਜੂ ਵੀ ਪਗ ਲਾਉਣੇ ਵਾਲੇ ਸੀ ਬਾਅਦ ਚ ਰਹਿ ਗਏ ਸੰਤਾ ਸੰਬੇਲੇ ਗੋਲੀਆਂ ਆ ਨੀ ਚੱਲਦੀਆਂ ਨੇ ਹੁਣ ਕਾਹਦੇ ਗੋਲੀਆਂ ਚੱਲਦੀਆਂ ਨੇ ਇਕ ਕਦੋਂ ਦੀ ਪੱਗ ਲਾਉਣ ਵਾਲੀ ਉਹ ਜਿੱਥੇ ਮਾਇਆ ਆ ਗਈ ਉਹ ਤੇ ਪੱਗ ਜਿੱਥੇ ਮਾਇਆ ਆ ਗਈ ਉਹ ਤੇ ਪੱਗ ਲੈਣੀ ਐ ਨਾ ਹੋਰ ਕੀ ਹੋਣੀ ਬੇਸਲਾ ਵਿੱਚ ਕੀ ਹੋਇਆ ਸੀ ਪੱਗਾ ਹੀ ਲਾਉਂਦੇ ਦਿੱਕਤ ਹੋਏ ਦੀ ਅਕਾਲੀ ਕੀ ਪੱਗਾ ਕਾਤੇ ਲਾਉਂਦੇ ਨੇ ਮਾਇਆ ਖਤਰ ਇਹ ਸੱਚ ਸੱਚ ਹੁਣ ਸਭ ਨੂੰ ਕਹਿਣਾ ਪਊ ਦੱਸਣਾ ਪਊ ਹਸ਼ਰ ਕੁਝ ਵੀ ਹੋਵੇ ਹਕੀਕਤ ਦੇ ਨੂੰ ਸ਼ੀਸ਼ਾ ਦਿਖਾ ਦੇਣਾ ਵੀ ਆ ਸ਼ੀਸ਼ਾ ਭਾਈ ਤੁਹਾਡਾ ਰੋਲਾ ਲਾ ਪਾਓ ਸ਼ੀਸ਼ਾ ਆਇਆ ਤੁਹਾਡੀ ਆਪਣੀ ਕਰਨੀ ਪਰ ਰਹੇ ਹੋ ਤੁਸੀਂ ਸਿੱਖ ਏਕਾ ਹੋ ਜੁ ਤੁਹਾਡੀ ਏਕਤਾ ਹੋ ਜੂਗੀ ਅੰਦਰ ਦਾ ਚੱਕੋ ਥੋੜਾ ਕੀ ਹੈ ਸਿੱਖੀ ਦਾ ਹਲਸ ਨਹੀਂ ਕਿਸੇ ਦੇ ਅੰਦਰ ਏਕਤਾ ਪਾੜ ਲੈਣ ਹਾਂ ਗੱਕਾ ਵਾਂ ਨੂੰ ਨਾ ਇਕੱਠੇ ਹੋ ਜਾਂਦੇ ਹੁੰਦੇ ਥਲੇ ਜਾਏ ਕਈ ਹੁਣ ਮੇਰੇ ਬੱਡ ਲਾਂਗੇ ਆਪਾਂ ਸ਼ਿਕਾਰੀ ਸ਼ਿਕਾਰ ਘੜਦੇ ਨੇ ਕਈ ਪੜਣਾ ਦੇ ਇਕੱਠੇ ਹੋ ਜਾਂਦੇ ਨੇ ਸ਼ਿਕਾਰ ਮਰ ਜਾਂਦਾ ਹਿੱਸੇ ਪਾਲਣਦੇ ਨੇ ਏਕਤਾ ਥੋੜੀ ਹੁੰਦੀ ਆ ਉਰੂ ਏਕਤਾ ਨਹੀਂ ਕਰਦੇ ਕਾਇ ਵਾਰ ਇੱਕ ਦਗ ਰਈਆ ਕਾਲ ਤੱਕ ਕਿੱਥੇ ਗਈ ਇੱਕ ਦਰਾਂ ਦੀ ਸਾਂ ਖਾ ਕੇ ਲੁੱਕਰ ਜਾਂਦੇ ਨੇ ਅਕਾਲ ਤਖਤ ਇਹਨਾਂ ਨੂੰ ਦਿੱਤਾ ਹੈ ਸਭ ਕੁਝ ਸਾਥ ਜਦ ਇਹਨਾਂ ਨੂੰ ਦਿੱਤੀ ਹੋਈ ਹੈ ਕਰੋ ਕਰੀ ਜਾਓ ਰੌਲਾ ਪਾਈ ਜਾਓ ਚਛਰਾ ਸੁਰ ਮਾਰਨ ਪਤ ਤ ਉਧਾਰਨ ਨਰਕ ਨਵਾਰਨ ਗੂੜ ਗਤੇ ਚਛਰਾ ਸੁਰ ਮਾਰਨ ਚਛਰਾ ਸੁਰ ਜਿਹਨੂੰ ਕਿਹਾ ਆ ਕੌਣ ਸੀ ਚਕਸ਼ੂ ਕਹਿੰਦੇ ਨੇ ਅੱਖ ਨੂੰ ਅੱਖ ਜੋ ਚਚਰਾਸਰ ਉਹ ਹੈ ਜਿਹੜਾ ਅੱਖਾਂ ਦੀ ਘੂਰ ਨਾਲੇ ਬੁਲਾ ਲਵੇ ਕਿਸ ਨੂੰ ਦੇਖਾ ਬੜੇ ਬੜੇ ਬਲਵਾਨ ਅੱਖਾਂ ਦੀ ਘੂਰ ਨਾਲ ਕਿਵੇਂ ਬਜ਼ਾਰਾਂ ਦੇ ਵਿੱਚ ਵਸੂਲੀ ਕਰਦੇ ਦੇਖੇ ਨਾ ਉਹ ਚਚਰਾਸਰ ਸੋਨੇ ਸਾਰੇ ਐਵੇਂ ਇਹਨਾਂ ਚ ਵੀ ਹੁੰਦਾ ਸਾdal ਚ ਦੂਏ ਨੂੰ ਝਾਕ ਕੇ ਡਰਾ ਦੇਣਾ ਵੀ ਅਸੀਂ ਬਹੁਤ ਉਹ ਇਹ ਚਚਰਾਸਰ ਕਹਿੰਦੇ ਨੇ ਉਹਨੂੰ ਉਹ ਇਹ ਲਫਜ਼ਾਂ ਨੇ ਅਰਥ ਦੱਸਣਾ ਕੀ ਨੇ ਪਰ ਜਿਹੜੇ ਬ੍ਰਭ ਗਿਆਨੀ ਹੁੰਦੇ ਨੇ ਨਾ ਉਹ ਨਹੀਂ ਦੱਸਦੇ ਉਹਦੇ ਗੱਲ ਤੇ ਜਿਹੜਾ ਇਹਨਾਂ ਦਰਾਂ ਡਰੇ ਉਹਨੂੰ ਮੇਰੇ ਮੱਥਾ ਟੇਕ ਦਿੰਦੇ ਇਹ ਵੀ ਗੱਲ ਹੈ ਸਾਡੀ ਤਾਂ ਪੜਾਈ ਸਾਰੀ ਪੜ੍ਹੀ ਹੋਈ ਜਾਂ ਤੁਰਸੇ ਵੀ ਕੀ ਗੱਲ ਹੈ ਧਰਮ ਦੀ ਇਹਨੇ ਪੜਾਈ ਪੜ੍ਹੀ ਉਹਨੂੰ ਇਹਨਾਂ ਗੱਲਾਂ ਦਾ ਪਤਾ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ بڑے بڑے ਜਿੰਨੇ ਵੀ ਸੰਤਾਂ ਜੀ ਸੇ ਮਿਲੇ ਨੇ ਮੈਨੂੰ ਉਨਾ ਦੇ ਹਦੁਆਨੇ ਖਾਲਸਾ ਡੁੱਡੀਆਂ ਖਾਲਸਾ ਨਹੀਂ ਇਦਾਂ ਕਰਦਾ ਪੈ ਕਾਹੂ ਦੇਣਾ ਨਾ ਪਹਿਬੰਤਾ ਸਾਡੇ ਇਹ ਹੈ ਵੀ ਤੂੰ ਇਹਨੂੰ ਫਤਿਹ ਬੁਲਾਉਣੀ ਹੈ ਪਹਿਲਾਂ ਜਿਹੜਾ ਪਹਿਲਾਂ ਮਲਾਵੇ ਸੰਤ ਦੇ ਕੇ ਕੁਛ ਚੱਕਦੇ ਨੇ ਫਿਰ ਐ ਜਦ ਨਹੀਂ ਪਲਦੇ ਇੱਕ ਵਾਰ ਚੱਕਦੇ ਨੇ ਉਹ ਅੱਛਾ ਉਹ ਦੱਸਿਆ ਨਾ ਉਹ ਜਿਹੜਾ ਬਲੰਸ਼ਰ ਵਾਲਾ ਰਹਾਂਾ ਤੂੰ ਪਰ चर्चा ਇੰਤਜਾ सी, ਸੀ ਉਹ ਇੱਕ ਇਹ ਚਛਰਾ ਸ਼ੁਰ ਦੇ ਇਹ ਜਿਹੜੇ ਉਹਨਾਂ ਦੀ ਕਿ ਸਿੱਧੀ ਹੁੰਦੀ ਐ ਖਾਂਬੀ ਚ ਕੇ ਬੈਠੇ ਰਹਿੰਦੇ ਦੀਵੀ ਪਾ एक ਇੱਕ ਜੋਤ ਇੱਕ ਅੱਖਰੇ ਵਿੱਚ ਲਾਈਟ ਇਕੱਠੀ ਕਰ ਲੈਂਦੇ ਨੇ एक ਅੱਖ ਇੱਕ ਜੋਤੀਆਂ ਦੋਹਾਂ ਚ ਨਹੀਂ ਹੁੰਦੀ ਉਹਨਾਂ ਤੇ ਜਦੋਂ ਅੱਖ ਖੋਲਦੇ ਨੇ ਹੈਪਟੋਨਾਈਜ਼ ਵੀ ਕਰਨ ਰਿਹਾ ਹੈ ਆਪਣਾ ਉਹ ਗੱਲਾਂ ਰੋਸ਼ਨੀ ਦੀ ਕਿਰਨਾਂ ਵਾਂਗ ਰੋਸ਼ਨੀ ਦੀ ਕਿਰਨ ਇਕੱਠੇ ਕਰਕੇ ਤੀਰ ਮਾਉਂਦਾ ਆਦਮੀ ਡਰ ਜਾਂਦਾ ਉਹ ਤੇ ਉਹ ਤੀਰ ਮਾਰਦਾ ਸੀ ਇਦਾਂ ਪਹਿਲਾਂ ਹੀ ਪਤਾ ਸੀ ਵੀ ਕੀ ਹੁੰਦਾ ਕੌਣ ਹੁੰਦੇ ਨੇ ਅੱਜ ਚਰਾਸੋਂ ਰੋੜੀ ਪੜੇ ਹੋਏ ਤੇ ਸਾਰੇ ਸਾਡੇ ਆਏ ਉਹਨਾਂ ਦੀ ਕਹਾਣੀ ਹੈ ਤੁਹਿਆ ਸਰ ਮਾਰਨ ਹਾਂ ਇਹ ਚਖੂ ਕਹਿੰਦਾ ਨੱਖ ਨੂੰ ਅੱਖ ਦਾ تیر ਮਾਰਦਾ ਉਹ ਆ ਪਾ ਗਾਇਨੇ ਅਖਾਂਗਾ ਕੱਢਦਾ ਕਹਿੰਦਾ ਨਹੀਂ ਉਹ ਖਾਂ ਕੱਢ ਕੇ ਡਰਾ ਦਿੰਦੇ ਨੇ ਆਦਮੀ ਨੂੰ ਕੋਲ ਕੁਝ ਨਹੀਂ ਹੁੰਦਾ ਉਹ ਤੇ ਚਰਾ ਜੋਰ ਕਹਿੰਦੇ ਰੋ ਪਾਲਣੇ ਜਾ ਕੇ ਉਈ ਉਈ ਰੋ ਪਾਲਣੇ ਖਣਾਈ ਕੂਰ ਕਬਣਾ ਲੈਣਾ ਕਿ ਸਰੂ ਉਰ ਜ ਚਰਾਸੁਰ ਕਹਿੰਦੇ ਨੇ ਜ ਚਰਾਸੁਰ ਮਾਰਨ ਇਹ ਜਾਨੂ ਵੀ ਮਾਰ ਲੈ ਲੀਓ ਤੂੰ ਇਹ ਤੇ ਤੇ ਕੋਈ ਨਹੀਂ ਗਿਆਨਤਾ ਕੀ ਪਰਵਾਹ ਪਾਉਂਦੇ ਨੇ ਇਹ ਗਿਆਨਤਾ ਵਾਲੇ ਕਰਦੇ ਹੁੰਦੇ ਨੇ ਚ ਚਰਾਸੁਰ ਮਾਰਨ ਮਾਰਨ ਪਤਤ ਉਧਾਰਨ ਪਤਤ ਉਧਾਰਨ ਮਾਰਨ ਕਿਵੇਂ ਮਾਰ ਇਹਨਾਂ ਨੂੰ ਇਹ ਪਤਤ ਲੋਕ ਨੇ ਚ ਚਰਾਸੁਰ ਵਰ ਗਿਆ ਜਿਹੜੇ ਦੋ ਲਾਈਨਾਂ ਚ ਗਣੇ ਨੇ ਇਹ ਸਾਰੇ ਪਤਤਾਂ ਦਾ ਹੁਲਾਰ ਕਰਨ ਵਾਲੀਆਂ ਇਹਨੂੰ ਸਿੱਖਿਆ ਹੀ ਦਿੱਤੀ ਵੀ ਆ ਛੱਡ ਦੋ ਇਹ ਚ ਕੁਝ ਨਹੀਂ ਰੱਖਿਆ ਹੋਇਆ ਮਹਾਰਾਣੀ ਲੜਾਈ ਨਹੀਂ ਕਰਨੀ ਇਹਨਾਂ ਨੂੰ ਰੱਖਿਆ ਹੋਇਆ ਜੀ ਦੇ ਵਿੱਚ ਪਾਲਦਾ ਤੀਰ ਦੇਖ ਬਲ ਕੀ ਕੀ ਕਰਤਾ ਹੈ ਨਾ ਮੇਰਾ ਮੇਰੇ ਪਾਰ ਹੋ ਗਿਆ ਤੀਰ ਮੇਰਾ ਜਿਹੜਾ ਬੋਰ ਹੈ ਤੇਰੇ ਜੀ ਪਾਰ ਹੋ ਜਾਣਾ ਇਹ ਤਾਂ ਸ਼ਬਦ ਹੈ ਜਿਹੜਾ ਬਣੇ ਦਿੰਦਾ ਬਾਣ ਤਾਂ ਬਾਣੀ ਦਾ ਲਗਣਾ ਹੈ ਕਬੀਰ ਕਹਿੰਦਾ ਸਤਗੁਰ ਸੂਰ ਮੇ ਕਬੀਰ ਸਤਗੁਰ ਸੂਰ ਮੇ ਬਾਣ ਜੋ ਇਹ ਤਾਂ ਪ੍ਰਵਾਹ ਪੜਣਾ ਗੱਲ ਦਾ ਤੁਹਾਡੀ ਦਾ ਵਦਨ ਪੜਣਾ ਗੱਲ ਦਾ ਹੋਰ ਕਿਹ ਜੀ ਤਾਂ ਨਹੀਂ ਪੜਾ ਉਹ ਵੀ ਉਹ ਜਿਹੜਾ ਸੱਚ ਹੈ ਤਾਂ ਅਸਲ ਤੇ ਸੱਚ ਦਾ ਵਜਨ ਪੜਣਾ ਆਹ ਪਤ ਤੋ ਦਾ ਇਹਨਾਂ ਪਤ ਦਾ ਉਦਾਹਰਣ ਕਰਨ ਵਾਲੀ ਹੈ ਗੁਰਮਤ ਇਹ ਜਿਹੜੇ ਗੁਰਮਖੋਦੇ ਨੇ ਸਾਰਿਆਂ ਦਾ ਫਰੀਦਾ ਬੁਰੇ ਦਾ ਭਲਾ ਕਰੇ ਸਾਰੇ ਬੁਰੇ ਆਦਮੀ ਨੇ ਉਹ ਦੇ ਇਹਨਾਂ ਮਾਰਦੇ ਨੇ ਵਿੱਚੋਂ ਬੁਰਾਈ ਨੂੰ ਮਾਰਦੇ ਨੇ ਬੁਰੇ ਨੂੰ ਨਹੀਂ ਮਾਰਦੇ ਬੁਰਾਈ ਨੂੰ ਮਾਰਦੇ ਨੇ ਨਰਕ ਨਿਵਾਰਨ ਗੂੜ ਗਤੇ ਉਹਨਾਂ ਦਾ ਨਰਕਾ ਜਿਹੜਾ ਨਾ ਨਰਕ ਤੋਂ ਜਾਣ ਤੇ ਬਚਾਉਂਦੇ ਨੇ ਉਹਨਾਂ ਨੂੰ ਬੁਰੇ ਆ ਜਿਹੜਾ ਨਰਕ ਨੂੰ ਬਾਹਰ ਹੈ ਸਵਾ ਗੂੜ ਗਤੇ ਗਤੀ ਇਹ ਤੇਰਾ ਸੁਭਾਅ ਆਇਰ ਬੁਰੇ ਕਿ ਬੰਦੀ ਤੋਂ ਸਮਝ ਤੇ ਭਰੀ ਹੈ ਗੱਲ ਜਿਹੜੇ ਬੈਰ ਕਰਦੇ ਨੂੰ ਨਾਲ ਦੇ ਵੀ ਭਲਾ ਕਰਦੀ ਆਲੀ ਉਹ ਬੈਰ ਕਰਨ ਵਾਲਿਆਂ ਦੀ ਭਲਾ ਕਰਨ ਵਾਲੀ ਇਹ ਗੱਲ ਸਮਝ ਤੇ ਭਰੀ ਆ ਏ ਗੱਦੀ ਗੂੜਾ ਤੇਰੀ ਗੂੜ ਕੇ ਆਣਾ ਇਹ ਨਹੀਂ ਸਮਝ ਆਉਂਦਾ ਬੁਰੇ ਦਾ ਭਲਾ ਕਰਨਾ ਬੈੜੇ ਨੂੰ ਵੀ ਬੈੜੇ ਦੀ ਸਮਝਣਾ ਬਗਾਨੇ ਨੂੰ ਵੀ ਬਗਾਨਾ ਦੀ ਸਮਝਣਾ ਗੂੜਾ ਤੇਰੀ ਤਾਂ ਹੋਰ ਕੀ ਗੱਲ ਸਮਝਾਉਣਾ ਇਹ ਸਮਝਾਉਣਾ ਸਾਰਿਆਂ ਨੂੰ ਹਾਂ ਕੂਰ ਦੇਣਾ ਗੱਲ ਲੱਗਾ ਹੈ ਵੀ ਨਰਕਾਂ ਨੂੰ ਚਲਾ ਜਾਏਗਾ ਆ ਦੇਖ ਲੈ ਕੀ ਲਿਖਿਆ ਹੋਇਆ ਬਚ ਜਾ ਜੇ ਬਚ ਹੁੰਦਾ ਜਿਹੜਾ ਤਾਂ ਗੁਰਮੁਖ ਉਹ ਤਾਂ ਕਹਿੰਦਾ ਜੇ ਗੁਰ ਝੜਕੇ ਤਾਂ ਮਿੱਠਾ ਲੱਗ ਜਿਹਨੂੰ ਤਾਂ ਲੱਗਿਆ ਮਿੱਠਾ ਹੈ ਝੜਕ ਉਹ ਤਾਂ ਗਿਆ ਬਚ ਜਿਹਨੂੰ ਲੱਗ ਗਈ ਕੌੜੀ ਹੋ ਗਿਆ ਨਰਕਾਂ ਨੂੰ ਸੱਦਾ ਬਿਨਾ ਟਿਕੜ ਤੇ ਉਹਨੂੰ ਟਿਕੜੋ ਵੀ ਨਹੀਂ ਪਹੁੰਚਦਾ ਨਰਕ ਜਾਣ ਦਾ ਟਿਕੜ ਨਹੀਂ ਹੁੰਦਾ ਟਿਕੜੋ ਸੁਰਗ ਜਾਣ ਦਾ ਹੀ ਹੁੰਦਾ ਨਰਕ ਜਾਣ ਦਾ ਕੋਈ ਟਿਕੜ ਨਹੀਂ ਆਹ ਸੁਰਗ ਜਾਣ ਦਾ ਟਿਕੜੂ ਵੀ ਆਇਆ ਮਾਇਆ ਮਾਇਆ ਰਖਾ ਲੈਂਦੇ ਨੇ ਇੱਥੇ ਨਰ ਗਿਆਂ ਦਾ ਮਾਇਆ ਕੀ ਮਾਇਆ ਇੱਥੇ ਰਹਿਣੀ ਹੈ ਉਹ ਕਹਿੰਦੇ ਕੋਈ ਨਹੀਂ ਫੇਰਾ ਜੀ ਦੂਜੇ ਜਨਮ ਇਹਦੇ ਘਰ ਭੇਜ ਦਾਂਗੇ ਤੈਨੂੰ ਵੱਖੀ ਬੱਚਰ ਬਣਾ ਕੇ ਭੇਜ ਦਾਂਗੇ ਲਈ ਜਾਈ ਜਨਮ ਚਿੜੀ ਚੂਹਾ ਵਸੇਰੇ ਚੀਜ਼ਾਂ ਨੇ ਜਿਹੜੀਆਂ ਘਰ ਚ ਹੁੰਦੀਆਂ ਨੇ ਸਾਡੇ ਅਪੀ ਇਹਦਾ ਕੁੱਤਾ ਵੀ ਬਣ ਜਾਂਦਾ ਉੱਤੇ ਵੀ ਰੱਖਦੇ ਆਂ ਅਸੀਂ ਦੰਬਰ ਵੀ ਰੱਖਦੇ ਆਂ ਪਸ਼ੂ ਵੀ ਰੱਖਦੇ ਆਂ ਅਗੇ ਆਈਆਂ ਕਹਾਣੀਆਂ ਨੇ ਆਪਣੀਆਂ ਜਿਓ ਕਹਿੰਦੇ ਸਾਥ ਗੂੜੇ ਰੰਗ ਦੀ ਸੇਵਾ ਕਰਦੇ ਸੀ ਭਜਨ ਬੰਦਗੀ ਕਰਦਾ ਨਹੀਂ ਸੀ ਵਰ ਗਿਆ ਉਹਨੂੰ ਕਿਹਾ ਵੇ ਭਾਈ ਇਹ ਤੂੰ ਜਿਹੜਾ ਰਾਸ਼ਨ ਖਾਂਦਾ ਉਹਨਾਂ ਦਾ ਕੀਤਾ ਤਾਂ ਕੱਖ ਰੈ ਹੈ ਨਹੀਂ ਤਾਂ ਆਪਣੇ ਵਾਸਤੇ ਵੀ ਉਹਨਾਂ ਨੂੰ ਕੀ ਦਏਗਾ ਚੁੱਪ ਕਰ ਰਿਹਾ ਹੁਣ ਬੋਲੇਗੀ ਕਹਿੰਦੇ ਚੰਗਾ ਹੈ ਕਰ ਇਹਨੂੰ ਬੋਲ ਦਾ ਜਨਮ ਦੇ ਦੋ ਉਹਨਾਂ ਦੇ ਕਮਾ ਕੇ ਆਵੇ ਹੁਣ ਉਹਨਾਂ ਦੇ ਘਰ ਦੇ ਬੱਚਾ ਹੋ ਗਿਆ ਉਹ ਜਾ ਕੇ ਜਨਮ ਲੈ ਲਿਆ ਉਹ ਬੱਚਾ ਨੂੰ ਨਾ ਦੁੱਧਾਂ ਵਿੱਚ ਚੰਗਾ ਪਲਾਇਆ ਲੋਕ ਪਲਾਉਂਦੇ ਸੀ ਕਿਉਂਕਿ ਵਾਈਰ ਨਹੀਂ ਹੁੰਦੀ ਬੱਚਿਆਂ ਤੇ ਘਰ ਚੰਦਾ ਸੀਗਾ ਦੁੱਧ ਪੂਰਾ ਛੱਡਦੇ ਰਹੇ ਕਹਿੰਦਾ ਚੋ ਇਹਦੀ ਵਜ੍ਹਾ ਤੇ ਬੜਾ ਪੜ ਗਿਆ ਸਾਹ ਅੱਗੇ ਸੀ ਉਹ ਜੇ ਫਿਰ ਫਟ ਗਿਆ ਜਦੋਂ ਨਾਲ ਜੋੜਿਆ ਚੱਲੇ ਨਾ ਬਹਿ ਗਿਆ ਬਾਹਰ ਨੂੰ ਘੁੱਟੜੋ ਨਾ ਜਦ ਸਾਖੀਆਂ ਇਹ ਜੇ ਬਣਾਈ ਹੋਈਆਂ ਸਾਧਾ ਨੂੰ ਡਰੋਲ ਵਾਸਤੇ ਤੇ ਬਣਾਈ ਹੋਈਆਂ ਸਾਧਾ ਨਹੀਂ ਐ ਸਾਖੀਓ ਸਾਰਿਆਂ ਨੂੰ ਡਰੋਲ ਵਾਸਤੇ ਪੈਦਲ ਵਾਸਤੇ ਸਾਰਾ ਨਹੀਂ ਘੜੀਆਂ ਹੋਈਆਂ ਸੀ ਐਹ ਜੇ ਕੰਮ ਕਰੋਗੇ ਤਾਂ ਆ ਹੋਊਗਾ ਤੁਹਾਡੇ ਨਾਲ ਵੀ ਆਪਣੇ ਚੇਲੇ ਨੂੰ ਡਰੋਲ ਵਾਸਤੇ ਕਾਫੀ ਦੇਰ ਹੋ ਗਈ ਦੂਰੋਂ ਦੂਣਾ ਥੋੜਿਆ ਆਇਆ ਉਹ ਸਾਧੂਗੇ ਫਿਰ ਪਤਾ ਲੱਗਿਆ ਉਹੋ ਤਾਂ ਜਿਹੜਾ ਸਾਥ ਸੀ ਉਹਨੇ ਲੈ ਲਿਆ ਜਾਣ ਫਿਰ ਉਹਨਾਂ ਦੇ ਜਾਣਦਾ ਸੀ ਉਹ ਆ ਗਿਆ ਇੱਕ ਦਿਨ ਜਾਣ ਕੇ ਤੁਰਦਾ ਫਿਰਦਾ ਉਹਨਾਂ ਦੇ ਖੁੱਤੇ ਚਲਾ ਗਿਆ ਸਦਾ ਹੀ ਕਹਿੰਦਾ ਕੀ ਗੱਲ ਕਹਿੰਦਾ ਆ ਬਸ ਕਹਾੜਾ ਦਸੀਏ ਆ ਬੜਾ ਪਾਲਿਆ ਸੀ ਪ੍ਰੇਮ ਨਾਲ ਦਫਾ ਹੋਣਾ ਚੱਲਦਾ ਇਹਦੀ ਉਹ ਕਹਿੰਦਾ ਕੋਈ ਨਾ ਤੁਸੀਂ ਪਰੇ ਹੋ ਜਾਓ ਉੱਥੇ ਥੋੜੇ ਫਰਕ ਨਾਲ ਹਟ ਜਾਓ ਜਾ ਕੇ ਉਹ ਪਰੇ ਖੜ ਗਏ ਕਾਨ ਚ ਕਹਿੰਦਾ ਕਹਿੰਦਾ ਪਿਛਲੀ ਤਾਂ ਹੂਲ ਭਰਦਾ ਹਣ ਵਾਲੀ ਗੱਲ ਪਰੇਗਾ ਉਹ ਜਿਹੜਾ ਪਿਛਲਾ ਖਾਦਾ ਤਾਂ ਉਹ ਦੇ ਦੇ ਚੰਗਾ ਰਹੇਗਾ ਛੁਟਕਾਰਾ ਨਹੀਂ ਹੋਣਾ ਕਾਨ ਚ ਕਹੇ ਤਾ ਉਹ ਬਸ ਉਹ ਕਹਿੰਦੇ ਉਹ ਇੱਕ ਧਮ ਉਠਿਆ ਪੂਛ ਰੱਖ ਲਈ ਉਤੇ ਦੇ ਤੇਰੇ ਦੀ ਕਿਹੜੇ ਤੇ ਕਿਹੜਾ ਕਹਿੰਦੇ ਕੀ ਕਰਤਾ ਕਹਿੰਦਾ ਕੁਛ ਨਹੀਂ ਕੀਤਾ ਹੋਣੀ ਬੈਠਾ ਹੋਣੀ ਨਹੀਂ ਬੈਠਾ ਛੋੜੀ ਚਲੋ ਇਸ ਆਖੀਆਂ ਜੀਆਂ ਗਿਆਨ ਦੇਣ ਵਾਲੀਆਂ ਸੀਆਂ ਗੱਲਾਂ ਤੇ ਕੁਝ ਕੀਤਾ ਨਹੀਂ ਤੁਸੀਂ ਰਸਣੇ ਖਾਦਾ ਗੁਰਦੁਆਰੇ ਦੇ ਹੈਡ ਗ੍ਰੰਤੀ ਲਾ ਕੇ ਫਿਰ ਆਇਆ ਜੇ ਕੁਝ ਕਰਨਾ ਪਊਗਾ ਘੋੜੇ ਵੜਨਾ ਪਊ ਗੁਰੂ ਘਰ ਚ ਸੇਵਾ ਕਰਨੀ ਪਊਏ ਪਊਏ ਦੇਣਾ ਪਊਗਾ ਰਹਿਣ ਦੋ ਆਪਣੇ ਜੀਵਨ ਜਿਹੜਾ ਹੈਗਾ ਇਹ ਚੰਗਾ ਕਰਮ ਸਮਝੋ ਗੁਰੂ ਘਰ ਤੁਸੀਂ ਆਏ ਹੋ ਕ੍ਰਾਂਤੀ ਦੀ ਡਿਊਟੀ ਕਰਦੇ ਹੋ ਹੋਰ ਕੀ ਚੰਗਾ ਹਰ ਵਕਤ ਤੁਹਾਡਾ ਬਾਣੀ ਦਾ ਬਾਹਰ ਰਹਿੰਦਾ ਇਹਦਾ ਮੂਰਖ ਨਾ ਕਿਹੜੇ ਤੁਹਾਡੀ ਦਦਿਆ ਕਰਦੇ ਨੇ ਬਜਾਰੀ ਨੇ ਫਲਾਣਾ ਢਪਕ ਤੁਹਾਨੂੰ ਟਾਈਮ ਮਿਲਿਆ ਇਹਨਾਂ ਨੂੰ ਚੰਗੇ ਹੋ ਤੁਸੀਂ ਪਰ ਕੁਝ ਗਾਹਾਂ ਵਾਸਤੇ ਕਰ ਲੋ ਗਾਹਾਂ ਵਾਸਤੇ ਕਰ ਲੋ ਮਾਇਆ ਨੂੰ ਛੱਡੋ ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਔਦੰਡੇ ਅਲਖਮਤੇ ਅਛੈ ਛੈ ਨਹੀਂ ਹੁੰਦੀ ਜੋਤ ਬੱਧਮ ਨਹੀਂ ਪੈਂਦੀ ਜੋਤ ਤੇਰੀ ਅਖੰਡੇ ਅਖਡੇ ਨਾ ਖੰਡਨ ਕਰ ਸਕਦਾ ਕੋਈ ਕੋਈ ਗੱਲ ਖੰਡਨ ਨਹੀਂ ਕਰ ਸਕਦਾ ਸੱਚ ਦੀ ਗੱਲ ਕੋਈ ਵੀ ਰੱਦ ਨਹੀਂ ਕਰ ਸਕਦਾ ਤੇਜ ਪ੍ਰਚੰਡੇ ਤੇਜ ਪ੍ਰਚੰਡੇ ਪ੍ਰਚੰਡ ਤੇਜ ਪ੍ਰਚੰਡ ਗਿਆਨ ਹੈ ਤੇਰੇ ਕੋਲ ਖੰਡ ਉਦੰਡੇ ਖੰਡ ਉਦੰਡੇ ਜਿਹੜਾ ਖੰਡਾ ਹੈ ਨਾ ਖੰਡ ਕੌਣ ਖੰਡਵਾਨ ਉਹਨ ਖੰਡ ਹੋਇਆ ਉਦੰਡੇ ਇਹ ਉਦੰਡੇ ਖੰਡ ਨੂੰ ਸਗੋ ਇਹਦੀ ਡਿਵੈਲਪਮੈਂਟ ਕਰਦੀ ਹੈ ਉਦੰਡੇ ਉਦੰਡੇ ਇਹ ਡੱਡ ਨਾ ਡੱਡ ਤਾਂ ਉੱਪਰ ਚੱਕਦੀ ਜੇ ਉੱਪਰ ਪਈ ਜਿਹੜਾ ਪਹਿਲਾਂ ਫਸਿਆ ਆਇਆ ਵਿਚਾਰਾ ਸੋਸ਼ਲ ਦੀ ਮਾਫੀ ਮਰਦੀ ਸਜ਼ਾ ਹੈ ਇਹਨੂੰ ਬਰੀ ਕਰਦੀ ਹੈ ਬਰੀ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਉਦਲਟੇ ਦੰਡ ਜਿਹੜਾ ਡੰਡ ਹੈ ਤਾਂ ਉੱਪਰ ਉੱਠ ਕਾਲ ਦੇ ਡੰਡੇ ਕਾਲ ਦਾ ਡੰਡਾ ਸਭ ਦੇ ਸਿਰ ਤੇ ਕਾਲ ਦੇ ਡੰਡੇ ਤੋਂ ਬਚਾਉਣ ਲਗਾ ਤੈਨੂੰ ਉੱਪਰ ਉਠਾ ਰਹੀ ਹੈ ਕਾਲ ਦੇ ਚੱਕਰ ਚੋਂ ਬਾਹਰ ਕੱਢ ਰਹੀ ਹੈ ਇਹਨੂੰ ਉਦਲਟੇ ਇਹ ਅਰਥ ਇਹ ਅਰਥ ਉਲਟੇ ਕਰੀ ਜਾਂਦਾ ਜੇ ਉਲਟੇ ਅਰਥ ਨਾਲ ਕਰਦਾ ਤਾਂ ਇਹਦੀ ਮਤ ਬਝਦੀ ਨਹੀਂ ਯਾ ਤਾਂ ਨੂੰ ਸਮਝ ਨਹੀਂ ਆ ਗੁਰਮੱਦੀ ਗੁਰਮੱਦੀ ਦਾ ਖਰ ਨੂੰ ਸਮਝ ਹੈ ਉਹ ਨਹੀਂ ਐ ਜੇ ਵੀ ਵਿਚਾਰ ਕਰਤੇ ਜਿਹੜੇ ਬੁਰਦੇ ਨਹੀਂ ਉਹਨਾਂ ਦਾ ਲੱਗਦਾ ਹੀ ਨਹੀਂ ਚੱਦੀ ਦਾ ਹਾਂ ਅਲਖ ਮਤੇ ਜਿਹੜੀ ਮਨੁੱਖੀ ਬੁੱਧੀ ਜੀ ਸਮਝ ਨਹੀਂ ਸਕਦੀ ਜਿਹੜੀ ਮਨੁੱਖੀ ਬੁੱਧੀ ਦੇ ਸਮਝ ਤੋਂ ਪਰੇ ਆ ਉਹ ਮਤ ਹੈ ਤੂੰ ਬਤ ਹੈ ਬਤੇ ਲਿਖਤਾ ਬਤ ਹੈ ਇਗਰ ਮਤ ਤੁਹਾਡੇ ਕੋ ਕਬੀਰ ਕੋ ਲੈ ਹੂੰ ਸੰਭਾਲ ਕਬੀਰ ਸੰਸਾਰ ਕੋ ਲੈ ਜਿਸ ਬਸਤਕ ਭਗ ਵੀ ਲੈ ਸਕਦਾ ਹਰੇਕ ਬਸਤਕ ਭਗਤੋ ਮੈਨੂੰ ਇਹ ਗੱਲ ਨਹੀਂ ਸਮਝੀ ਅਸੀਂ ਇਹ ਤਾਂ ਕਹਿੰਦੇ ਅਸੀਂ ਨਜਾਈ ਭਰਾ ਲਈ ਸੋ ਉਹ ਉਹਨਾਂ ਦਾ ਲੈ ਬੰਨਦਾ ਲੋਕਾਂ ਨੂੰ ਰਿਆ ਜੋ ਪ੍ਰਜਾ ਹੋ ਜਾਂ ਤਤ ਗੁਰਮਤਿ ਦਾ ਤਤ ਗੁਰਮਤ ਉਹਦੇ ਕੋਲ ਆਵਿਕ ਤਾਂ ਕਹੇ ਰੂਪਰੀ ਦੇਖੀ ਰੂਪ ਕਹੇ ਜੀ ਪਤਾ ਕੀ ਹੁੰਦੀ ਆ ਅਰ ਜੇ ਦੱਸ ਦੇ ਤਾ ਫਿਰ ਅਸੀਂ ਸਮਝਾਂਗੇ ਵੀ ਅਸੀਂ ਝੂਠ ਬੋਲਦੇ ਰੂਕ ਉਹ ਦੱਸਦੇ ਵੇ ਰੂਕੀ ਹੁੰਦੀ ਹੈ ਜਿਹਨੂੰ ਮੈਂ ਰੂਕ ਕਹਿੰਦਾ ਕੀ ਕਹਿੰਦਾ ਵੇ ਕੀ ਆ ਉਹ ਉੱਤੇ ਰੂਕੀ ਹੈ ਕਪਾਹ ਕੀ ਹੈ ਨਰਮਾ ਕੀ ਹੈ ਇਹ ਵੀ ਤਾਂ ਵੁਜਾਰਤਾ ਹੈ ਵੁਜਾਰਤਾ ਹੈ ਦੱਸੇ ਜੇ ਪਤਾ ਹੋਵੇ ਦੱਸ ਦੂਗਾ ਚੌਲ ਕਹਿ ਰਹੇ ਪੀਤ ਕਾ ਲਾਪਸੀ ਕਹੀ ਹੋਈ ਹੈ ਗੁਰਬਾਣੀ ਚ ਸਭ ਜਣਾਲੀਆਂ ਚ ਜਨ ਚੌੜਾ ਨੇ ਫਿਰ ਉਹ ਵੀ ਦੱਸਿਆ ਵੀ ਚੌੜ ਕਿਨੂੰ ਕਹੀਦਾ ਕਿਹਾ ਹੋਇਆ ਦੁੱਧ ਕਿਨੂੰ ਕਿਹਾ ਹੋਇਆ ਭੁੱਖਣ ਕਿਨੂੰ ਕਿਹਾ ਹੋਇਆ ਦੱਸਿਆ ਵੀ ਹੋਇਆਗਾ ਇਹ ਭਾਸ਼ਾ ਹੀ ਹੋ ਰਹੀ ਹੈ ਹਾਂ ਜੈ ਜੈ ਹੋਸੀ ਮਹਿਕਾਸੁਰ ਮਰਦਨ ਜੈ ਜੈ ਹੋਸੀ ਮਹਿਕਾਸੁਰ ਮਰਦਨ ਮਹਿਕਾਸੁਰ ਐਸੀ ਆਵਾਜ਼ ਹੈ ਜਿਵੇਂ ਝੋਟਾ ਨਾ ਭੇੜੋਂਦਾ ਨਾ ਹਟਦੇ ਨੀ ਜਦੋਂ ਜਦੋਂ ਕਮਰਲਾ ਜਾਵੇ ਝੋਟੇ ਉਹ ਨਾ ਜਰ ਰਹਿੰਦੇ ਨੇ ਜਦੋਂ ਜਦੋਂ ਕਮਰਲਾ ਜਾਵੇ ਇਹ ਮਾਨਕ ਜਿਹੜਾ ਐ ਥੈਕਦਾ ਹੈ ਚਿੱਤ ਦੇ ਨਾਲ ਜਿੰਨਾ ਜਰ ਮਰਨੀ ਜਾਂਦਾ ਥੈ ਇਹ ਲੜਾਈ ਨਹੀਂ ਛੱਡਦਾ ਇਹ ਮੱਖਾ ਸੋਰਾ ਦਾ ਨੋ ਤਾਂ ਹੈ ਜਿੰਨਾ ਜਰ ਮਰਨਾ ਜਾਵੇ ਜੋਟਾ ਭੇੜ ਨਹੀਂ ਛੱਡਦਾ ਆਪਣਾ ਇਹ ਵੀ ਖੜਤਰ ਵੀ ਨਹੀਂ ਛੱਡਦਾ ਲੜੀ ਜਾਂਦਾ ਜਦ ਮਰ ਮਨ ਜਦ ਹੜਨਾ ਲੜਾਈ ਤਾਂ ਛੱਡਦਾ ਉਹਨਾਂ ਚੱਲੀ ਛੱਡਦੀ ਇਹ ਮੱਖਾ ਸੋਰਾ ਹੈ ਇਹਦੀ ਜਿਹੜੀ ਸੁਰ ਹੈ ਨਾ ਸੁਰ ਆਵਾਜ਼ ਇਹ ਆਪਣੀ ਆਵਾਜ਼ ਬੰਦ ਨਹੀਂ ਕਰਦਾ ਜਨ ਜਦ ਜਉਦਾ ਮੈਖਾ ਸੁਰ ਮੈਖਾ ਸੁਰ ਹੈ ਇਹਦਾ ਨਾਮ ਇਹ ਨਾ ਹੈ ਊਗਣਵਾਜਕ ਜਾਂ ਇਹਨੂੰ ਗੁਲਵਾਜਕ ਕਹਿੰਦੇ ਉਹ ਵੀ ਗੋੜਾ ਉਹ ਇਹ ਮਾਇਆ ਦਾ ਕੋਣਾ ਮੈਖਾ ਸੁਰ ਜੈ ਜੈ ਹੋਸੀ ਮੈਖਾ ਸੁਰ ਮਰਦਨ ਮੈਖਾ ਸੁਰ ਨੂੰ ਆਲਵਾੜੀ ਤੇ ਨਹੀਂ ਜੈ ਜੈਕਾਰ ਹੋਣੀ ਇਸ ਸੰਸਾਰ ਚ ਗੁਰਮਤਿ ਜੈ ਜੈਕਾਰ ਰਹੀ ਹੈ ਹਮੇਸ਼ਾ ਹੀ ਤੇ ਜੈ ਜੈਕਾਰ ਤਾਂ ਕੋਈ ਹਿੰਦੂ ਵੀ ਕਹਿੰਦੇ ਨੇ ਵੈਕਾਸਰ ਵਰਦਨ ਵੀ ਕਹਿੰਦੇ ਨੇ ਪਰ ਉਹਨਾਂ ਨੂੰ ਅਰਥਾ ਨਹੀਂ ਪਤਾ ਸਿਰਫ ਗੱਲ ਅਰਥਾਂ ਤੇ ਆਗੇ ੜੀ ਵੀ ਆ ਲਫ਼ਜ਼ ਸਾਰੇ ਉਹਨਾਂ ਜੋ ਲਏ ਹੋਏ ਰਹੇ ਸ਼ਾਇਦ ਉਹਨਾਂ ਦੇ ਵਰਤੇ ਨੇ ਅਸੀਂ ਅਰਥ ਤੋਂ ਨਹੀਂ ਉਹਨਾਂ ਨੇ ਕੀਤੇ ਨੇ ਉਹ ਹੀ ਕਰਕੇ ਸਾਨੂੰ ਦੇ ਸਾਡੇ ਵਿਦਵਾਨਾਂ ਨੇ ਅਰਥੋ ਠੀਕ ਮੰਨ ਲੇ ਠੀਕ ਮੰਨ ਕੇ ਇਹ ਤਾਂ ਨਹੀਂ ਦੇਖਿਆ ਵੀ ਸਾਡੇ ਗੁਰੂ ਨੇ ਜਿਹੜੇ ਲਿਖੇ ਨੇ ਅਰਥੇ ਇਹੀ ਇਹਦੀ ਖੋਜ ਕਰੀਏ ਗੱਲ ਕੀ ਹੈ ਉਹਨਾਂ ਆਲੇ ਠੀਕ ਮੰਨ ਕੇ ਪੰਡਤ ਨੂੰ ਆਪਣਾ ਗੁਰੂ ਧਾਰਡ ਕਰ ਲਿਆ ਜਿਨ੍ਹਾਂ ਨੇ ਆਇ ਅਰਥ ਲਿਖੇ ਹੋਏ ਠੀਕ ਮੰਨੇ ਨੇ ਇਹਨਾਂ ਅਰਥਾਂ ਤੇ ਸ਼ੰਕਾ ਨਹੀਂ ਕੀਤੀ ਉਸ ਰਾਤ ਨਹੀਂ ਬੰਦਦੇ ਧਾਰਡੀ ਨੇ ਸਿੱਖ ਨਹੀਂ ਹੋ ਸਕਦੇ ਸਿੱਖ ਜੇ ਕਹੋਂਦੇ ਨੇ ਤਾਂ ਮੂਰਖ ਨੇ ਹੋ ਇਸੇ ਕਰਕੇ ਤੋਂ ਅਲਰਜੀ ਕੋ ਪੜ ਲੰਦਾ ਜੋ ਚੇਲੇ ਜੋ ਪੜਦਾ ਡਾਲਰ ਜੀ ਕਿ ਉਹਾਂ ਫੇ ਜੋ ਅਰਥ ਦਾ ਪੜ ਡਾਲਰ ਠੀਕ ਬੰਦੇ ਹੋ ਤਵੇ ਪੜਦੇ ਚੇਲੇ ਹੋ ਰੋ ਤੁਸੀਂ ਬਦਲੇ ਉਹ ਅਰਥ ਪੜਦੇ ਚੱਡੀ ਦੇ ਅਰਥ ਬਦਲ ਕੇ ਦਿੱਤੇ ਹੋਏ ਨੇ ਪਰ ਦੱਸਿਆ ਹੋਏ ਨੇ ਚੱਡੀ ਕਿ ਨੂੰ ਕਹਿੰਦੇ ਨੇ ਉਹ ਕਹਿੰਦੇ ਨਹੀਂ ਬੜੇ ਇਤੋਂ ਪਤਾ ਲੱਗਦਾ ਉਹਨਾਂ ਦਾ ਇਹ ਤਾਂ ਅਰੰਦਾ ਉਹਨਾਂ ਦੇ ਬਾਦ ਹੈ ਬਿਨਾ ਬੜੇ ਦੇ ਨ ਰੋਣਾ ਉਹਨੇ ਕਿਉਂ ਪਾਇਆ ਇਹਦਾ ਜਵਾਬ ਖੋਲਦੇ ਕੀ ਦੇਣਗੇ ਉਹ ਬਿਨਾ ਸਮਝੇ ਤੇ ਰੋਣਾ ਜਿਹੜਾ ਇਹਨਾਂ ਪਾਇਆ ਹੈ ਜੀ ਦੁਰਗਾ ਫਰਨਾ ਟਿਪਕੇ ਇਹ ਉਹਨੇ ਕਿਉਂ ਪਾਇਆ ਰੋੜਾ ਤੁਸਕ ਉਹਦਾ ਸਪਸ਼ਟੀਕਰਨ ਪਹਿਲਾਂ ਦੋ ਫਿਰ ਕਹਾਂ ਗੱਲ ਕਰਾਂਗੇ ਤੁਹਾਡੇ ਨਾਲ ਪਹਿਲਾਂ ਚੱਡੀ ਦਾ ਜਿਹੜਾ ਦੂਹੀ ਹੁੜਦੇ ਰੋਣਾ ਪਾਇਆ ਉਹ ਕਿਉਂ ਪਾਇਆ ਦੁਰਗਾ ਦਾ ਇਹਦਾ ਸਪਸ਼ਟੀਕਰਨ ਦੋ ਇਹਦਾ ਸਪਸ਼ਟੀਕਰਨ ਤੋਂ ਬਾਅਦ ਗਾਂ ਤਰੀਏ ਚਲਣ ਦੀ ਕਰ ਲਾਂ ਉਹ ਸਾਨੂੰ ਤਾਂ ਸਾਰਾ ਹੀ ਪਤਾ ਸਾਡ ਨੂੰ ਈ ਕੋਈ ਸ਼ੰਕਾ ਵਾਲੀ ਗੱਲ ਪਹਿਲਾਂ ਇਹ ਸਪਸ਼ਟੀਕਰਨ ਦੇ ਅੱਧਾ ਚੂੜ ਜਿਹੜਾ ਇਹਨਾਂ ਦਾ ਹੁਣ ਆ ਤੋਂ ਬਾਦ ਬਾਹਰ ਆ ਗਿਆ ਇਹਦਾ ਸਪਸ਼ਟੀਕਰਨ ਦੇ ਕਿ ਤੁਹਾਨੂੰ ਇਹਦਾ ਹੀ ਨਹੀਂ ਪਤਾ ਤੁਹਾਨੂੰ ਉਹਦਾ ਕਿਵੇਂ ਪਤਾ ਉਹ ਜਿਹਨੂੰ ਸਾਫ਼ ਲਿਖੀ ਹੋਈ ਗੱਲ ਉਹਦੀ ਸੁਭਜ ਲੱਗੀ ਉਜਿਹੋ ਇੱਕ ਬੋਟੀ ਕੀ ਨਹੀਂ ਦੇਖੀ ਉਹਨੂੰ ਫਰੀਕ ਕਮਾ ਦੀ ਜੋ ਤੇ ਤਾਂ ਫਰੀਕ ਹੈ ਗੱਲ ਉਹ ਤਰੀਆ ਚਰਤਨ ਦੀ ਗੱਲ ਫਰੀਕ ਹੈ ਬਹੁਤ ਉਹ ਗਾਹ ਅਖੀਰ ਜਾ ਕੇ ਪਤਾ ਲੱਗਣਾ ਇਹ ਪਹਿਲਾਂ ਦੱਸੇ ਹੋਏ ਨੇ ਇਹ ਤਾਂ ਆਦਮ ਵਿੱਚ ਵੀ ਦੱਸੇ ਹੋਏ ਜੀ ਉੱਥੋਂ ਨਹੀਂ ਉਹਨੂੰ ਪਤਾ ਲੱਗਿਆ ਦੇਵੀ ਆਦਮ ਵਿੱਚ ਵੀ ਆਈ ਹੋਈ ਹੈ ਦੇਵ ਆਦਮ ਵਿੱਚ ਵੀ ਆਇਆ ਹੋਇਆ ਇੱਥੇ ਵੀ ਆਇਆ ਹੋਇਆ ਕਿਰਿਆ ਜਨਤਾਂਵੀ ਉੱਤੇ ਥੋੜਾ ਥੋੜਾ ਗੱਲ ਆਈ ਹੋਈ ਹੈ ਤਾਂ ਹੋਰ ਬਹੁਤ ਬਰੀਕ ਆਖਰੀ ਗੱਲ ਹੈ ਉਹ ਤਾਂ ਸਿਰੇ ਦੀ ਗੱਲ ਹੈ ਉਹ ਤਾਂ ਪਹਿਲਾਂ ਇਹਦਾ ਸਪਸ਼ਟੀਕਰਨ ਦੇਣੇ ਫਿਰ ਕਾਹਾਂ ਗੱਲ ਕਰਾਂਗੇ ਨਾ ਪਬਲਿਕ ਨੂੰ ਦੇਣ ਕਿ ਇਹਨਾਂ ਨੇ ਘਬਰਾ ਕੀਤਾ ਸਿੱਖ ਸੰਗਤ ਨੂੰ ਇਹਦਾ ਸਪਸ਼ਟੀਕਰਨ ਦੇਣੇ ਪਹਿਲਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੁਣ ਸਪਸ਼ਟੀਕਰਨ ਦੇਰ ਤੂੰ ਇਹ ਦਰਗਾ ਕਹਿੰਦੇ ਸੀ ਕਿਉਂ ਕਹਿੰਦੇ ਸੀ ਕੀ ਗੱਲ ਕਰਦੇ ਸੀ ਤੁਸੀਂ ਇਹ ਜਿਹੜਾ ਰੌਲਾ ਪਾਇਆ ਤੁਸੀਂ ਕੀ ਕਾਰਡ ਕੀ ਸੀ ਤੇ ਪਿੱਛੇ ਕੀ ਹੈ ਕਿ ਤੁਸੀਂ ਉਹਦਾ ਨਹੀਂ ਕਹਦੇ ਰੌਲੇ ਹੋਏ ਦੂਏ ਪਾਸੇ ਇਹ ਤੁਸੀਂ ਗੱਲ ਕਰਦੇ ਹੋ ਸ਼ਖਤ ਹੈ ਬਹੁ ਵੀ ਤੁਸੀਂ ਹੋ ਸ਼ਰਤੀ ਤੁਸੀਂ ਹੋ ਜਿਹੜਾ ਅਰਜਾਮ ਦੋਹਾਂ ਦੇ ਲਾਉਣੇ ਉਹ ਤਾਂ ਥੋੜੇ ਦੇ ਲੱਗਦੇ ਉਗਲੀ ਥੋੜੇ ਦੇ ਉੱਠਣ ਲੱਗ ਗਏ ਉਲਟੇ ਪਾਸੇ ਹੋ ਗਈ ਗੱਲ ਜੇ ਕਿਸੇ ਦੀ ਐਫ ਆਈ ਆਰ ਲਖਾਈ ਹੋਈ ਝੂਠੀ ਸਾਬਤ ਹੋ ਜਾਵੇ ਬਿਆਸੀ ਉਹ ਤੇ ਲੱਗ ਜਾਂਦੀ ਹੈ ਉਲਟਾ ਹੁੰਦਾ ਕਿਵੇਂ ਵਰਦਾ ਕਿਸ ਤਾਂ ਤੁਹਾਡੇ ਦੇ ਬਣਾਣਾ ਚਾਹੀਦਾ ਹੁੰਦਾ ਉਲਟਾ ਪਹਿਲਾਂ ਤੁਸੀਂ ਆਪਣੀ ਸਫਾਈ ਦੋ ਫਿਰ ਗਾਂ ਗੱਲ ਕਰਾਂਗੇ ਮੈਂ ਤੁਹਾਡਾ ਜੋੜ ਦੱਸਦਾ ਇਹਦੀ ਸਫਾਈ ਦੋ ਫਿਰ ਜਾ ਕੇ ਹੁਣ ਨੂੰ ਪੁੱਛ ਤੁਸੀਂ ਆਪ ਪਾਕ ਸਾਹਿਬ ਹੋ ਕੇ ਦੱਸੋ ਸਾਨੂੰ ਵੀ ਅਸੀਂ ਪਾਕ ਸਾਹਿਬ ਆਂਦਰ ਹਾਂ ਇਮਾਨਦਾਰ ਸੀ ਅਸੀਂ ਆਂਦਰ ਅਸੀਂ ਸਿੱਖੇ ਆਂਦਰ ਹਾਂ ਨਹੀਂ ਤਾਂ ਤੁਸੀਂ ਸਿੱਖੇ ਨਹੀਂ ਹੋ ਅਸੀਂ ਕਮਾ ਮਾਲੀਏ ਤੁਸੀਂ ਦੇਖੋ ਤੁਸੀਂ ਤਾਂ ਸਿੱਖੇ ਦੇ ਬਰੰਦੀਓ ਉਹਦਾ ਸਬੂਤ ਵੀ ਹੈ ਨਾਕਾਰੀ ਤੇਰੇ ਨਾਲ ਖੜਾ ਹੈ ਨਾਕਾਰੀ ਸਾਡਾ ਬੰਦਾ ਕਦੇ ਹੋ ਸਕਦਾ ਨਾਕਾਰੀ ਦਾ ਤੇਰਾ ਡਰਸ ਹੀ ਹੈ ਜੁਗਿੰਦਰ ਸਿੰਘ ਦਾ ਸਪੋਸਮੈਂਟ ਸਾਡੇ ਕੋਲ ਤਾਂ ਗਰਾਊਂਡ ਹੈ ਅਬਰ ਅਬਰ ਤਾਰੀ ਤੂੰ ਹੈਰੀ ਪਾਗਾ ਤੇਰੀ ਤੈਨੂੰ ਗਿਆਨ ਕੋਈ ਨਹੀਂ ਸਮਰਤਾ ਕੋਈ ਕੀਤੀ ਕੋਈ ਨਹੀਂ ਤੂੰ ਜੋ ਨਾ ਰੋਣਾ ਪਿਆ ਗਰਾਊਂਡ ਕੀ ਸੀ ਤੇਰੇ ਕੋਲ ਤੈਨੂੰ ਕਿਹਨੇ ਹੱਕ ਦਿੱਤਾ ਸੀ ਰੌਣਾ ਬੌਲਦਾ ਤੂੰ ਅਸਲ ਤੱਕ ਦੇ ਜਾਇਦਾਰ ਤਾਂ ਸੰਦਲਦਾ ਬਣਾਇਆ ਹੋਇਆ ਤੈਨੂੰ ਕਿਹਨੇ ਬਣਾਇਆ ਤੈਨੂੰ ਬੋਲਣ ਦੀ ਥੋੜੀ ਕਿਹਨੇ ਦਿੱਤੀ ਗਿਆ ਉਹਨੂੰ ਤਾਂ ਦਿੱਤੀ ਹੋਈ ਆ ਬਸ ਇਹ ਨਹੀਂ ਸੌਧੜੀ ਇਲੈਕਟਿਡ ਕਮੇਟੀ ਆ ਉਹਨਾਂ ਨੇ ਬਣਾਇਆ ਚਲੋ ਚਾਹੇ ਕਮੇਟੀ ਗਲਤ ਹੈ ਠੀਕ ਹੈ ਤਾਂ ਸਾਡੀ ਬਣਾਈ ਹੋਈ ਨਾ ਉਹਦੇ ਕੋਲ ਤਾਂ ਅਥਾਰਟੀ ਹੈ ਤੇਰੇ ਕੋਲ ਕੀ ਅਥਾਰਟੀ ਹੈ ਬੋਲ ਲਿਓ ਉਹਦੇ ਖਿਲਾਫ ਤੈਨੂੰ ਕਿਹਨੇ ਅਥਾਰਟੀ ਦਿੱਤੀ तू कॉल करना जय जय होसी महकासुर मर्दन रामक परदन छत्र राम राम राम राम राम पौंदा केसा ਦਾ ਜੂੜਾ ਰਮਕ ਪਰਦਨ ਪਰਦਨ ਕ ਪਰਦਨ ਨਾ ਰੰਪ ਹੁੰਦਾ ਜੂੜਾ ਪਰਦਨ ਰੰਪ ਹੁਣ ਜੂੜੇ ਨੂੰ ਕਹਿੰਦੇ ਨੇ ਹੁਣ ਵੀ ਜਰਾੰਦੀਆਂ ਜੂੜੇ ਨੂੰ ਕਹਿੰਦੇ ਰੱਬ ਬਣਾ ਲਿਆ ਰੰਪ ਜਿਹੜਾ ਜੋੜਾ ਬਣਦਾ ਨਾ ਬੜਾ ਉਹਨੂੰ ਰੰਪ ਕਹਿੰਦੇ ਨੇ ਕਪਰਦਨ ਕੇਸਾਂ ਦਾ ਛਤਰਛਤੇ ਹਾਂ ਜਿਹੜਾ ਤੇਰੇ ਸਿਰ ਤੇ ਕੇਸਾਂ ਦਾ ਜੋੜਾ ਹੈ ਉਹੀ ਛਤਰ ਹੈ ਉਹ ਜੋੜਾ ਨਹੀਂ ਆਪਣਾ ਕੇਸਾਂ ਦਾ ਕੇਸ ਖੁੱਲੇ ਨਹੀਂ ਛੱਡ ਸਕਦੇ ਸੀ ਜੱਡਾ ਨਹੀਂ ਹੁਲਿਆ ਛੱਡ ਸਕਦੇ ਦਾੜਾ ਦਾ ਹੁਲਾ ਰੱਖਣਾ ਕੇਸ ਨਹੀਂ ਖੁੱਲੇ ਰੱਖ ਸਕਦੇ ਜੜਾ ਵੜ ਜਾਂਦੇ ਹੁੰਗੇ ਹਾਂ ਤਾਰੰਪ ਘਰਦਨ ਕੇ ਆਇਆ ਹੈ ਹੀ ਆ ਜੁੜਾਈ ਛਤਰਾ ਹਾਂਜੀ ਅਸੁਰ ਬਿਹੰਡਣ ਦੁਸ਼ਟ ਨਕੰਦਣ ਪੁਸ਼ਟ ਅਦੰਡਣ ਰੂਪ ਅਤੇ ਅਸੁਰ ਅਸੁਰ ਨਹੀਂ ਆਸਰੀ ਹੈ ਆਸਰੀ ਬਿਹੰਡਣ ਆਸਰੀ ਬਹੰਡਣੀ। ਉਹ ਹੀ ਕਰਨਾ। ਆਸਰੀ, ਆਸਰੀ ਉਹ ਹੀ ਆ ਗਿਆ ਨਾ। ਜੋ ਬਨਬੱਤਾ ਬਨਬਤ। ਸਾਡੀ ਆਪਣੀ ਜਣੀ ਮਰਜੀ ਆ ਆਸਰੀ ਇਹੋ। ਸਾਡੀ ਜਣੀ ਕਲਪਨਾ ਆਸਰੀ ਆ। ਆਸਰੀ ਬਹੰਡਣੀ। ਉਹ ਵਹਣੜਣਾ। ਉਹ ਵਹਣੜ ਹੁੰਦਾ ਵਹਣੜ ਰੋਕ ਦੇਣਾ ਉਹਦਾ। ਬੈਣ ਜਿਹੜਾ ਬਹਿ ਰਹੀ ਹੈ ਨਾ ਪਿੱਛੇ ਮੋੜ ਦੇਣਾ ਗੰਗਾ ਦੇ ਵਿੱਚ ਜਮਨਾ ਨੂੰ ਡੱਕ ਦੇਣਾ ਮੂਰੇ ਤੇ ਗੱਗਾ ਚ ਬੁਲਾ ਦੇਣਾ ਪੁੱਠੀ ਕਰ ਦੇਣਾ ਉਲਟੀ ਗੰਗਾ ਜਮਨਾ ਬੁਲਾਈ ਜਮਨਾ ਨੂੰ ਉਲਟੀ ਗੱਗਾ ਚ ਬੁਲਾ ਦੇਣਾ ਜਮਨਾ ਨੂੰ ਰੋਕ ਕੇ ਵੱਡ ਕੇ ਉਹਦਾ ਨੱਕਾ ਗੱਗਾ ਚ ਭਾਲਣਾ ਜਦੋਂ ਜਿੱਦ ਨੂੰ ਜਲਦੀ ਉਧਰ ਨੂੰ ਜਾਵੇ ਆਪਣੀ ਮਰਜ਼ੀ ਰੋਕ ਕੇ ਗੁਰੂ ਦੀ ਮਰਜ਼ੀ ਹਰਾ ਦੇਣੀ ਗੁਰੂ ਜਿੱਦ ਨੂੰ ਜਾਵੇ ਆਪਣਾ ਪਾਣੀ ਦੇ ਬਜਾਏ ਗੁਰਕੇ ਪਾਣੀ ਚੱਲਣਾ ਇਹਨੂੰ ਕਹਿੰਦੇ ਨੇ ਆ ਮਤਲਬ ਐਸ ਗੱਲ ਦਾ ਆਸਰੀ ਬਹਿੰਡਣ ਬੈਣ ਨੂੰ ਰੋਕ ਦੇਣਾ ਉਹ ਬਦਤੀ ਵੇ ਦਰਿਆਓ ਟੁੱਟਣਾ ਥੀ ਵੇ ਬਾਹੜਾ ਟੁੱਟਣਾ ਥੀ ਵੇ ਬਾਹੜਾ ਦਰਿਆ ਦਾ ਜਰੂਰ ਬਣਾਣਾ ਸੀ ਪਰ ਟੁੱਟ ਨਾ ਜਾਵੇ ਫਿਰ ਇਹ ਧਿਆਨ ਵੀ ਰੱਖਣਾ ਇਹ ਕਲਪਨਾ ਦਾ ਦਰਿਆ ਅੱਗੇ ਰੋਕਣਾ ਤਾਂ ਹੈ ਆਸਰੀ ਨਦੀ ਦਾ ਰੋਕਣੀ ਹੈ ਜ਼ਰੂਰ ਕਾਲੀ ਧਾਰ ਦਾ ਰੋਕਣੀ ਹੈ ਪਰ ਟੁੱਟਣ ਵੀ ਨਹੀਂ ਦੇਣੀ ਤੇ ਆਲੇ ਵੀ ਰੱਖਣਾ ਗੁਰਗੇ ਪਾਣੀ ਆ ਚੱਲਾਂਗੇ ਚੱਲ ਰਹੀ ਹੈ ਚੱਲ ਪੈਰਾ ਸੀ ਲੜਦੀ ਨਾਲੇ ਜਿਹੜਾ ਇੱਕ ਪਾਸੇ ਦਰਿਆ ਬੰਦ ਕਰੀਦਾ ਦੂਜੇ ਪਾਸੇ ਡੈਰ ਕੱਢ ਕੇ ਪਾਣੀ ਤੋੜਦੀਦਾ ਹੁੰਦਾ ਇਹ ਤੋਰੀਏ ਨਾ ਫੇਰ ਟੁੱਟ ਜਾਊਗਾ ਪਾਣੀ ਸਾਈਡ ਤੇ ਨੂੰ ਤੋੜਦੇ ਦਾ ਹੁੰਦਾ ਬਹਰ ਦੇ ਨੂੰ ਦੋਰਤਾ ਦੋਸ਼ਟਾਂ ਨੇ ਕੰਦਨ ਦੋਸ਼ਟਾਂ ਦਾ ਕੰਦਨ ਦੋਸ਼ਟਾਂ ਨੂੰ ਦੀ ਜਾਲ ਪੁੱਟਣ ਵਾਲੀਆਂ ਕਦ ਹੁੰਦੀ ਹੈ ਜੜ ਖੜ ਦੋਦਾ ਨਾ ਮੁਕੰਦ ਖੰਡਾਦੋਂ ਜਾਲ ਹੁੰਦਾ ਪੁਸ਼ਟ ਉਦੰਡਨ ਰੂਪ ਅਤੇ ਪੁਸ਼ਟ ਉਦੰਡਨ ਜਿਹੜੀ ਪੁਸ਼ਟ ਦਾ ਹੈ ਰੂਪ ਪੁਸ਼ਟ ਜਿਹੜੇ ਸੁਦੋਖੀ ਨੇ ਥੋੜੇ ਸੁਦੋਖੀ ਨੇ ਸਤੋਖੀ ਦਾ ਹੈਗੇ ਨੇ ਸਤਸੰਤੋਖੀ ਦੀ ਉਹਨਾਂ ਨੂੰ ਉਹ ਡੰਡਾ ਨਾਲ ਹੋਰ ਸਤੋਖ ਦੇ ਰਹੀ ਹੈ ਹੋਰ ਮਜ਼ਬੂਤ ਕਰ ਰਹੀ ਹੈ ਰੂਪ ਆਤੇ ਰੂਪਾਤੇ ਰਹੀ ਰੂਪ ਦੇਖੋ ਨਾ ਸਤੋਖੀ ਜਦੋਂ ਹੋਰ ਵਧੀਆ ਸਤੋਖੀ ਉਹਦਾ ਰੂਪ ਹੋਰ ਵਧੀਆ ਹੋ ਉਹਦਾ ਰੂਪ ਸਮਾਰ ਰਹੀ ਹੈ ਸਤੋਖ ਦਾ ਰੂਪ ਵਧੀਆ ਰੂਪ ਸਤੋਖ ਉਹਦਾ ਕਰ ਰਹੀ ਹੈ ਸਤ ਸੰਤੋਖ ਤੇ ਲੈ ਕੇ ਜਾਣਾ ਉਹਨੂੰ ਸਤ ਤੋਖ ਨੂੰ ਸਤ ਸਤੋਖ ਤੇ ਲੈ ਜਾਂਦੀ ਹੈ ਚੰਡਾ ਸੁਰ ਚੰਡਣੀ ਮੁੰਡ ਬਹਿੰਡਣ ਦੇਖੋ ਇੱਕ ਚੰਡਾ ਇੱਕ ਮੁੰਡਾ ਦੋਵੇਂ ਭਾਈ ਨੇ ਚੰਡ ਜਿੱਤਾ ਹੈ ਮੁੰਡ ਦੂ ਹੈ ਸਰਾ ਸਿਰ ਨੂੰ ਕਹਿਣਾ ਨਾ ਮੁੰਡਿਆ ਉਹ ਨਹੀਂ ਚੰਡਾ ਹੁੰਦਾ ਚੜਣਾ ਚੰਡ ਕੇ ਤਾਂ ਕਾਬੂ ਲੈਣੇ ਖੁਰਪਾ ਚੰਡੀਦਾਰ ਦਾ ਖੁਰਪਾ ਚੰਡ ਕੇ ਤਾਂ ਕਾਬੂ ਦਿੰਦਾ ਉਦਾ ਬੂਹ ਕੱਢਣਾ ਚੰਡ ਕੇ ਨਾ ਚੰਡਾ ਸੁਰਦਾ ਚੰਡਣਾ ਅਸਰ ਨਹੀਂ ਲਗਿਆ ਚੰਡਾ ਸੁਰ ਲਿਖਿਆ ਹੈ ਚੰਡਾ ਸੁਰ ਚੰ ਸੁਰ ਚੰਡਾ ਸੁਰ ਆਹ ਆ ਉਹਨੂੰ ਕੀ ਕਿਵੇਂ ਜਾਣਦੀ ਐ ਵੱਧ ਆੜਨਾ ਬੇਦ ਹਥਿਆਰ ਚੰਡਦਰੀਆ ਪਖਰਪਾ ਆਰਣ ਵੱਤ ਵੇਦ ਹਥਿਆਰ ਗਿਆਨ ਦਾ ਹਥਿਆਰ ਥੱਲੇ ਆ ਬੰਤ ਹੈ ਜੰਡਾ ਅਸਰ ਐ ਜੰਡਦੀ ਹੈ ਸਮਝਿਆ ਨਹੀਂ ਖੁਰਪਾ ਜੰਡੇਆ ਖੁਰਪਾ ਹੀ ਸੀ ਵਿਚਾਰਾ ਵੇ ਜੰਡੇਆ ਕੰਪਨੀ ਤੋਂ ਤਾਂ ਜੰਡੇਆ ਕੰਮ ਦੇਣ ਲੱਗਿਆ ਸਾਰਾ ਘਾਹ ਫੂਸ ਗੜਤਾ ਫਸਲ ਵਧੀਆ ਹੋਗੀ ਓਇਆ ਨਾ ਬੀਜਿਆ ਜੇ ਚੰਡਿਆ ਖੁਰਪੇ ਸਾਰਾ ਗਲਾ ਪੜ ਦੂਗਾ ਜਿਹੜਾ ਕਾਫੂਸ ਹੈ ਉਹ ਹੋਇਆ ਖੁਰਪੇ ਨਾਲੇ ਗੁੱਟ ਦੇਈਦਾ ਖੁਰਪੇ ਨਾਲ ਗੁੱਟ ਕੇ ਕਹਿੰਦੇ ਪੀਜ ਲੈਣ ਦੇ ਫਾੜੇ ਖੁਰਪੇ ਨਾਲ ਗੁੱਟ ਐਚ ਕਹੀ ਜੰਡ ਲੈਣੇ ਕਹੀ ਨਹੀਂ ਛੱਡੀ ਦੀ ਫਾੜੇ ਪੀਜੜੀ ਨਾ ਸਭ ਕੁਝ ਛੱਡੀਦਾ ਹੀ ਹੈ ਖੇਤੀ ਦਾ ਸਮਾਨ ਚੰਡਣ ਵਾਲਿਆਂ ਹਾਂ ਮੁੰਡੇ ਬਹਿੰਡਣਾ ਜੜ ਦੀ ਕਮਿਆ ਆਹਰਣ ਵੱਤ ਤੋਂ ਵੇਦ ਹਥਿਆਰ ਹਥਿਆਰ ਕੀ ਕਰਨਾ ਇਹਨੂੰ ਕਲਪਨਾ ਹੀ ਬੰਦ ਕਰਨੀ ਆ ਵੀ ਬਸ ਤੇਰਾ ਹੋਰ ਕੁਝ ਨਹੀਂ ਕਿੰਡਣ ਹੰਡਣਾ ਹੁੰਦਾ ਪੂੜੇ ਫਿਰਨ ਇਹ ਮਨ ਦੌੜਦਾ ਬਹੁਤ ਹੰਡ ਹੰਡੜ ਕਹੇ ਹੰਡਣਾ ਕਹਿੰਦੇ ਭੱਜਣਾ ਬਹਿੰਡਣਾ ਹੱਡੇ ਉਹਨ ਹਾਂ ਹੰਡੇੰਦਕ ਤਾਂ ਹੈ। ਤੂੰ ਰਵਰਦਾ ਮਾਨਾ ਇਹਨੂੰ ਰੋਕਣਾ ਤਰਨ ਫਿਰ ਤੇ ਬਸ ਇਹਨੂੰ ਤਾਂ ਘਾੜੇ ਤੂੰ ਵਹਿ ਜਾ ਭਾਈ ਟੱਕ ਕੇ ਬੇਹੰਡਣ ਕਰ ਫੇਰ ਕਰਨਾ ਆਹੋ ਇਹਨੂੰ ਰੋਕਣਾ ਹੀ ਆ ਥਰੇ ਕਰ ਤੂੰ ਜਿਹੜਾ ਅਗਿਆਨਤਾ ਵਿੱਚ ਭਰਮਾ ਉਹਦਾ ਨਿਵਾਸ ਕਰਨਾ ਤੂੰ ਮਰ ਤੂੰ ਤੂੰ ਹੁਜ ਗਈ ਆਗ ਤੇ ਜਨਾਂ ਦੀ ਆਗ ਬੁਝਾ ਦੇਣੀ ਆ ਮਾਂਦੀ ਤਾਂ ਬੈਠੂਗਾ ਤੂੰ ਆਪੇ ਇੱਕ ਕਦਮ ਹੋ ਜਾਣਾ ਡੋਬਰ ਬਦਲ ਸਰ ਮਹਿਕ ਮਤੇ ਮਹਿਕ ਮਤੇ ਬਸ ਇਹ ਤੇਰੀ ਬਤੀ ਕੀ ਹੈ ਉਹਦੇ ਚ ਮਹਿਕ ਨਾ ਇਹ ਬਹਿਕ ਹੈ ਮਹਿਕ ਮਤੇ ਮਹਿਕ ਇਥੇ ਮਹਿਕ ਦੀ ਸੈਂਸ ਵਿੱਚ ਆਉ ਇਹ ਖੁਸ਼ਬੂ ਪੈਰਾ ਕਰਨ ਵਾਲੀ ਦਾਨਵੀ ਪ੍ਰਹਾਰਣ ਨਰਕ ਨਿਵਾਰਣ ਦਾਨਵਾਂ ਦੇ ਉੱਤੇ ਪ੍ਰਹਾਰ ਕਰਦੀਆਂ ਦਾਨਵ ਜਿਹੜੇ ਨੇ ਦੇਖੋ ਪ੍ਰਹਾਰ ਕਰਦੀ ਹੈ ਨਰਕ ਨਿਵਾਰਨ ਵਾਸਤੇ ਉਹਨਾਂ ਦੇ ਔਗਣ ਦੱਸ ਕੇ ਔਗਣ ਕਹਦੀ ਹੈ ਨਰਕ ਨੂੰ ਜਾਣਦੇ ਬਚ ਜਾਓਗੇ ਹਾਂ ਆਦਮ ਉਦਾਹਰਣ ਉਰਦ ਅਦੇ ਅੱਧਾ ਉਧਰਿਆ ਹੋਇਆ ਹੈ ਮਨ ਮਾਇਆ 'ਚ ਫਸਿਆ ਹੋਇਆ ਮਨ ਨੂੰ ਇਹ ਗੱਲ ਫਸਿਆ ਬਰੇਰ ਅੱਧਾ ਮ ਉਦਾਹਰਨ ਨਾ ਦੁਚਿੱਤੀ 'ਚ ਉਹ ਦੁਚਿੱਤੀ 'ਚ ਉਹ ਉਦਾਹਰਨ ਹੈ ਜਿਹੜੇ ਕਬੀਰ ਸੀਗਾ ਨਾ ਚਾਹੁੰਦਾ ਜਿਹੜਾ ਚਾਹੁੰਦਾ ਹੈ ਉਹਦਾ ਰਪਣਾ ਪਰ ਉਹਨੂੰ ਪਤਾ ਹੈ ਨਹੀਂ ਅਨਵਿਚਾਲੇ ਫਸਿਆ ਹੋਇਆ ਉਹਨਾਂ ਦਾ ਉਧਾਰ ਕਰ ਦਿੱਤੀ ਔਰ ਅਦੇ ਔਰ ਦਾ जय जय होसी मैं खासरमर्दन रमपकमर्दन आत्ममृत इस करके तेरी जय जयकार हो रही है मैं खासरमर्दन तेरे सिर ते जूड़ा केस लगा धर धर्म ਕੀਤਾ ਹੋਇਆ तेरे ਜਿਹੜੀਆਂ ਕੇਸ ਨੇ ਜਿਹੜੇ ਨਿਕਲਦੇ ਨੇ ਉੱਤੇ ਨੂੰ ਇੱਛਾ ਵਾਂ ਨਿਕਲਦੀਆਂ ਬੰਨ ਕੇ ਰੱਖੇ ਹੋਇਆ ਤੇਰਾ ਮਨ ਕਾਬੂ ਚ ਮੈਂ ਕਤੇ ਰਮਕੋਬਰਦਨ ਆਦ ਬਰਤੇ ਆਦ ਬਰਤੇ ਤੂੰ ਆਦ ਤੋਂ ਲੈ ਕੇ ਸਵੇਰ ਪਹਿਲਾ ਤੋਂ ਲੈ ਕੇ ਤੇਰੀ ਵਰਤੀ ਇਹੀ ਹੈ ਤੇਰਾ ਸਵੇਰਾ ਇਹੀ ਜਾਈ ਹੈ ਆਦ ਤੋਂ ਲੈ ਕੇ ਸਵੇਰੇ ਤੇਰਾ